ਬਾਣੀ ਮੰਤਰ ਹੈ ਅਨਲਿਖਤ ਵਿਦਿਆਵੀਏ ਵਿਦਿਆਵੀਏ ਮੰਤਰ ਦੀ ਜਿਹੜੀ ਵਿਦਿਆ ਹੈ ਗੁਰਬਾਣੀ ਦੇ ਵਿਦਿਆ ਇਹ ਵੱਖਰੀ ਕਿਸਮ ਦੀ ਵਿਦਿਆ ਹੁਤਰ ਵਿਦਿਆ ਕਹੂੰ ਮੰਤਰ ਵਿਦਿਆ ਕਹੂੰ ਤੰਤਰ ਸਾਰਣ ਕਹੋ ਮੰਤਰ ਵਿਦਿਆ ਬੁੱਤਰ ਵਿਦਿਆ ਗੁਰਬਾਣੀ ਜਿਹੜੀਆਂ ਮੰਤਰ ਹੈ ਵੀ ਮਹਾਪੁਰਖਾਂ ਦੀ ਬਾਣੀ ਮੰਤਰੇ ਹੁੰਦੀ ਅਸਲ ਦੇ ਵਿੱਚ ਮੰਤਰ ਉਹਨੂੰ ਕਹਿੰਦੇ ਨੇ ਜਿਹਦਾ ਵਰਦੂ ਤਾਰ ਦੇਵੇ ਜੰਮ ਦੇ ਜਾਲ ਚੋਂ ਬਾਹਰ ਕੱਢ ਦੇਵੇ ਕਬਸਾਗਰ ਤੋਂ ਤਾਰ ਦੇਵੇ ਤਰਦ ਰਖੇ ਤਰ ਤਾਂ ਸਕਦਾ ਗੁਰਬਾਣੀ ਦੇ ਵਿੱਚ ਜੇ ਇਹਦੀ ਵਿਦਿਆ ਦੀ ਸਮਝ ਹੋਵੇ ਬ੍ਰਹਮ ਵਿਦਿਆ ਬ੍ਰਹਮ ਵਿਦਿਆ ਵੀ ਆਉਗੀ बार-बार ਆਉਂਦੀ ਇਹਦੇ ਵਿੱਚ ਜਿਹੜੀ ਅਸੀਂ ਵਿਦਿਆ ਪੜ ਰਹੇ ਹਾਂ ਸਕੂਲਾਂ ਕਾਲਜਾਂ ਚੋਂ ਬ੍ਰਹਮ ਵਿਦਿਆ ਦੀ ਉਹ ਮਾਇਆ ਜੋ ਅੱਖਾਂ ਨੂੰ ਦਿਖਾਉਂਦਾ ਉਹਦੇ ਵਾਸਤੇ ਅਸੀਂ ਆਪਣੇ ਬੋਲੀ ਬਣਾਈ ਹੋਈ ਹੈ ਆਤਮਾ ਦੇ ਲੈਵਲ ਤੇ ਨਾ ਅਸੀਂ ਜੀਵਨ ਜਿਉਦੇ ਆ ਨਾ ਸਾਨੂੰ ਬੋਲੀ ਦੀ ਲੋੜ ਹੈ ਇਹ ਆਤਮ ਲੈਵਲ ਦੀ ਬੋਲੀ ਹੈ ਹੈ ਬ੍ਰह्म ਤੇ ਜਿਹੜੀ ਹੈ ਬ੍ਰह्म ਕੀ ਹੈ ਇਹਨੂੰ ਜਾਣਣਾ ਸਮਝਣਾ ਇਹਦਾ ਵਿਸ਼ਾ ਹੀ ਬ੍ਰह्म ਆਤਮਾ ਵਿਸ਼ਾ ਆਤਮ ਗਿਆਨ ਵਿਸ਼ਾ ਆਤਮ ਗਿਆਨ ਨੂੰ ਸੰਸਾਰ ਦੇ ਮਤਲਬ ਦੀ ਚੀਜ਼ ਹੈ ਨਹੀਂ ਗੀ ਇਸ ਕਰਕੇ ਸੰਸਾਰ ਨਹੀਂ ਪੜਦਾ ਇਹਨੂੰ ਸੰਸਾਰੀ ਲੋਕ ਨਹੀਂ ਪੜਦੇ ਭਾਗ ਤੈਨੂੰ ਪੜਦੇ ਨਾ ਸੰਸਾਰੀ ਉਹ ਦੋਈ ਵਿਧੇ ਪੜਦੇ ਨੇ ਇਸ ਕਰਕੇ ਭਗਤਾਂ ਦੇ ਸੰਸਾਰੀਓ ਦਾ ਜੋੜ ਨਹੀਂ ਹੁੰਦਾ। ਨਾ ਉਹਨਾਂ ਦੀ ਭੋਲੀ ਮਿਲਦੀ ਹੈ। ਨਾ ਉਹਨਾਂ ਦੀ ਵਿਦਿਆ ਮਿਲਦੀ ਹੈ। ਰਾਹ ਵੱਖਰਾ ਉਹਨੂੰ। ਉਹਨਾਂ ਨੇ ਸੰਸਾਰ ਤੇ ਅਗਲਾ ਇਹਨਾਂ ਨੇ ਸੰਸਾਰ ਬਣਾਉਣ। ਇਹਨਾਂ ਨੇ ਇੱਥੇ ਸੁਰਗ ਬਣਾਉਣਾ ਸਾਰੀ ਲੋਕਾਂ ਨੇ ਤਾਂ ਉਰੇ ਹੀ ਸੁਰਗ ਬਣਾਉਣਾ। ਉਰੇ ਸੁਰਗ ਬਣਾਉਣਾ ਨਹੀਂ। ਭਗਤਾਂ ਨੂੰ ਪਤਾ ਇਸ ਗੱਲ ਦਾ। ਉਹਨਾਂ ਨੇ ਜਿਹੜਾ ਸੁਰਗ ਬਣਾ ਬਣਾ ਉੱਥੇ ਹੀ ਚਲੇ ਜਾਣਾ। ਇੱਥੇ ਬਣਾਉਣ ਦੀ ਬਜਾਏ ਅਗਰ ਨਸਾਂਗਰ ਦੇ ਵਿੱਚ ਸੁਰਗ ਨਹੀਂ ਬਣਦਾ ਹੁੰਦਾ ਇਹ ਤਾਂ ਅਗਰ ਨਸਾਂਗਰ ਇੱਥੇ ਸੁਰਗ ਕਿਵੇਂ ਬਣ ਜੂਗਾ ਜਿਹੜੇ ਬਣਾਉਣ ਨੂੰ ਕਹਿੰਦੇ ਨੇ ਉਹਨੂੰ ਸਮਝ ਨਹੀਂ ਆ ਫੇ ਸਮਝ ਲੈ ਵਿਦਵਾਨ ਨੇ ਬੂਰਖ ਨੇ ਉਹਦਾ ਸੰਸਾਰੀ ਸੌ ਸੜਕਾਂ ਬਣ ਗਈਆਂ ਬਿਜਲੀ ਬਣ ਗਈ ਇਹ ਨੂੰ ਇਹ ਸੁਰਗ ਬੰਦੇ ਨੇ ਆਇਤਵਾਦ ਹੁੰਦਾ ਫਿਰ ਨਰਖ ਬਣਣ ਲੱਗ ਜਾਂਦੇ ਨੇ ਵਿੱਚ ਹੱਤਵਾਦ ਵੀ ਤਾਂ ਜੋ ਤਰੱਕੀ ਹੋ ਤਰੱਕੀ ਦੀ ਹੋਈ ਇੱਕ ਸ਼ਾਖ ਹੈ ਤਰੱਕੀ ਦਾ ਹਿੱਸਾ ਹੈ ਆਤਵਾਦ ਆਤਵਾਦ ਵੀ ਤਰੱਕੀ ਕਰਨ ਲਈ ਜੇ ਪੋਜ਼ਿਟਿਵ ਤਾਕਤਾਂ ਤਰੱਕੀ ਕਰਨ ਲਈ ਗਏ ਤਾਕਤਾਂ ਵੀ ਤਰੱਕੀ ਨਾਲੇ ਗੱਲ ਲਾਂਦੀਆਂ ਜਿਡਾ ਰਾਮ ਹੈ ਉਹ ਜਿਹਾ ਹੀ ਫਿਰ ਰਾਵਣ ਜਿਡਾ ਦਸ ਪਾਜਾ ਉਹਦਾ ਹੀ ਫਿਰ ਉਧਰ ਆਪਣਾ ਅਰੰਭ ਹੋਇਆ ਹੋਰ ਇਹ ਮੁਕਾਬਲੇ ਦੀਆਂ ਤਾਕਤਾਂ ਹੋ ਜਾਂਦੀ ਹੁੰਦੀ ਦੋਹੇ ਤਰ੍ਹਾਂ ਪੋਜ਼ਿਟਿਵ ਨੈਗੇਟਿਵਤਾ ਹਮੇਸ਼ਾ ਉਡੀ ਵੀ ਦੇ ਫਰਕ ਰਹਿੰਦਾ ਬਰਾਬਰੇ ਹੁੰਦੀ ਜੇ ਬਰਾਬਰ ਨਾਲ ਤਾਂ ਸੈਟਲਰ ਕਰ ਜਾਂਦੀ ਇੱਕਦਮ ਸੱਚ ਦਾ ਚੁੱਪ ਕਰ ਜਾਂਦਾ ਸੈਟਲਰ ਨਹੀਂ ਕਰਦਾ ਪਾਪ ਨੂੰ ਸੈਟਲ ਕਰਨਾ ਪੈਂਦਾ ਝੂਠ ਨੂੰ ਸੈਟਲ ਕਰਨਾ ਪੈਂਦਾ ਸੱਚ ਨੂੰ ਸੈਟਲ ਕਰਦੀ ਲੋਂਡੀ ਸੱਚ ਦੀ ਮਾਨਤਾ ਹੁਦਿਓ ਰਹਿੰਦੀ ਹੈ ਹਾਂ ਕਹੂ ਵੇਦ ਕਹੋ ਮੰਤਰ ਮੰਤਰ ਵਿਦਿਆ ਮੰਤਰ ਵਿਦਿਆ ਬੁੱਤਰ ਨੂੰ ਸਮਝਣ ਵਾਸਤੇ ਮੰਤਰ ਦੀ ਵਿਦਿਆ ਪਹਿਲਾਂ ਹੋਣੀ ਚਾਹੀਦੀ ਹੈ ਗੁਰਬਾਣੀ ਨੂੰ ਸਮਝਣ ਵਾਸਤੇ ਗੁਰਬਾਣੀ ਦੀ ਵਿਦਿਆ ਪਹਿਲਾਂ ਹੋਣੀ ਚਾਹੀਦੀ ਹੈ ਚਰਨ ਕੀ ਹੁੰਦੇ ਨੇ ਤੇ ਪੈਰ ਕੀ ਹੁੰਦੇ ਨੇ ਧੇਤਰ ਕੀ ਹੁੰਦੇ ਨੇ ਅੱਖਾਂ ਕੀ ਹੁੰਦੀਆਂ ਨੇ ਕੀ ਫਰਕ ਹੈ ਹੱਥ ਔਰ ਕਾਰਕ ਕਿ ਕੋਈ ਹੁੰਦੇ ਅਲੱਗ ਅਲੱਗ ਹੁੰਦੇ ਨੇ ਅੰਦਰਲੇ ਸਰੀਰ ਦੇ ਕੰਮ ਹੁੰਦੇ ਨੇ ਬਾਹਰਲੇ ਤੇ ਹੱਥ ਹੁੰਦੇ ਨੇ ਅੰਦਲੇ ਸ਼ੀਰ ਦੇ ਚੜ੍ਹ ਹੁੰਦੇ ਨੇ ਬਾਹਲੇ ਦੇ ਪੈਰ ਹੁੰਦੇ ਨੇ ਅੰਦਲੇ ਸ਼ੀਰ ਦੇ ਦੇਤਰ ਹੁੰਦੇ ਨੇ ਬਾਹਲੇ ਦੇ ਖਲ ਦੀ ਨੇ ਅੰਦਲੇ ਦੇ ਕੜਨ ਹੁੰਦੇ ਨੇ ਬਾਹਲੇ ਦੇ ਕੜੂ ਹੁੰਦੇ ਨੇ ਇਹ ਮੰਤਰ ਬਿਜਾ ਹੋਰ ਸੈਂਕੜੇ ਲਖਦ ਨੇ ਜੀ ਗੁਰਬਾਣੀ ਚ ਜਿਹਦੇ ਨਾਲ ਦੁਦਿਆਈ ਬਦਲ ਜਾਂਦੀ ਹੈ ਸਾਰੀ ਜਮਣ ਵਾਲਾ ਅਸੀਂ ਨਹੀਂ ਬੰਦੇ ਭੈਣ ਭਾਈ ਅਸੀਂ ਨਹੀਂ ਬੰਦੇ ਜੇ ਸੰਸਾਰ ਦੇ ਵਿੱਚ ਮਨਣਾ ਅਸੀਂ ਨਹੀਂ ਬੰਦੇ ਜਮਣਾ ਅਸੀਂ ਨਹੀਂ ਬੰਦੇ ਕੋਨ ਪਾਪ ਅਸੀਂ ਨਹੀਂ ਬੰਦੇ ਅਸੀਂ ਕੁਝ ਵੀ ਨਹੀਂ ਬੰਦੇ ਸੰਸਾਰੀ ਬੰਦਿਆਂ ਦਾ ਇਸ ਕਰਕੇ ਵੇਦਿਆ ਵਖਰੀ ਹੈ ਕਹੁ ਮੰਤਰ ਵੇਦਿਆ ਕਹੁ ਤੁੰਤਰ ਸਾਰੰ ਕਹੁ ਤੰਤਰ ਸਾਰੰ ਤੰਤਰ ਹੁੰਦਾ ਹੈ ਜੰਤਰ ਮੰਤਰ ਤੰਤਰ ਜੋ ਲਿਖਤਾ ਹੈ ਉਹ ਇਹ ਜੰਤਰ ਮੰਨ ਲੀਏ ਜਬ ਪੜਨਾ ਹੈ ਬੋਲਣਾ ਬਾਣੀ ਪੜ੍ਹਨਾ ਹੈ ਇਹ ਤਾਂ ਅੱਖਰ ਨਹੀਂ ਲਿਖਤ ਲਿਖਤਾ ਖਰੇ ਨਹੀਂ ਅੱਖਰ ਜੰਤਰ ਹੈ ਜਾ ਬੋਲਿਆ ਤਾਂ ਬੋਲਤਰ ਹੈ ਬਾਣੀ ਹਨ ਬੋਲਣ ਵਾਲਾ ਖੜੀ ਲਿਖਣ ਬੋਲਣ ਵਾਲ ਜੋ ਸਮਝਿਆ ਉਹ ਤੰਤਰ ਹੈ ਜੋ ਸਮਝਿਆ ਜੋ ਪ੍ਰਾਪਤ ਹੋਇਆ ਗਿਆਨ ਸਾਰੰਗ ਜੋ ਸਾਰ ਹੈ ਦਾ ਜੋ ਤੰਤਰ ਇਹ ਜੰਤਰ ਮੰਤਰ ਤੰਤਰ ਸਡੇ ਇਕੱਠੇ ਆ ਗਏ ਜੇ ਬੋਲੇ ਤੇ ਸਮਝ ਲਵੇ ਤਾਂ ਜੰਤਰ ਦੀ ਲੋੜ ਨਹੀਂ ਫਿਰ ਜੰਤਰ ਸਰੀਰ ਬਣ ਕੇ ਬੋਲਣ ਵਾਲਾ ਬਣ ਗਿਆ ਜੇ ਬੋਲੇ ਤੇ ਬੋਲਣ ਤੇ ਰੱਖੀਏ ਫਿਰ ਸਰੀਰ ਬਣ ਗਿਆ ਬੋਲਣ ਵਾਲਾ ਬਣ ਗਿਆ ਜਦ जंते ਜਾਣਤੇ ਹਨ ਸਰੀਰ ਜੋ ਆਪ ਜੰਤ ਪੰਜਾਬ ਤੇ ਟੁੱਟ ਗਈ ਸਭ ਤਾ ਟੁੱਟ ਗਈ ਸਭ ਤਾ ਕਿਤੇ ਦਾ ਸਰਬ ਦੇ ਜਲਦੀ ਹੈ ਕਿਤੇ ਦਾ ਸਾਰ ਵੀ ਲਭ है, ਕੋ ਕੁ जो ਤਰ है, ਤੰਤਰ ਸਾਰੰ ਤੰਤਰ ਹੈ ਸਾਰ ਜੋ ਗਿਆਨ ਤਤਵਸਤੂ ਉਹਦਾ ਸਾਰਾ ਕੁਰਬਾਨੇ ਦਾ ਮੁੱਤਰ ਦਾ ਸਾਰ ਮੁੱਤਰ ਦਾ ਸਾਰ ਹਾਂਜੀ ਕਹੂੰ ਜੰਤਰ ਰੀਤੰ ਕਹੂੰ ਸ਼ਾਸਤਰ ਧਾਰੰ ਕਿਤੇ ਜੰਤਰ ਰੀਤ ਜੰਤ ਜਦ ਤਰੀ ਤੱਕ ਹੀ ਹੈ ਜੰਤਰ ਹੁੰਦਾ ਸਰੀਰ ਦੇ ਹੀ ਦੀ ਰੀਤ ਅਨਸਾਰ ਵੀ ਚੱਲਣਾ ਪੈਂਦਾ ਇਹ ਨਹੀਂ ਆਇਆ ਵੀ ਪੁੱਠਾ ਲੜਕਣਾ ਆਇਆ ਸੀ ਪੁੱਠਾ ਹੀ ਬਣਾਉਂਦਾ ਪਰਮੇਸ਼ਰ ਇਹ ਨਹੀਂ ਇਹ ਗੱਲ ਸੀ ਜੇ ਤੁਹਾਡੀਆਂ ਤਪੜੀਆਂ ਦੇ ਸਰੀਰ ਨੂੰ ਵਧਾ ਕੇ ਦੇਣੀ ਹੈ ਸਰੀਰ ਦਾ ਖਿਆਲ ਰੱਖਣਾ ਕੀ ਇਹਨੇ ਖਾਣਾ ਟਾਈਮ ਸਿਰ ਦੇਣਾ ਇਹ ਨਹੀਂ ਇਹ ਭੁੱਖ برداشت ਕਰ ਲੈਣੀ ਹੈ ਚਾਹੇ ਕੁਝ ਹੋ ਜਵੇ ਬੈਠੇ ਰਹਿਣਾ ਤੱਕਰ ਨਾਲ ਸਭ ਉਲਟ ਹੈ ਹੋ ਪ੍ਰਕਿਰਤੀ ਦੇ ਅਨੁਸਾਰ ਸਰੀਰ ਦੇ ਨਾਲ ਡੀਲ ਕਰਨਾ ਸੀ ਪ੍ਰਕਿਰਤੀ ਤੋਂ ਉਲਟ ਸਰੀਰ ਨਾਲ ਡੀਲ ਨਹੀਂ ਕਰਨਾ ਜੰਤਰ ਸਰੀਰ ਹੈ ਨਾ ਜੰਤਰ ਦੇ ਹੈ ਦੇਦਾ ਖਿਆਲ ਸਹੀ ਸਹੀ ਰੱਖਣਾ ਇਹ ਅਕਲ ਦੀ ਗੱਲ ਹੈ ਬੇਅਕਲਾਂ ਦੀ ਨਹੀਂ ਗੱਲ ਹੈਗੀ ਤਰਵੇਂ ਬੇਅਕਲਾਂ ਨਾਲ ਨਹੀਂ ਸਾਡਾ ਅਕਲਾਂ ਨਾਲ ਤਰਵੇਂ ਉਹਨਾਂ ਦਾ ਬੇਅਕਲਾਂ ਨਾਲ ਤਰਵੇਂ ਇੱਥੇ ਗਿਆਨ ਦੀ ਲੋੜ ਹੈ ਉੱਥੇ ਗਿਆਨ ਦੀ ਲੋੜੇ ਕੋਈ ਨਹੀਂ ਉਹਨਾਂ ਨੇ ਤਾਂ ਗਿਆਨ ਉਸਤਿਫਾ ਦਿੱਤਾ ਹੈ ਸਾਰੇਆਂ ਨੇ ਇਹ ਸਾਰਾ ਗਿਆਨ ਤੇ ਖੜੇ ਤਰਵੇਂ ਸਾਡਾ ਸਰੀਰ ਨਾਲ ਕੋਈ ਧੱਕਾ ਨਹੀਂ ਕਰਨਾ ਤਾਂ ਕਾਕਾ ਕਰਨਾ ਸਰੀਰ ਨਾਲ ਸੀਤ ਕਾਕਾ ਕਰਵਾਸੇ ਕੀ ਚੀਜ਼ ਨਕਸ ਪੈ ਜਾਊਗਾ ਇਹ ਤੋਂ ਕਾਬ ਲੈਣਾ ਕਾਬ ਕਿਸੇ ਚੀਜ਼ ਤੋਂ ਰੱਖਿਆ ਜੀ ਤੋਂ ਲੈਣਾ ਤੁਸੀਂ ਉਹਦੀ ਸੰਭਾਲ ਵੀ ਸਹੀ ਰੱਖਣੀ ਏ ਤਾਂ ਕਾਬ ਦਊ ਉਹ ਕਹੂੰ ਜੰਤਰ ਕਹੂੰ ਮੰਤਰ ਵਿਦਿਆ ਕਹੂੰ ਤੰਤਰ ਸਾਰੰ ਕਹੂੰ ਜੰਤਰ ਰੀਤੰ ਕਹੂੰ ਸ਼ਸਤਰ ਜੰਤਰ ਰੀਤੰ ਜੰਤਰ ਦੀ ਰੀਤ ਦੇ ਸਾਰ ਉਹ ਜਿਹੜੀ ਅਪਾਨ ਵాయు ਉੱਤੇ ਨੂੰ ਚੜਾਉਂਦੇ ਨੇ ਸਿੱਧ ਜਿਹੜੀ ਸਾਡੇ ਹਵਾ ਖਾਰਜ ਹੁੰਦੀ ਹੈ ਨਾ ਥੱਲੇ ਨੂੰ ਉਹ ਵਾਪਸ ਉੱਤੇ ਨੂੰ ਚੜਾਉਂਦੇ ਨੇ ਇਹ ਰੀਤ ਤੇ ਖਿਲਾਫ ਹੈ ਆ ਨੈਤਿਕ ਰਲਿਆ ਤਾਂ ਕੁਦਰਤ ਤੋਂ ਖਿਲਾਫ ਕੋਈ ਕੰਮ ਨਹੀਂ ਕਰਦਾ ਸ਼ਰੀਰ ਨਾਲ ਜਿਵੇਂ ਸ਼ਰੀਰ ਚੱਲਦਾ ਜਿਵੇਂ ਕੁਦਰਤ ਨੇ ਬਣਾਇਆ ਐਵੇਂ ਚਾਹੀਦਾ ਉਹ ਆਵਾਂ ਨੂੰ ਉੱਪਰ ਉਚਾਉਂਦੇ ਨੇ ਦਾੜੀਆਂ ਚੜ ਜਾਂਦੀਆਂ ਦਿਮਾਗ ਚੜ ਜਾਂਦੀਆਂ ਉਹਦੇ ਨਾਲ ਕਿਤੇ ਉਹ ਕਹਿੰਦੇ ਨੇ ਆਤਮਾ ਜਾਗੂਗੀ पागलपणा है बिल्कुल कुछरी ओतो प्राप्ति हुई किसे ना हो रही ओ तो खिलाफ है वो, है वो बहुत डुंगी गल ਕਰਤੀ है जंतर रीड आ गल्ला बहुत थल्ले दीया ने आम आदमी दे समझ दे विच नहीं गल आ सकदी बे तो आना दे समझ नहीं आ सकदी अगर जंतर रीड की ਜਦ ਤੂੰ ਦਾ ਸਰੀਰ ਹੈ ਨਾ ਜੋ ਹੁਬ ਜੰਤ ਪੰਜਾਬ ਤੇ ਟੁੱਟ ਗਈ ਸਭ ਇਹਦੀ ਰੀਤ ਵੀ ਸਮਝ ਚਾਹੀਦੀ ਏ ਸਾਨੂੰ ਉਹੜੀ ਡੰਗੇ ਪਹਿਰੀਆਂ ਸਰੀ ਚੱਲਣਾ ਤੋਂ ਪੁੱਛ ਵੀ ਲੱਗ ਜੂਗੀ ਅਸੇਰੀ ਕਰਨੇ ਤੌਰ ਨੇ ਵਣ ਕੰਡਣਾ ਤੋੜੇ ਵਣ ਕੰਡਾ ਮੋੜੇ ਅਸੀਂ ਨਹੀਂ ਕੰਮ ਕਰਨਾ ਅਸੀਂ ਨਹੀਂ ਸੁਣਾ ਦੇ ਪੈਣਾ ਕੁਛ ਨਹੀਂ ਕਰਨਾ ਹੈ ਕੁਛ ਸਰੀ ਨੂੰ ਦੁਖਦਾਈ ਨਾ ਹੋਏ ਕੰਮ ਨਹੀਂ ਕਰ ਇਹ ਇਹਦੀ ਰੀਤ ਦੇ ਅਨਸਾਰ ਚੱਲਣਾ ਚਾਹੀਦਾ ਇਹਦੀ ਰੀਤ ਹੈ ਸਰੀਰ ਦੀ ਜੋ ਰੀਤ ਹੈ ਨਾ ਉਹਦੇ ਅਨਸਾਰ ਹੀ ਚੱਲਣਾ ਪਾਣੀ ਦੀ ਲੋੜ ਹੈ ਪਾਣੀ ਪੀ ਲੈ ਦੇ ਬੀਤੇ ਬਿਲਕੁਲ ਨਹੀਂ ਰੋਣਾ ਹੈਗਾ ਠੰਡੇ ਪਾਣੀ 'ਚ ਖੜਨਾ ਨਹੀਂ ਹੈ ਖੜ ਕੇ ਮਾਲਾ ਨਹੀਂ ਫੇਰਨੀ ਢੂਰੀਆਂ ਹੋ ਫਿਰ ਉਹ ਕੀ ਕਰਦੇ ਨੇ ਉਹ ਫਿਰ ਕੁਚਲੇ ਖਾਂਦੇ ਨੇ ਕੋਈ ਕੁਝ ਖਾਂਦਾ ਕੋਈ ਸੰਖੇਤ ਅਖ ਦੁੱਧੇ ਰ ਵੀ ਪਾਣੀ ਜੇ ਪਾਣੀ ਪਈਏ ਮਰ ਕੁਝ ਕੁਚਲੇ ਖਾਂਦਾ ਕੁਝ ਕੁ ਕਰਦਾ ਹੁਣ ਸਾਡੇ ਤੇ ਪਾਣੀ ਪਾਓ ਕੀ ਫਾਇਦਾ ਇਸ ਗੱਲ ਦਾ ਧੋਖਾ ਕਿਨੂੰ ਦਿੰਦੇ ਤੁਸੀਂ ਲੋਕ ਕਹਿੰਦੇ ਨੇ ਪਤਾ ਨਹੀਂ ਕਿਉਂ ਬੈਠੇ ਨੇ ਬੈਠੇ ਰਹਿੰਦੇ ਨੇ ਨਾ ਪਾਣੀ ਪਾਓ ਸਭ ਬਰਝੂਗਾ ਬੰਦਾ ਉਹ ਇਹਨੇ ਪਾਣੀ ਨਾਲੇ ਸਕਦਾ ਉਹ ਤੁੜੀਆਂ ਦਾਬਦਨ ਕੁਝ ਹੋਰ ਖਾਂਦੇ ਨੇ ਉਹ ਅੱਗ ਤੋਂ ਖਲਾਫ ਜੀ ਐਦਾਂ ਕਰਦੇ ਨੇ ਇਹ ਨਾਟਕ ਚੜਕਦੇ ਇਹਨੂੰ ਨਾਟਕ ਚੜਕਿਆ ਹੈ ਨਾਟਕ ਚੜਕ ਕੀ ਕਾਜਾ ਪ੍ਰਭੂ ਲੋਰ ਕਹ ਆਵਤ ਲਾ ਪਰ ਆਪਣੇ ਲੋ ਲੋ ਸ਼ਰਮੰਦ ਰੇ ਨਾ ਗੱਲਾਂ ਤੇ ਇਹ ਗੱਲਾਂ ਹੋਇਆ ਗਲਤੀਆਂ ਥੋੜੀ ਨੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀਆਂ ਗੱਲਾਂ ਨੇ ਧਰਮ ਨਹੀਂ ਹੈ ਧਰਮ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਨਹੀਂ ਹੁੰਦਾ ਧਰਮ ਲੋਕਾਂ ਨੂੰ ਅਕਲ ਦੇਣ ਵਾਸਤੇ ਆਪ ਅਕਲ ਹਾਸਲ ਕਰਦੀ ਲੋਕਾਂ ਨੂੰ ਅਕਲ ਦੇਣੀ ਇਹ ਧਰਮ ਹਾਂਜੀ ਕਹੂੰ ਸ਼ਸਤਰ ਧਰਮ ਕਹੂੰ ਸ਼ਸਤਰ ਧਰਮ ਕਿਤੇ ਸ਼ਸਤਰ ਧਾਰ ਹੈ ਸ਼ਸਤਰ ਧਾਰ ਕੂਏ ਬੇਵਕੂਫ ਨਹੀਂ ਸ਼ਸਤਰ ਧਾਰੇ ਪਕੜਵਾਦ ਨੂੰ ਘਟਦੀ ਹੈ ਜੇ ਪਹਾੜਵਾਲ ਨੂੰ ਕੱਟਦੀ ਹੈ ਚਾਹੇ ਤੀਰ ਆ ਉਹਦੀ ਧਾਰ ਵੀ ਹੁੰਦੀ ਹੈ ਤਲਵਾਰ ਦੀ ਧਾਰ ਵੀ ਹੁੰਦੀ ਹੈ ਚੱਕਰ ਦੀ ਧਾਰ ਵੀ ਹੁੰਦੀ ਹੈ ਸ਼ਸਤਰ ਦੀ ਧਾਰ ਹੈ ਸ਼ਸਤਰ ਦੀ ਧਾਰ ਬਰਮ ਦਾ ਨਾਸ ਕਰਦੀ ਹੈ ਪਹਾੜਵਾਲ ਨੂੰ ਕੱਟਦੀ ਹੈ ਕਹੂੰ ਹੋਮ ਪੂਜਾ ਕਹੂੰ ਦੇ ਵਰਚਾ ਪੂਜਾ ਕਿਤੇ ਹੋਵੇਂ ਕਰੀ ਜਾਂਦੇ ਨੇ ਪੂਜਾ ਕਰਦੇ ਨੇ ਹੋਮ ਕਰਦੇ ਨੇ ਕਰਦੇ ਨੇ ਨਾ ਕਿੱਤੇ ਦੇਵਤਿਆਂ ਦੇ ਅੱਗੇ ਚੜਾਉਣਾ ਕੋਈ ਚਰਚਾ ਕਰਦੀ ਅਰਚਨਾ ਦੇਵਰਚਾ ਅਰਚਾ ਪੂਜਾ ਲੋਕਾਚਾਰ ਉਹ ਅਰਚਨਾ ਕੋ ਜਿਹੜਾ ਚੜਾਉਦੇ ਦੇਵਤਿਆਂ ਦੇ ਉੱਤੇ ਹਾਂਜੀ ਕਹੂੰ ਪਿੰਗਲਾ ਚਾਰਨੀ ਗੀਤ ਚਰਚਾ ਕਹੂੰ ਪਿੰਗਲਾ ਚਾਰਨੀ ਗੀਤ ਅਰਚਾ ਕਿਤੇ ਪਿੰਦਲ ਦੀ ਪੜਾਈ ਫੜਦੇ ਨੇ ਹਫ਼ਤਾ ਜਿੱਥੋਂ ਪਿੰਦਲ ਦੀ ਪੜਾਈ ਹੁੰਦੀ ਹੈ ਜਿਹਦੇ ਨਾਲ ਹਫ਼ਤਾ ਲਿਖੀ ਜਾਂਦੀ ਹੈ ਪਿੰਦਲ ਤੋਂ ਬਿਨਾਂ ਹਫ਼ਤਾ ਨਹੀਂ ਲਿਖੀ ਜਾਂਦੀ ਪਿੰਦਲਾ ਚਾਰਨੀ ਪਿੰਦਲ ਦੀ ਪੜਾਈ ਕਰ ਰਹੇ ਨੇ ਅਚਨ ਕਿਤੇ ਪਿੰਗਲ ਦੀ ਪੜ੍ਹਾਈ ਕਰਵਾ ਰਹੀ ਹੈ ਬੁੱਧ ਇਹ ਜੋਤ ਚਾਰਨੀ ਗੀਤ ਚਰਚਾ ਔਰ ਗੀਤਲ ਦੇ ਅਡ ਅਡ ਗੀਤਾਂ ਦਾ ਨੌਰ ਰੱਖੇ ਜਾਂਦੇ ਨੇ ਚਰਚਾ ਹੁੰਦੀ ਹੈ ਇਦੀਆਂ ਵਸਤਰਾ ਇਦੀਆਂ ਚਾਹੀਦੀਆਂ ਇਦੀਆਂ ਇਦੀਆਂ ਵਿਦਿਆ ਕਹੂੰ ਕਿਤੇ ਵੀਨ ਵਿਦਿਆ ਵੀਨ ਵਿਦਿਆ ਵੀ ਤਾਂ ਅਖਿਰਤੋਂ ਫਾਇਦਾ ਹੋਣੀ ਹੈ ਆਤਮਾ ਦਾ ਸਭ ਗਿਆਨ ਫਾਇਦਾ ਹੋਣਾ ਹਰ ਪ੍ਰਕਾਰ ਦਾ ਸंसारी ਗਾਨ ਵੀ ਆਤਮਾ ਨੇ ਫਾਇਦਾ ਕੀਤਾ ਕਹੂੰ ਵੀਨ ਵਿਦਿਆ ਕਹੂੰ ਗਿਆਨ ਗੀਤੰ ਕਹੂੰ ਗਾਣ ਗੀਤੰ ਕਿਤੇ ਗੀਤੇਦਾਰ ਰਹੇ ਨੇ ਸਾਜ ਕੱਲਾ ਵਜਾਉਣਾ ਹੋਰ ਗੱਲ ਐ ਸਾਜ ਤੋਂ ਹੀ ਉਹ ਟੂਰ ਕਰਨੀ ਗੀਤ ਗਾਣੇ ਉਹ ਸਮਝੋ ਆਦਮੀ ਦੇ ਗਲੇ ਦੀ ਗੱਲ ਐ ਗੀਤਾਂ ਦੇ ਗਾਣ ਹੋ ਰਹੇ ਨੇ ਕਹੂੰ ਭਾਖਿਆ ਕਹੂੰ ਬੇਦਰੀਤੰ ਕਹੂੰ ਬਲੇਸ਼ ਭਾਖਿਆ ਬਲੇਸ਼ ਭਾਖਿਆ ਕੀ ਹੁੰਦੀ ਉਲਟਾ ਉਪਦੇਸ਼ ਕਰਨਾ ਦੁਰਮਤਾ ਦਾ ਉਪਦੇਸ਼ ਕਰਦੋ ਦੁਰਮਤ ਦਾ ਉਪਦੇਸ਼ ਮਲੇਸ਼ ਪਖਿਆ ਬੇਦ ਬਪ੍ਰੀਤ ਬੇਦ ਤੋਂ ਬਪ੍ਰੀਤ ਗਿਆਨ ਤੋਂ ਬਪ੍ਰੀਤ ਗੱਲ ਫਸਾਉਣ ਵਾਲੀ ਗੱਲ ਜਿਹੜੀ ਨਾ ਹਰ ਨਾ ਬਾਜਾ ਤੇ ਸਿੱਖ ਦਾ ਰੈ ਨਾ ਪੜਿਆ ਨੋ ਫਾਈ ਲੱਗੀ ਉਹਦੇ ਵਾਸਤੇ ਕੋਈ ਲਫ਼ਜ਼ ਸਾਰਿਆਂ ਵਾਸਤੇ ਕਹੂੰ ਮਲੇਸ਼ ਪਖਿਆ ਮਲੇਸ਼ ਪਖਿਆ ਮਲੇਸ਼ ਪਖਾ ਕਹਿੰਦੇ ਐਸੀ ਬੋਲੀ ਭਾਸ਼ਾ ਐਸਾ ਉਪਦੇਸ਼ ਜਿਹਦੇ ਨਾਲ ਮਿਰਦਾ ਬਲੀਰ ਹੋਵੇ ਜਾਇਓ ਕਹੇਵੇ ਤੋਂ ਆਓ ਇਹ ਤੋਂ ਸੁਖਾ ਪੂਰੀਆਂ ਹੁੰਦੀਆਂ ਇਹ ਵੀ ਬਲੇਸ਼ਪਕ ਸੁਭਜਨੀ ਇੱਥੇ ਜੋ ਵੀ ਸੰਸਾਰੀ ਪ੍ਰਾਪਤੀ ਦੀਆਂ ਗੱਲਾਂ ਨੇ ਇਬਲੇਸ਼ਪਕ ਇਹ ਯਾਰ ਲੜੀਂ ਜਿਹੜਾ ਮਨ ਮੈਲਾ ਹੁੰਦਾ ਕਹੂੰ ਬੇਦ ਰੀਤੰ ਕਿਤੇ ਬੇਦ ਰੀਤ ਹੈ ਬੇਦ ਕੀ ਹੈ ਬੇਦ ਰੀਤ ਗਿਆਨ ਚਲਨ ਕਰਨਾ ਤੂੰ ਇਹਦੇ ਚਲਨ ਕਰਨਾ ਭਰਮ ਦਾ ਨਾਸ ਕਰਨਾ ਸਗੋ ਬੇਦਰੀਤ ਇਹ ਤੇ ਉਲਟਾ ਬਲੇਸ਼ਬਖ ਕਹਦੇ ਬੇਦਰੀਤ ਉਲਟਾ ਹੈ ਗੁਰਮਤਿ ਦਾ ਉਪਦੇਸ਼ ਆਡਾ ਹੈ ਬਾਕੀ ਸਾਰੀਆਂ ਬੱਤਾਂ ਇੱਕ ਪਾਸੇ ਖੜੀਆਂ ਨੇ ਬਲੇਸ਼ਬਖ ਕਹੋ ਬਲੇਸ਼ਬਖ ਕਹੋ ਜਿਹੜੀਆਂ ਨਾਮ ਉਹਿਲਦਾਰ ਨੂੰ ਪੈਸਾ ਵਟੇ ਨਹੀਂ ਮਿਲਦਾ ਮੰਦਰ ਆਮ ਲਈ ਉਹ ਹੈ ਮੋਲ ਬਾਕੀ ਸਾਰੇ ਤਰਫ ਪੈਸਿਆਂ ਨੂੰ ਮਿਲਦੇ ਸਾਰੇ ਸੰਤ ਚੜਾਵਾ ਹੀ ਲੈਂਦੇ ਨੇ ਦੁਨੀਆਵੀ ਬਾਜ਼ਾਰਸਾਂ ਨਾਲ ਮਿਲ ਜਾਂਦੇ ਨੇ ਦੁਨੀਆਵੀ দান ਫੁੱਲ ਜਮੀਨ ਦਾ দান ਕਰਿਆ ਗਊ ਦਾ দান ਕਰਿਆ ਹਾਥੀ ਦਾ দান ਕਰਿਆ ਸੋਨਾ দান ਕਰਿਆ ਬਾਕੀ ਧਰਮ ਦੇ ਵਿੱਚ ਐਸੀ ਚੀਜ਼ਾਂ ਦਾ ਸਾਡੇ ਦਾਨ ਦੀ ਹੈ ਕਰੀ ਜਾਂਦਾ ਨਾ ਭਾਬੇ দান ਨਹੀਂ ਹੈ ਮੰਨਿਆ ਨਹੀਂ ਹੋਇਆ ऐसे दान देते ना तो कीजा हर के नाम पे ना तो पूछो बिल्कुल हर के नाम ते मिलदी हर का नाम फ्री छे दान पैसे दे उधर फायदा की होया जो ओदे बराबर ही नहीं इत्ते मिलदा है नाम मन दे राव लियो है बोल मन बेचे साधु कु साधु के पास एदे वत्ते मिलदा और किते भी मिलदैन दी रोल ਇਤਨੀ ਬਲ ਦਾ ਹੋਰ ਕੁਛ ਬਿਨਾ ਬਲ ਤੇ ਤਾਂ ਮੰਨ ਤੁਹਾਨੂੰ ਸਭ ਸੋਪੁਰ ਕੋ ਉਹ ਕੋ ਬੰਨਿਆ ਪਈਆ ਤਾਂ ਪ੍ਰਾਪਤੀ ਹੋਰ ਧਰਮਾਂ ਦੀ ਗੱਲ ਹੀ ਕਹੂੰ ਨਿਤ ਵਿਦਿਆ ਕਹੂੰ ਨਾਗ ਬਾਣੀ ਕਹੂੰ ਕਹੂੰ ਨਿਤ ਵਿਦਿਆ ਨਿਤ ਵਿਦਿਆ ਕਿਤੇ ਨਾਚ ਦੀ ਵਿਦਿਆ ਅੱਗੇ ਨਿਰਤ ਨੂੰ ਧਰਮ ਦੇ ਵਿੱਚ ਧਰਮ ਦਾ ਅੰਗ ਬਣਿਆ ਹੈ ਆੜੇ ਦਿਸਦਾ ਨਾ ਧਰਮ ਦਾ ਅੰਗ ਬਣਿਆ ਹੈ ਸ਼ਾਸਤਰੀ ਦੇ ਸੰਗੀਤ ਦੇ ਉੱਤੇ ਇਹ ਨਿਰਤਨ ਇਹ ਧਰਮ ਦਾ ਅੰਗ ਮੰਨਿਆ ਜਾਂਦਾ ਹੈ ਇਹ ਆਪਣੇ ਲੋਕਾਂ ਨੂੰ ਨਹੀਂ ਪਤਾ ਸ਼ਬਦ ਵੀ ਆਇਆ ਨਾ ਜਨਨ ਜੇ ਰਚਨਾ ਤਾਂ ਮੰਦੇ ਨਾਲ ਲੱਚੇ ਬੁੱਧੀ ਅਰਮਨ ਲਚਣ ਸਰੀਰ ਦੇ ਹਲੇ ਧਰਮ ਦਾ ਅੰਗ ਮੰਨਿਆ ਅਸੀਂ ਕੱਟਦਾ ਇਹ ਨਹੀਂ ਧਰਮਾਂਗ ਨਹੀਂ ਹੈ ਵਰਮਤ ਨਹੀਂ ਮੰਦੀ ਗਿਰੂ ਇਹ ਨਚਣ ਕੋ ਤਾਂ ਕਾ ਚਾਹੋ ਹੈ ਨਚਣ ਕੁੱਦਣ ਕੁੱਦਲਾ ਸ਼੍ਰੀਨਾ ਕੋਦਦਾ ਨਚਣ ਕੁੱਦਣ ਮਨ ਕਾ ਚਾਵਤ ਨਾਨਕ ਜਨਮ ਨ ਭਉਤ ਨਾ ਬੁਲਕਾਉ ਇਨਾਂ ਦੇ ਅੰਦਰ ਭਇਆ ਹੁਕਮ ਦਾ ਉਹਨਾਂ ਦੇ ਅੰਦਰ ਪ੍ਰੇਮ ਇਹ ਅੰਗ ਹੈ ਟਾਈਗਰ ਧਰਮ ਵਗੈਰਾ ਉਹਨਾਂ ਦੇ ਹੈ ਨਾ ਉਹ ਤੇ ਕਿੰਦਰ ਧਰਮ ਗਾਨ ਕਰੇ ਗਣ ਜਚ ਪਛੇ ਨਿਰਤ ਦਿਖਾਵੇ ਇਹ ਦੇਵਤਿਆਂ ਦੀ ਸਵਾ ਦੇ ਵਿੱਚ ਧਰਮ ਦਾ ਅੰਗ ਬਣਿਆ ਹੈ ਗੁਰਮਤ ਦੇ ਵਿੱਚ ਨਹੀਂ ਹੈ ਅੰਕ ਕਹੂੰ ਨਾਗ ਬਾਣੀ ਸਾਡੇ ਦਾ ਜਿਹੜੇ ਇਸ਼ਾਰਾ ਵੀ ਕਰਦੇ ਨੇ ਹੱਥ ਦਾ ਇਹ ਅੱਖਰ ਦਾ ਪਵਨਗ ਵੱਲੋਂ ਸੰਗਤ ਵੱਲੋਂ ਝਾਕ ਕੇ ਉਹ ਵੀ ਮਨਾ ਕੀਤਾ ਗੁਰੂ ਜੇ ਤੁਸੀਂ ਨਾਮ ਨਾਲ ਜੁੜ ਕੇ ਗਾ ਰਹੇ ਹੋ ਤੁਹਾਡਾ ਵਾਸਤਾ ਜਾਇ ਨਹੀਂ ਸਕਦਾ ਪਰ ਅਗਿਆਨ ਧਿਆਨ ਭਰਨ ਤਾਂ ਹੀ ਨਾ ਰੋਗੀ ਘੇਰਾ ਗਿਆ ਇਹ ਦੇਖਦੇ ਨੇ ਮੇਰੀ ਇੱਕ ਹੋਈ ਗੱਲ ਦਾ ਲੋਕਾਂ ਤੇ ਕੀ ਅਸਰ ਪੈਂਦਾ कीर्तन ਕਰੀਦਾ ਆਪਣੇ ਵਾਸਤੇ ਗਾਈਦਾ ਲੋਕਾਂ ਵਾਸਤੇ ਗੌਣੇ ਵਾਲੇ ਲੋਕਾਂ ਵਾਸਤੇ ਕਹਿੰਦੇ ਨੇ ਗੌਣੇ ਵਾਲੇ ਲੋਕ ਲੈ ਕੇ ਜਾਂਦੇ ਕਿਉਂ ਲੈ ਕੇ ਜਾਂਦੇ ਨੇ ਵਿਹਾਂਜ ਕਿਉਂ ਲੈ ਕੇ ਜਾਂਦੇ ਨੇ ਕਿਉਂ ਬਾਹਰ ਲੈ ਲੋਕੋ ਤੇ ਇਕੱਠੇ ਹੁੰਦੇ ਨੇ ਲੋਕਾਂ ਵਾਸਤੇ ਗੌਣੇ ਵਾਲੇ ਆਉਂਦੇ ਨੇ ਆਪਣੇ ਵਾਸਤੇ ਨਹੀਂ ਆਉਂਦੇ ਹੋ ਕੀਰਤਨ ਕਰੀਦਾ ਆਪਣੇ ਵਾਸਤੇ ਗਾਈਦਾ ਲੋਕਾਂ ਵਾਸਤੇ ਇਸ ਕਰਕੇ ਲੋਕ ਕੀ ਦਿੰਦੇ ਲੋਕ ਦੇ ਦਿੰਦੇ ਵਾਇਆ ਵੱਟੇ ਕਹੀ ਦੱਸਦੇ ਰਗ ਵਦਿਆ ਮਾਇਆ ਵੱਟੇ ਲੋਕਾਂ ਵਾਸਤੇ ਆਭਰੂ ਲਾਵੇ ਸਧਾਰੀ ਮਾਇਆ ਦਾ ਲੋਕਾਂ ਦਾ ਬਨੋਰੰਜਨ ਬਨੋਰੰਜਨ ਇਹ ਘਰ ਦੇ ਵਿੱਚ ਹੋਰ ਕੁਛ ਨਹੀਂ ਕਰਦਾ ਜਿਹੜਾ ਹੈ ਕੀਰਤਨ ਉਹ ਕਰਦੇ ਸੀ ਕੀਰਤਨ ਐਸਲ ਚ ਕੀਰਤਨ ਕੀਆ ਉਹ ਸ਼ਬਦ ਦਾ ਲੰਗਰ ਕੀਰਤਨ ਦਾ ਵਿਆਖਿਆ ਕਰਦੀ ਅੰਦਰ ਕੀਰਤਨ ਕੇਵਲ ਵਖਿਆਨ ਗ੍ਰਸਤ ਮੈਸ ਹੁੜ ਦਰਵਾਣ ਕੀਰਤਨ ਦਾ ਵਿਆਖਿਆ ਦਾ ਨਾ ਵਖਿਆ ਕਰਨੀ ਕੀਰਤਨ ਵਿਆਖਿਆ ਤਾਂ ਕਰ ਉਹਦੇ ਤਾਂ ਕੀ ਕਿਸੇ ਦੀ ਲੋੜ ਹੈ ਨਹੀਂ ਵਿਆਖਿਆ ਦੇ ਵਿੱਚ ਲੋੜ ਨਹੀਂ ਨੇ ਚੀਜ਼ਾਂ ਦੀ ਇਸ ਕਰਕੇ ਜਿਹੜੇ ਗਾਣ ਵਾਲੇ ਰਾਗੇ ਨਾ ਦੀ ਬੇਦੀ ਰਹਿਣਾ ਉਹ ਭੰਤਕਾਰ ਨੇ ਹਰ ਹਰ ਪੀਜੇ ਲਿਖਿਆ ਹੈ ਉਹ ਕਹਿੰਦੇ ਨੇ ਲੋਕਾਂ ਵਾਸਤੇ ਕੀਰਤਨ ਹੁੰਦਾ ਆਪਣੇ ਵਾਸਤੇ ਨਾਂ ਕਪੜਿਆਂ ਵਾਸਤੇ ਘਾਰੇ ਨਾਂ ਕਦੇ ਨਾ ਯਾਦ ਗਾਇਆ ਪਬਲਿਕ ਜਿਨੀ ਗਾਇਆ ਕੱਲੇ ਨੇ ਗਾਇਆ ਜਦ ਕੀਰਤਨ ਕੀਤਾ ਤਾਂ ਕੱਲੇ ਆਲੇ ਕੀਤਾ ਬਾਹਰ ਸ਼ਬਦ ਲਿਖ ਲਏ ਨੇ ਲੋਕਾਂ ਨੂੰ ਲਿਖ ਦੇ ਦਿੱਤੀਗੇ ਪਬਲਿਕ ਜਾ ਕੇ ਕਹਿੰਦੇ ਨਹੀਂ ਸੀ ਬਿਲਕੁਲ ਵੀ ਹਾਂ ਪਬਲਿਕ ਚਰਚਾ ਕਰਦੇ ਸੀ ਪਬਲਿਕ ਜੇ ਕੀਤੇ ਗਿਆਨ ਚਰਚਾ ਕੀਤੀ ਗਾਂ ਚਾਚਾ ਹੋਰ ਗੱਲ ਗਾਂ ਚਾਚਾ ਵੀ ਬਖਾਨਾ ਹੁੰਦਾ ਕਿਸ ਹੁੰਦਾ ਗਾਂ ਚਾਚਾ ਵੀ ਬਖਾਨਾ ਨਹੀਂ ਹੁੰਦਾ ਨਾ ਹੁੰਦਾ ਕਹੂੰ ਨਾਗਬਾਣੀ ਕਹੂੰ ਨਾਗਬਾਣੀ ਨਾਗਬਾਣੀ ਕੀ ਹੈ ਨਾਗਬਾਣੀ ਜਿਹੜੀ ਜੈਜਾੜਦੇਵੇ ਨਾਗਵਾਰਦੇਵੇ ਮਾਇਦਾ ਮਾਇਦਾ ਟੀਕਾ ਲਾਦੇਵੇ ਉਹ ਨਾਗਬਾਣੀ ਆ ਜਿਹੜੀ ਕਹਿੰਦੇ ਮਾਤਾ ਸਹਰ ਖਣਿਦੋ ਸੱਤ ਪੁੱਤ ਦੇ ਤੇ ਇੱਥੇ ਦਾ ਸਾਥ ਆਪਣਾਤਾ ਨਾਗਵੜੀ ਹੈ ਬਹੁਤ ਪੁਰਾਣੇ ਡੰਗ ਵਾਰਦੀ ਹੈ ਉਹ ਜਿਹੜਾ ਪਿਗਲਾ ਠੀਕ ਹੋ ਗਿਆ ਸੀ ਨਾ ਕਹਾਣੀ ਸੀ ਉਹ ਵੀ ਨਾਗਵੜੀ ਹੈ ਇਹ ਭੋਰੇ ਜਿਹੇ ਬੈਠਣ ਵਾਲੇ ਸਾਧਿਆਂ ਦੇ ਦਿਮਾਗ ਦੇ ਉੱਪਰ ਹੈ ਜਿਹੜੇ ਭੋਰਿਆਂ ਚ ਰਹਿੰਦੇ ਨੇ ਸਪਰੇ ਤੋਂ ਨਾ ਖਾੜਚ ਉੱਥੇ ਬਣਾਉਂਦੇ ਰਹਿੰਦੇ ਨੇ ਬੈਠ ਕੇ ਇਹ ਲੋਕਾਂ ਨੂੰ ਕਹੇ ਕੀ ਕਿ ਇਹ ਗੱਲ ਕਹਿ ਦੀ ਇਹਨਾਂ ਨੂੰ ਕਹੇ ਜੀ ਕਹਾਣੀ ਸੁਣਾ ਰਹੀ ਹੈ ਜਿਹਦਾ ਫਸ ਕੇ ਰਹਿ ਜਾਵੇ ਇਹਨਾਂ ਆਗਵਾਣੀ ਹੈ ਇਹਨਾਂ ਦੀ ਇਹ ਮਾਇਆ ਦਾ ਲੰਗ ਹੈ ਤੇ ਦੇਖ ਕੀ ਨਿਕਲਦਾ ਦੁੱਖ ਮਾਇਆ ਨਾਗਣੀ ਨਾਗ ਚਲਾਵੇ ਕੀ ਦੁੱਖ ਖਾਲਸਾ ਸੀਸ ਤੇ ਖਾਵੇਂਗੇ ਜੇ ਤੂੰ ਇਹ ਮਾਇਆ ਦਾ ਨਾਗ ਚੱਲ ਗਏ ਉਹਨਾਂ ਦੁੱਖੇ ਦੁੱਖ ਨੇ ਕਪੁੱਤੀ ਗੰਢ ਭਵੇ ਸੰਸਾਰ ਗਾਰਿਵਾਨ ਸੰਸਾਰ ਨਾਲ ਘੰਡਿਆ ਜਾਊਗਾ ਪੁੱਤਾਂ ਦੇ ਨਾਲ ਸੰਸਾਰ ਨਾਲ ਅਗਨ ਸਾਗਰ 'ਚ ਰਹਿ ਜਾਂਦਾ ਪੁੱਤਾਂ ਨਾਲ ਜਿਹੜਾ ਕਹਿੰਦਾ ਮੇਰਾ ਕੋਈ ਨਹੀਂ ਮੈਂ ਕਿਸੇ ਦਾ ਨਹੀਂ ਉਹ ਹੀ ਜਾਂਦਾ ਸੰਸਾਰ 'ਚੋਂ ਛੁੱਟ ਕੇ ਇਹਦਾ ਪਰਵਾਹ ਸੰਸਾਰ 'ਚ ਰਹਿ ਜਾਂਦਾ ਉਹ ਦੀ ਉਹ ਸੰਸਾਰ 'ਚੇ ਰਹਿੰਦੇ ਭੂਤ ਪ੍ਰੇਤ ਬਣ ਕੇ ਇੱਥੇ ਇੱਥੇ ਇੰਦਾ ਰਹਿੰਦਾ ਰਹਿੰਦਾ ਜਾਨੂ ਲੋਕਾਂ ਨੂੰ ਕੀ ਪਤਾ ਇਹਨਾਂ ਨੂੰ ਕੀ ਜਾਣਨੇ ਇਹਨਾਂ ਦੇ ਤਾਂ ਕੁਲਾ ਜਲਨੀ ਚਾਹੀਦੀਆਂ ਨੇ ਇੱਥੇ ਆਉਂ ਉਹ ਤਾਂ ਗੋਲ ਚਲਾਉਣੀ ਚਾਹੁੰਦੇ ਨੇ ਸਾਰੇ ਲੋਕ। 나ਗਵਾਣੀ ਦੇ ਡੱਸੇ ਹੋਣੇ। ਇਹ ਹੀ 나ਗਵਾਣੀ ਆ ਉਹਦੇ ਡੱਸੇ ਹੋਣੇ ਯਾਰ ਚੜੀ ਹੋਈ ਆ। ਕਹੂੰ ਗਾਰਲੂ ਜੋਗੀ ਨਾ ਇੱਥੇ ਸਦਨ ਹੀ ਰਹੇ। ਸਿਧਾਂਦੇ ਜੇਲੇ ਨੇ ਸਾਰੇ ਹੁਣ ਤੇ ਦਾ ਪਾਈ ਫਿਰਦੇ ਨੇ ਗਨਾਂ ਚ। ਸਿਧਨ ਆ ਗਏ ਸੀਗੇ ਜਿਹੜੇ ਸੱਪ ਰੱਖਦੇ ਨੇ। ਸੱਪ ਪਰ ਰਾਗ ਜਹਾਜ਼ੀ ਨੂੰ ਚੜਦੀ ਨਹੀਂ ਵਰਦੇ ਨੀ ਆ ਬਣਾ ਕਰਨ। ਸ਼ਿਵ ਦੇ ਭਗਤ ਕੋਣ ਨੇ ਨਾਗ ਬਾਣੀ ਹੋਈ ਉਹਨਾਂ ਕੋ ਹੋਰ ਕੀ ਹੈ ਸ਼ਿਵ ਦੇ ਚੇਲੇ ਕੋ ਹੋਰ ਕੀ ਹੋਊਗਾ ਉਹਨਾਂ ਸਹੂੰ ਗਾਰੜੂ ਗੂੜ ਕਥਾ ਕਹਾਣੀ ਆ ਕਾਹੂ ਗਾਰੜੂ ਹੈ ਨਾਗ ਰੂ ਵਜ ਡੰਗ ਜਿਹੜਾ ਵਾਰਿਆ ਨਾਗ ਦਾ ਵਾਇਆ ਦਾ ਉਹਨੂੰ ਰੋਹਣ ਵਾਲਾ ਡੰਗ ਨੂੰ ਲੋਹਣ ਵਾਲਾ ਜਿਹੜਾ ਜ਼ਹਿਰ ਨੂੰ ਉਤਾਰਨ ਵਾਲਾ ਗਾਰੜੂ ਹੈ ਕਥਾ ਕਹਾਣੀ ਆ ਦਾ ਗਿਆਨ ਹੈ ਜਿਹੜਾ ਇਹ ਗਾਰੜੂ ਹੈ ਗਾਰੜੂ ਹੈ ਇਹ ਗਾਰੜੂ ਗੁਰ ਗਿਆਨ ਗਾਲੜ ਮੁਖ ਪਾਇਆ ਗੁਰਬਾਦੀ ਜਿਹੜੀ ਵਿਆਖਿਆ ਕਰਨ ਵਾਲਾ ਉਹ ਗਾਲੜੂ ਹੁੰਦਾ ਉਹ ਜੈ ਲੱਦਦਾ ਉਹਦੀ ਇਹ ਦੱਸ ਕੇ ਵੀ ਇਹ ਤਾਂ ਤੁਹਾਨੂੰ ਆਇਆ ਨਾ ਜੋੜਨ ਵਾਲੀ ਗੱਲ ਹੈ ਜਿਹੜਾ ਕਿ ਨਾ ਪੁੱਤੀ ਗੰਢ ਭਵੇ ਸੰਸਾਰ ਸਿਫਤੀ ਗੰਢ ਭਵੇ ਦਰਬਾਰ ਜੇ ਦਰਬਾਰ ਜਗਣਾ ਆ ਉਹਦੀ ਸਿਫਤ ਕਰੋ ਜੇ ਸੰਸਾਰ ਦੇ ਵਿੱਚ ਗੱਲ ਰੱਖਣੀ ਪੁੱਤਾਂ ਦਾ ਇੱਛਾ ਰੱਖੀ ਜਾਓ ਇਨਾ ਬਾਤ ਤੇ ਕਰੀ ਜਾਓ ਵਹਾਂ ਸੰਸਾਰ ਦੀ ਗੰਡ ਐ ਇੱਧਰ ਚੱਲੋ ਚਾਹੇ ਇੱਧਰ ਚੱਲੋ ਯਾਰ ਤਾਂ ਲਾਤੀ ਨਾ ਓਹ ਲੈਂਦੀ ਐ ਜਹਾੜ ਹਾਂਜੀ ਕਹੂੰ ਅਛਰਾ ਪਛਰਾ ਮਛਰਾ ਹੋ ਕਹੂੰ ਅਛਰਾ ਪਛਰਾ ਵਛਰਾ ਹੋ ਅਛਰਾ ਤਿੰਨੇ ਨੇ ਇਹ ਤਿੰਨੇ ਦੇਵੀਆਂ ਨੇ ਤਿੰਨੇ ਵਾਲੀਆਂ ਨੇ ਤੇ ਲੋਕੇ ਸਮਝਦੇ ਉਪਦੇਸ ਨੇ ਨੇ ਅਛਰਾ ਹੋ ਗੇ ਤਾਂ ਕਿਤੇ ਦਾ ਅਛਰਾ ਚ ਵਾਲੀ ਬੋਲੀ ਗਈ ਜਿਹੜੀ ਗੱਲ ਹੈ ਉਹ ਹੈ ਕਿਤੇ ਮਛਰਾ ਹੋ ਪਛਰਾ ਮਛਰਾ ਹੋ ਹਾਂ ਪਛਰਾ ਹੋ ਕਿਤੇ ਜੋ ਮੰਦੇ ਵਿੱਚ ਹੀ ਹੈ ਬੋਲੀ ਜੋ ਬੋਲ ਦੇ ਵਿੱਚ ਹੀ ਹੈ ਅਜਾ ਮੰਦੇ ਵਿੱਚ ਕਹੀ ਨਹੀਂ ਗਈ ਗੱਲ ਇੱਕ ਗੱਲਾ ਜੋ ਬੂਹ ਦੇ ਵਿੱਚ ਹੈ ਇਹ ਤਿੰਨ ਲੋਕ ਦੀ ਬਾਣੀ ਹੈ ਇੱਕ ਤਾਂ ਗੱਲ ਕਹੀ ਹੋ ਗਈ ਬੱਚੇਰਾ ਤਾਂ ਮਨ ਦੇ ਵਿੱਚ ਹੀ ਆ ਜਾਣਾ ਬਾਣੀਆਂ ਨੇ ਨਾ ਬਾਣੀਓ ਬਾਣੀਆਂ ਦਾ ਉਚਾਰ ਨੇ ਇਹ ਚ ਬੈਠਰੀ ਨਹੀਂ ਆਈ ਹੋਈ ਬਾਣੀਆਂ ਦਾ ਉਚਾਰ ਨੇ ਬੈਠਰੀ ਨਹੀਂ ਆਈ ਹੋਈ ਬੈਠਰੀ ਤਾਂ ਫਿਰ ਆਪ ਸਮਝਣੀ ਤਾਂ ਆਪ ਹੈ ਰੋ ਫਿਰ ਸਮਝਣ ਵਾਲੀ ਗੱਲ ਤਾਂ ਉਹਦੇ ਤੇ ਹੈ ਜਿਹਨੇ ਸਮਝਣੀ ਹੈ बोलण वाले को तन्नु नहीं। पछरा हो। पछरा मच्छरा हो। पछरा हो जड़े बोलया गया वो गल ली हो ओदे तो हटा के ना देखो ऊपर जड़ी होते बूर पानी तो हटा के ਥੱਲੇ ਕੁਛ ਆਉਦੇ। ਅੱਖਰਾਂ ਦੇਖੋ ਵੀ ਬੋਲਿਆ ਕੀ ਹੈ। ਅੱਖਰਾਂ ਦੇ ਥੱਲੇ ਦੇਖੋ ਕੀ ਹੈ। ਪਛਰਾ ਉਦੂ ਹਟਾ ਕੇ ਯਾਨੀ ਜਿਹੜੀ ਵਿਦਿਆ ਹੈ ਵਿਚਾਰ ਦੀ ਨਾ ਜਿਹੜੀ ਵਿਦਿਆ ਹੈ ਇਹ ਗੁਰਬਾ ਯਾਨੀ ਜਿਹਨੂੰ ਬ੍ਰह्म ਵਿਦਿਆ ਕਹਿੰਦੇ ਨੇ ਬ੍ਰह्म ਵਿਦਿਆ ਵਿਦਿਆ ਵਿਚਾਰੋ ਆਂ ਦਾ ਹੋ ਵੀ ਅੱਖਰਾਂ ਨੂੰ ਵਿਚਾਰੋ ਪਹਿਲਾਂ ਤਾਂ ਅੱਖਰ ਬੋਲੀ ਕੋਈ ਬੋਲ ਗੱਲ ਸੁਣੀ ਫਿਰ ਉਹ ਵਿਚਾਰੀ ਆ ਜਾਂਦਾ ਥੱਲੇ ਨਿਕਲੂ ਕੁਝ ਅਸਲ ਗੱਲ ਕੁਝ ਹੋਰ ਹੈ ਕਹੀ ਹੋਈ ਕੁਝ ਹੋਰ ਕਹਤਾ ਹੋਗੇ ਗੁੱਡ ਸਿੱਧੀ ਦਾ ਵੈਸੇ ਅਜਾ ਇੱਕ ਕਹੀ ਹੋਈ ਨਹੀਂ ਉਹ ਬੱਚਾ ਇੱਕਾ ਜਿਹਾ ਬੋਲੀ ਨਹੀਂ ਇੱਕ ਬੋਲ ਦਿੱਤੀ ਇੱਕ ਜਿਹੜੀ ਬੋਲੀ ਗਈ ਉਹਦੇ ਵਿੱਚ ਭੇਦ ਸ਼ਬਦ ਭੇਦ ਸ਼ਬਦ ਭੇਦ ਨੂੰ ਵਝਣੇ ਨੂੰ ਵਝਣ ਵਾਲੇ ਨੇ ਵਝਣ ਜੇ ਵਝਣ ਵਾਲਾ ਨਾ ਵਝਾ ਤਾਂ ਬੈਖਰੀ ਬਣ ਗਈ ਉਹਦੇ ਕੋ ਨਹੀਂ ਤਾਂ ਬਣੀ ਤਿੰਨ ਰੂਪ ਰਹੇ ਤਿੰਨ ਨੂੰ ਬੋਲਣ ਵਾਲੇ ਦੇ ਨੇ ਇਕ ਕਾਲਾ जो ਬੰਦੇ ਵਿੱਚ ਆ ਇੱਕ ਬੋਲਤੀ ਜੋ ਬੋਲੀ ਆ ਉਹ ਲੈਰੀ ਜੋ ਹੈ ਉਹ 부ਝਣ ਲਈ ਜੇ ਤਾਂ 부ਝਲੀ तो ਤਾਂ ਬੈਸਰੀ ਬਣ ਗਈ ਜੇ ਨਾ 부ਝੀ ਫਿਰ ਕੁਝ ਨਹੀਂ ਇਸ ਕਰਕੇ ਬਣਨੀ ਗੁਰਬਾਨੀ ਅਸੀਂ ਪੜਦੇ ਆ ਸਮਝ ਨਹੀਂ ਆਉਂਦੀ ਤੇ ਬੈਸਰੀ ਨਹੀਂ ਬਣੀ ਪ੍ਰਾਪਤ ਪ੍ਰਾਪਤੀ ਦਾ ਸਭ ਚਾਹੀ ਤੇ ਪ੍ਰਾਪਤੀ ਹੈ ਜਿਹੜਾ ਤੰਤਰ ਸਾਰ ਹੈ ਤੰਤਰ ਸਾਰ ਬੈਖਰੀ ਦਾ ਹੀ ਨਾਮ ਹੈ ਜੋ ਗੁਰਬਾਣੀ ਚ ਤੰਤਰ ਤਤ ਦਾ ਸਾਰ ਹੈ ਉਹ ਪ੍ਰਾਪਤੀ ਹੀ ਬੈਖਰੀ ਹੈ ਬਖਿਆਨ ਜੋ ਬਤਾ ਲੱਗਦਾ ਤਾਂ ਹੀ ਬਖਿਆਨ ਦੀ ਗੱਲ ਹੈ ਅੰਦਰ ਕੀਰਤਨ ਕੇਵਲ ਬਖਿਆਨ ਬਖਿਆਨ ਤਾਂ ਹੀ ਕਰੀਦਾ ਜੋ ਤਤ ਜਿਹੜਾ ਹੈ ਉਹਦੀ ਪ੍ਰਾਪਤੀ ਵਾਸਤੇ ਸ਼ਬਦ ਵਿਚਾਰ ਕਰੀਦਾ ਜੋ ਇਹਦਾ ਤਤ ਗਿਆਨ ਉਹਦੀ ਪ੍ਰਾਪਤੀ ਵਾਸਤੇ ਕਹੂੰ ਵੀਰ ਵਿਦਿਆ ਉਪਰ ਤੋਂ ਪ੍ਰਵਾਹ ਹੋ ਕਿਤੇ ਵਿਦਿਆਉਂਦਾ ਕਿਤੇ ਬਾਣੀ ਆਉਂਦਾ ਕਿਤੇ ਵਿਦਿਆਉਂਦਾ ਕਿਤੇ ਬਾਣੀ ਆਉਂਦਾ ਦੋ ਚੀਜ਼ਾਂ ਆ ਰਹੀਆਂ ਨੇ ਬਾਣੀ ਵਿਦਿਆ ਹੈ ਬਾਣੀ ਹੈ ਜੋ ਬੋਲਦੇ ਆ ਵਿਦਿਆ ਵੀ ਹੈ ਨਾ ਉਹਨੂੰ ਸਮਝਣਾ ਵਿਦਿਆ ਹੈ ਜਿਹੜਾ ਪੰਜਾਬੀ ਜਾਣਦਾ ਹੈ ਆਪਣੀਆ ਜਾਣਦਾ ਹੈ ਗੁਰੂ ਗ੍ਰੰਥ ਸਾਹਿਬ ਜਾਈਏ ਤਾਂ ਵੀ ਕੋਈ ਸਮਝ ਸਕੂਗਾ ਇਹ ਜੇ ਉਹਨਾਂ ਅੰਗਰੇਜ਼ੀ ਕੱਲੀ ਆਉਂਦੀ ਉਹ ਇਹਨੂੰ ਕਿਵੇਂ ਸਮਝ ਲੂਗਾ ਵਿੱਦਿਆ ਦਾ ਵੀ ਪੇਸ਼ਾ ਹੋ ਗਿਆ ਨਾ ਕੱਲੀ ਬਾਣੀ ਬਾਣੀ ਦੇ ਕਾਢ ਦਾ ਉਹਦੇ ਵੀ ਸੁਣਨ ਵਾਲੀ ਸੁਣ ਲਊ ਵੀ ਲਊਗਾ ਸਭ ਕੁਝ ਪਰ ਵਿੱਦਿਆ ਉਹ ਸਮਝ ਨਹੀਂ ਸਕਦਾ ਬਾਣੀ ਨੂੰ ਬਾਣੀ ਦੇ ਨਾਲ ਵਿੱਦਿਆ ਜੁੜੀ ਹੋਈ ਹੈ ਹਰੇਕ ਬਾਣੀ ਨਾਲ ਬੋਲੀ ਨਾਲ ਵਿੱਦਿਆ ਜੁੜੀ ਬੋਲੀ ਨਾਲ ਵਿੱਦਿਆ ਦੇ ਨਾਲ ਜੁੜੀ ਹੋਈ ਹੈ ਵਿੱਦਿਆ ਬੋਲੀ ਨਾਲ ਜੁੜੀ ਹੋਈ ਹੈ ਕਹੂੰ ਵੀਰ ਵਿੱਦਿਆ ਆਪੂਤਨ ਪ੍ਰਵਾਹੋ ਵੀਰ ਵਿੱਦਿਆ ਕਿਨੂੰ ਕਹਤੋ ਬੀਰ ਵਿਦਿਆ ਜਿਹੜੀ ਸੂਰਬੀਰ ਬਣਉਦੀ ਹੈ ਜਾਂ ਕੋ ਹਰ ਰੰਗ ਲਾਗੋ ਇਸ ਜੁਗਮ ਸੋ ਕਹੀਅਤ ਹੈ ਸੂਰਾ ਸੂਰਾ ਇਹ ਵਰਦੀ ਕਾ ਲਈਆ ਮਰਦ ਬਣਉਦੀ ਹੈ ਮਰਦ ਕੌਣ ਜਿਹਨੇ ਮਰਣਾ ਕਬੂਲ ਕਰ ਲਿਆ ਪਹਿਲਾਂ ਤੋਂ ਮਰਣਾ ਕਬੂਲ ਕੀਤਾ ਫਿਰ ਉਹਨੇ ਬਰਜੇਤਿਆ ਜਗ ਜਿੱਤ ਲਿਆ ਪਰ ਮਰਣਾ ਕਬੂਲ ਕਰਕੇ ਮਰਜੇ ਤੋ ਪਹਿਲਾਂ ਜਿੱਤਿਆ ਇਹਨੇ ਮਰਨਾ ਕਬੂਲ ਨਹੀਂ ਕੀਤਾ ਬੰਲੀ ਜੇ ਤੁੰਦਾ ਵੀਰ ਵਿਦਿਆਨ ਉਹ ਹੀ ਆ ਕਾਲ ਵਰਦੀ ਘਾਲੀ ਹੈ ਮਰਦਾਂ ਵਾਲੀ ਕਾਲ ਹੈ ਵੀਰ ਵਿਦਿਆ ਇਹ ਤੋਂ ਕੋਈ ਹੋਰ ਵੀਰ ਵਿਦਿਆ ਨਹੀਂ ਹੈ ਗੁਰਬਾਣੀ ਤੋਂ ਵੱਡੀ ਵੀਰ ਵਿਦਿਆ ਕੋਈ ਨਹੀਂ ਬਹੁਤ ਦੇ ਉਤੇ ਫਤਿਹ ਫਤਿਹ ਪਈ ਮਨ ਇਹ ਵਿਦਿਆ ਨਾਲ ਜਿਹਦੇ ਨਾਲ ਵਰਜਿਆ ਜਾਵੇ ਉਦੋਂ ਵੱਡੀ ਵਿਦਿਆ ਵੀਰ ਵਿਦਿਆ ਹੋਰ ਕੀ ਹੋਊ ਕੁਝ ਵੀ ਹੈ ਵੀਰ ਵਿਦਿਆ ਹੋਰ ਸ਼ਾਂਤਰ ਵਿਦਿਆ ਵੀਰ ਵਿਦਿਆ ਨਹੀਂ ਹੋ ਸਕਦੀ ਸ਼ਾਂਤਰ ਧਾਰੀ ਦਾ ਭਜਲੰਦੇ ਨੇ ਮਦਾਨ ਛੱਡ ਕੇ ਭਜਲਦੇ ਨੇ ਸ਼ਾਂਤਰ ਧਾਰੀ ਹੁੰਦੇ ਨੇ ਸ਼ਾਂਤਰ ਧਾਰੀ ਧਾਰੀ ਦੇ ਸਾਹਮਣੇ ਭਜਦੇ ਨੇ ਵੀਰ ਵਿਦਿਆ ਨਹੀਂ ਹੋ ਅਪੂਤੰ ਪ੍ਰਵਾਹ ਹੋ ਕਿੰਨੇ ਪ੍ਰਭਾਵ ਤੇਰਾ ਪ੍ਰਭਾਵ ਕੰਨਾ ਪ੍ਰਭਾਵ ਕੰਨਾ ਪੈਂਦਾ ਕਿਸੇ ਤੇ ਦੂਜੇ ਤੇ ਅਸਰ ਕਿੰਨਾ ਪੈਂਦਾ ਕੀਦੇ ਤੇ ਅਸਰ ਪੈਂਦਾ ਕੀਦੇ ਤੇ ਨਹੀਂ ਪੈਂਦਾ ਕੋਈ ਐਸਾ ਹੀ ਨਹੀਂ ਗਿਆਨ ਵਾਲੀ ਤੇ ਅਸਰ ਨਾ ਪਵੇ ਅਬਹੁਤ ਪ੍ਰਭਾਵ ਹੈ ਤੇਰਾ ਨਹੀਂ ਦੱਸਿਆ ਜਾ ਸਕਦਾ ਇਹਨਾਂ ਪ੍ਰਭਾਵ ਪੈਂਦਾ ਪ੍ਰਭਾਵ ਕੰਨਾ ਸ਼ਰਧੀ ਹੈ ਕਿਸੇ ਤੇ ਕਿਦੀ ਰੋਸ਼ਨੀ ਆੱਖ ਖੁੱਲੇ ਨਹੀਂ ਸਕਦੀ ਜਿਵੇਂ ਸੂਰੇ ਸਾਹਮਣੇ ਚੱਖਿਆ ਨਹੀਂ ਜਾ ਸਕਦਾ ਸੂਰੀ ਦੇ ਸਾਹਮਣੇ ਦੂਜੀ ਬੁੱਧੀ ਨਹੀਂ ਚੱਲ ਸਕਦੀ ਸਾਹਮਣੇ ਫਿਰ ਦੂਜੀ ਬੁੱਧੀ ਬੰਦ ਹੋ ਜਾਂਦੀ ਆ ਜਾਂਦਾ ਪੂਰਾ ਦਾ ਆਉਂਦਾ ਨਾ ਜਦੋਂ ਬ੍ਰह्म ਗਿਆਨ ਦੀ ਰੋਸ਼ਨੀ ਆਉਂਦੀ ਆ ਸੰਸਾਰੀ ਬੁੱਧੀ ਦੀ ਤਾਂ ਅਗਲੇ ਮਾਰੀ ਜਾਂਦੀ ਉਹ ਤਾਂ ਫੇਲ ਹੋ ਜਾਂਦੀ ਉਹ ਤਾਂ ਬੋਲ ਹੀ ਨਹੀਂ ਸਕਦੇ ਵਿਦਵਾਨਾਂ ਦਾ ਤਾਂ ਬੋਲ ਹੀ ਨਹੀਂ ਨਿਕਲਦਾ ਚੁੱਪੇ ਕਰ ਜਾਂਦੇ ਨੇ ਪੰਡਤ ਚੁੱਪੇ ਕਰ ਗਏ ਸੀਗੇ ਕਾਸ਼ੀ ਦੇ ਪੰਡਤਾਂ ਨੇ ਡੰਡੌਤ ਕਰਤੀ ਸੀ ਰਵਦਾਸ ਦੇ ਸਾਹਮਣੇ ਜਿਹੜੇ ਪ੍ਰਧਾਨ ਬਣਦੇ ਤੇ ਉਹਨਾਂ ਨੇ ਲਿਖਿਆ ਨਹੀਂ ਆਇਆ ਕੁਰਬਾਨੀ ਬੇਪਰ ਪ੍ਰਧਾਨ ਕਰੇ ਡੰਡੌਤ ਕਿਤੇ ਅੱਗੇ ਕਹਿੰਦੇ तेरे ਨਾਮ ਉਹ ਕਰੀਏ ਪਰ ਮੇਰੇ ਅੱਗੇ ਕੋਈ ਨਹੀਂ ਕਰੇ ਜਾਂ ਲਾਹ ਪਰਗੜ ਉਹ ਤਾਂ ਡੰਡੌਤ ਕਰ ਦਿੰਦੇ ਨੇ ਇਹਨਾਂ ਦੇ ਬੱਲੇ ਕੀ ਹੁੰਦੇ ਵਿਚਾਰਿਆਂ ਦੇ ਇਹਨਾਂ ਦੇ ਬੱਲੇ ਕੁਝ ਨਹੀਂ ਹੁੰਦਾ ਹੈ ਅਰੇ ਹੋਇਆ ਹੋਇਆ ਸੁਭੇਸ਼ਾ ਹੋਦਰ ਹੈ ਉਹ ਵੀ ਹੋ ਜਾਵੇ ਸਾਰੇ ਦੈਂਤਰਾ ਸ਼ਾਈ ਹੋ ਜਾਣਗੇ ਕੁਛੂ ਨਹੀਂ ਹਿਲਦੇ ਬੱਲੇ ਕਹੂੰ ਛੈਰ ਛਾਲਾ ਧਰੇ ਛਤਰ ਧਾਰੀ ਕਹੂੰ ਛੈਰ ਛਾਲਾ ਕਿਤੇ ਕੀ ਖੱਲਲ ਵੇਟੀ ਫਿਰਦਾ ਸ਼ਿਵ ਜੀ ਕੱਲੀ ਖੱਲਲ ਵੇਟੀ ਫਿਰਦਾ ਛਤਰ ਧਾਰੀ ਬਣਾ ਹੋਇਆ ਬੜੇ ਬੜੇ ਰਾਜੇ ਮਹਾਰਾਜੇ ਆ ਕੇ ਥੱਲੇ ਪੈਰੀਂ ਪੈਦਰੇ ਛਤਰ ਧਾਰੀ ਹੋਈ ਹੈ ਭਾਈ ਉਹ ਛਤਰ ਹੈ ਜਾ ਛਤਰ ਹੈ ਜਾ ਜਾ ਰਬਦਾਸ ਕਹਿ ਰਿਹਾ ਹੈ ਗਰੀਬ ਜਨ ਲਵਾਜੋ ਸੰਜੋ ਮੇਰੇ ਮਾਥੇ ਛਤਰ ਤਰੀ ਐਹ ਹੈ ਛਤਰ ਧਾਰੀ ਜਿਹੜੇ ਧਾਰਮ ਕੋੰਦੇ ਨੇ ਉਹ ਇਹ ਜੇ ਛਤਰ ਧਾਰੀ ਹੁੰਦੇ ਜਿਹੜੇ ਦੂਏ ਹੁੰਦੇ ਨੇ ਹੋਰ ਤਰ੍ਹਾਂ ਦੇ ਛਤਰ ਧਾਰੀ ਹੁੰਦੇ ਐ ਦੂਏ ਛਤਰਾਂ ਪਿੱਛੇ ਤਾਂ ਲੜਾਈ ਹੁੰਦੀ ਐ ਛਤਰ ਪਿੱਛੇ ਲੜਾਈ ਨਹੀਂ ਹੁੰਦੀ ਹੁੰਦੀ ਇਹ ਛਤਰ ਪਿੱਛੇ ਆਪਣੇ ਮਨ ਵਾਲੇ ਲੜਨੋ ਪੈਂਦਾ ਹੁੰਦਾ ਜਿਹੜਾ ਤਾਂ ਰਬਦਾਸ ਕੋਲ ਛਤਰ ਉਹਦੇ ਪਿੱਛੇ ਆਪਣੇ ਮਨ ਨਾਲ ਲੜਾਈ ਆਪਣੇ ਮਨ ਨਾਲ ਸਾਥ ਇਹਨਾਂ ਸੰਸਾਰੀ ਜੱਤਰੇ ਦੇ ਪਿੱਛੇ ਰੋਜ਼ ਲੜਾਈਆਂ ਬਾਹਰ ਹੁੰਦੀਆਂ ਨੇ ਇਹ ਫੌਜਾਂ ਬਣਾਉਣੀਆਂ ਪੈਦੀਆਂ ਲੜਨਾ ਪੈਂਦਾ ਬਾਹਰ ਇੱਧਰ ਗੋਲਗੋਲਾਂ ਦੀਆਂ ਫੌਜਾਂ ਹੁੰਦੀਆਂ ਨੇ ਲੜਾਈ ਇੱਧਰ ਵੀ ਇਹੀ ਹੀ ਦਿਖਾਈ ਹੋਈ ਹੈ ਲੜਾਈ ਇੱਧਰ ਵੀ ਇਹੀ ਜਿਹੀ ਦਿਖਾਈ ਹੋਈ ਹੈ ਪਰ ਉਹ ਚੰਦਾ ਜਿਹੜਾ ਨਾਟਕਾ ਦਸੂਹਰਾ ਦੇ ਵਿੱਚ ਉਹ ਲੜਾਈ ਦਿਖਾਈ ਹੋਈ ਹੈ ਇੱਕ ਪਾਸੇ ਬਲਦੀਆ ਫੌਜਾਂ ਨੇ ਉਹਗੜਾਂ ਦੀਆਂ ਫੌਜਾਂ ਨੇ ਇੱਕ ਪਾਸੇ ਗੁੜਾਂ ਦੀਆਂ ਫੌਜਾਂ ਨੇ ਉਹਨਾਂ ਦੇ ਰਾਥ ਕਹਿਜene ਢੰਡੇ ਕਹਿਜene ਬਾਹਣ ਕਹਿਜene ਛੱਤਰ ਕਹਿਜene ਉਹਨਾਂ ਦੇ ਆਪਣੇ ਸਰੂਪ ਕਹਿਜene ਸਾਰਾ ਚਿੱਤਰ ਖਿੱਚਿਆ ਪਿਆ ਤੇ ਹਾਂਜੀ ਕਹੂੰ ਛੈਲ ਧਾਰਾ ਧਰੇ ਛੱਤਰ ਧਾਰੀ ਛੱਤਰ ਧਾਰੀ ਹੋਇਆ ਫਿਰਦਾ ਉਹ ਕਿਸੇ ਦੇ ਸਾਹਮਣੇ ਝੁਕਦਾ ਹੀ ਨਹੀਂ ਹੈ ਅੱਜ ਕੋਈ ਵੱਡਾ ਹੀ ਹੋਵੇ ਉਹਦੇ ਸਾਹਮਣੇ ਝੁਕਣਾ ਮੈਂਦਾ ਸੋ ਛਤਰ ਧਾਰੀ ਹੰਕਾਰ ਦਾ ਪ੍ਰਤੀਕ ਹੈ। 어 ਜਿਹੜਾ ਭਗਤ ਹੈ ਗਰੀਬ ਨੂੰ ਆਜ ਦਸਈਆ ਮੇਰਾ ਮਾਤੇ ਛਤਰ ਧਰਿਓ ਨੇ ਜ਼ਬਰਦਸਤੀ ਛਤਰ ਧਰਿਆ ਹੋਇਆ ਆਪ ਨਹੀਂ ਧਰਿਆ। ਉਹ ਕਹਿੰਦਾ ਮੈਂ ਦਾਸ ਹਾਂ। ਉਹ ਛਤਰ ਧਾਰੀ ਹੋ ਕੇ ਦਾਸ ਹੈ। ਇਹ ਛਤਰ ਧਾਰੀ ਆਕੜਿਆ ਹੋਇਆ। ਉਹ ਫਰਕ ਹੈ। ਉਹ ਹੰਕਾਰੀ ਹੈ, ਹੰਕਾਰੀ ਹੈ। ਦੋਹਾਂ ਜੇ ਤੇ ਰਾਜ ਅਧਿਕਾਰੀ ਅਧਿ ਰਾਜ ਅਧਿਕਾਰੀ ਹੈ ਤੇ ਰਾਜ ਤਾਂ ਹੀ ਹੁੰਦਾ ਹੈ ਦੇ ਅਵਤਾਰ ਨੇ ਰਾਮਚੰਦਰ ਉਹ ਵੀ ਤਰਬ ਕੇ ਛਤ ਤਾਰ ਕੇ ਉਹ ਅਵਤਾਰ ਬਣਿਆ ਬੈਠਾ ਉਹ ਸੱਚੀ ਪੂਛੀ ਦਾ ਰਾਜਾ ਬਣਿਆ ਹੋਇਆ ਤਾਜ ਵੀ ਹੈスル ਤੇ ਛਤਰ ਵੀ ਹੈ ਉਹ ਸੱਚੀ ਬੁਚੀ ਦਾ ਇਹ ਹੋਰ ਸੰਸਾਰੀ ਜਿਹਵੇਂ ਹੈ ਰਾਜ ਇਹ じゃ ਰਾਜਾ ਬਣਿਆ ਹੈ ਕਹੂੰ ਰਾਜ ਸਾਜੰਤ ਰਾਜਦਾਰ ਰਾਜ ਸਾਜੰਤ ਸਾਰੇ ਹੀ ਉਹਦੇ ਕੋਲ ਰਾਜਦਾਰ ਹੀ ਵੀ ਹੈ ਰਾਜ ਤੇ ਬੈਠਾ ਵੀ ਹੈ ਗੱਦੀ ਤੇ ਬੈਠਾ ਵੀ ਉਹ ਤਪਦੇ ਸਿਰ ਤੇ ਨਹੀਂ ਬੈਠਾ ਉਹ ਜਪਦੇ ਸਿਰ ਤੇ ਨਹੀਂ ਬੈਠਾ ਉਹ ਪਿਛਲੇ ਜਨਮ ਦੇ ਹਿਸਾਬ ਨਾਲ ਬੈਠਾ ਹੋਇਆ ਤਾਂ ਉਹ ਰਾਜ ਬਣਿਆ ਹੋਇਆ ਨੂੰ ਐ ਜਨਪਤ ਜੀ ਨੇ ਹੁਣ ਕੋਈ ਕੀਤਾ ਪਿਛਲੇ ਹੀ ਕੀਤਾ ਹੋਇਆ ਉਹਦਾ ਇਹ ਜਿਹੜਾ ਰੋਹ ਸ਼ਿਵ ਜੈ ਇਹਨੇ ਕੁਝ ਪਿਛਲੇ ਚ ਕੀਤਾ ਦੀ ਕੁਝ ਐਤ ਕੀ ਕੀਤਾ ਇਹਨੇ ਡਬਲ ਕੀਤਾ ਐਤ ਵੀ ਕੀਤਾ ਕੁਝ ਪਿੱਛੇ ਵੀ ਕੀਤਾ ਹੋਇਆ ਸੀ ਇਹਨੇ ਰਾਹ ਇਧਰ ਲਾ ਜੁਣਾ ਛਤਲਾਂ ਦਾ ਉਹ ਜੁੜ ਲਾ ਰਾਹ ਚੁੜੇ ਛਤਲਾਂ ਦਾ ਇਹ ਇਧਰ ਲਾ ਸੰਸਾਰੀ ਰਾਜ ਹੈ ਰਾਜਾ ਹੋਊਗਾ ਨਾ ਉਹ ਕੰਮ ਕਰਨਾ ਫੇਰ ਮੈਂ ਲੋਭ ਚ ਕਹ ਲੋਗੇ ਉਹ ਜਾਂ ਉਹ ਦਾਰੀ ਫੇਰ ਹੋਰ ਜੱਫੇ ਬੜੇ ਪੈ ਜਾਂਦੇ ਰਾਜ ਚ ਰਾਦੇ ਜੂਬੇ ਵਾਰੀਆਂ ਨਹੀਂ ਹੁੰਦੇ ਨਾ ਉਹ ਤੇ ਕੀ ਜਪਣ ਹੇ ਨਮੂਨਾਥ ਪੂਰੇ ਪੂਰੇ ਨਾਥ ਤਕੋ ਛਤਰ ਧਾਰੀ ਉਹਨੂੰ ਕਹੇ ਨਾਥ ਰੂ ਪਹਿਲਾਂ ਸ਼ਿਵਜੀ ਨੂੰ ਨਾਥ ਹੈ ਨਾ ਨਾ ਦੇਦੇ ਨੂੰ ਨਹੀਂ ਇਹ ਪੂਰੇ ਨਾਥ ਨੂੰ ਨਮੂਨਾਥ ਉਰੇ ਨਾਲ ਲੱਟਾ ਕੋਈ ਇਹਨਾਂ ਸਮਝ ਲੈ ਸ਼ਿਵਜੀ ਨੂੰ ਕੀਤੀ ਆਲੇ ਨਾ ਕੀਤੀ ਆ ਸ਼ਿਵਜੀ ਨੂੰ ਅਨ ਲਵੇ ਕੋਈ ਉਦਰਾ ਸ਼ਿਵਜੀ ਇਹਦੇ ਪਾਈ ਹੋ ਜਾਂਦੇ ਨਾ ਉਹਨਾਂ ਨੇ ਕੀਤੀ ਨਮੋਨਾਥ ਪੂਰੇ ਪੂਰਾ ਨਾਥ ਹੋਰ کہاں ਹੋ ਸ਼ਿਵ ਤੋ ਅਸਲ ਸ਼ਿਵ ਹੈ ਉਹ ਇਹਦਾ ਮਾਧੇਵ ਹੈ ਮਾਧੇਵ ਨੂੰ ਕਿਤੀ ਸ਼ਿਵ ਪੂਰੇ ਨੂੰ ਕਿਤੀ ਨਮੋਨਾਥ ਪੂਰੇ ਸਦਾ ਸਿਧ ਦਾਤਾ ਪੂਰਾ ਕਹਾਂ ਬੱਕਾਏ ਸਾਰਾ ਸੰਸਾਰ ਉਹਦੇ ਕਬਜੇ ਚ ਹੈ ਉਹਦੀ ਦਾਥ ਥੇਟ ਹੈ ਉਹਦੇ ਅਨਸਾਰ ਚੱਲਦਾ ਤਾਂ ਪੂਰਾ ਨਾਥ ਹੈ ਸ਼ਿਵੀ ਦਾ ਗਾਣਾ ਦਾ ਸ਼ਿਵੀ ਦਾ ਬੋਲ ਨਹੀਂ ਹੈ ਸ਼ਿਵੀ ਦਾ ਕਰਨਾ ਜੀ ਪਾਰਵਤੀ ਨਹੀਂ ਹੈ ਪਾਰਵਤੀ ਨੇ ਨੂੰ ਬਹਿਤਾ ਜਿਓ ਤੇ ਸਤਪੰਕਰ ਬਹੁਤ ਬਾਹਰ ਇਹਦੇ ਨਾਲ ਹੋਈ ਹੈ ਇਹ ਗੱਲ ਇਹਦੇ ਕਹਣੇ ਦਾ ਪਾਰਵਤੀ ਨਹੀਂ ਹੈ रामचंद्र ने कहने तो सीता दी है नाथपुरा के तो हो गए नाथपुरा के तो हो गए और कहानी तो कहनेच नहीं होते नाथपुरा के तो हो गया ये रामचंद्र ने कहने की होती सीता रामचंद्र काते भेज दी क्यों जाता हो मृगदी मगर, इतना छापा क्यों भेजता इस करके तेरी आचरितना ਇਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹਨਾਂ ਦੇ ਨਹੀਂ ਸਮਝ ਸਕਦੇ ਜੱਤਰ ਲਿਖਿਆ ਦਸ ਪਾਠ ਇਹ ਤਰੀਆ ਦਾ ਬਣ ਕੇ ਹੈ ਜੈ ਇਹਨੂੰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨਹੀਂ ਸਮਝ ਸਕਦਾ ਕਿਤੇ ਵਜਾਖ ਜਣਾ ਰਹੇ ਹੋ ਆਪਾਂ ਸਿੱਖਾਂ ਨੂੰ ਆਇਆ ਕਿਹਾ ਹੈ ਤਰੀਆਂ ਕੇ ਹਾਂ ਇਹਨਾਂ ਦੇ ਭੇਦ ਨਹੀਂ ਪਛਾਣ ਸਕੇ ਪ੍ਰਭਾ ਵਿਸ਼ਨੂੰ ਲਿਖਿਆ ਹੈ ਗ੍ਰਾਥਾਂ ਦੇ ਵਿੱਚ ਉਹਨਾਂ ਨੇ ਸਾਖੀਆਂ ਬੜੀਆਂ ਹੋਈਆਂ ਨੇ ਬਿਲਕੁਲ ਸਾਰੇ ਪਾਠ ਕਰਦੇ ਨੇ ਸਿੱਧੂ ਬਣਦੇ ਨੇ ਇਸ ਗੱਲ ਨੂੰ ਉਹ ਮਾਇਆ ਰੂਪ ਹੈ ਤੇਰੀਆਂ ਮਾਇਆ ਰੂਪ ਨੇ ਹੈ ਮਾਇਆ ਰੂਪ ਹੈ ਨਮੋ ਨਾਤ ਪੂਰੇ ਸਦਾ ਸਿੱਧ ਦਾਤਾ ਪੂਰੇ ਹੈ ਤੂੰ ਸਦਾ ਹੀ ਸਿੱਧੀ ਦਾਤਾ ਇੱਥੇ ਸਿੱਧ ਲਫਜ਼ ਸ਼ਾਇਰੀ ਨਾਲ ਨਹੀਂ ਆਉਂਦਾ ਇੱਥੇ ਸਿੱਧ ਦਾਤਾ ਸੋਜੀ ਦਾਦਾਨ ਕਰਦਾ ਤੂੰ ਬੇਸ਼ੱਕ ਆਂ ਦਾਤਾ ਸੋਜੀ ਦਾਨਾ ਅਸ਼ੇਦੀ ਅਛਾ ਹੈ ਗਿਆਨ ਦਾਣ ਦੇ ਸਾਰਿਆਂ ਨੂੰ ਨਾਮ ਦਾਣ ਦੇ ਰਿਹਾ ਸਾਰਿਆਂ ਨੂੰ ਸੋਝੀ ਦੇ ਰਿਹਾ ਸਾਰਿਆਂ ਨੂੰ ਗੁਰੂ ਹਨ ਗੁਰੂ ਤਾਂ ਕਦੇ ਸੋਝੀ ਦੇਣ ਅਸ਼ੇਦੀ ਅਛਾ ਹੈ ਆਵਾਦ ਵਿਧਾਤਾ ਅਛੇਦੀ ਹੈ ਤੂੰ ਕੋਈ ਛੇਦ ਨਹੀਂ ਕਰ ਸਕਦਾ ਤੇਰੀ ਕੋਈ ਕੋਈ ਐਸੀ ਲਾਈਟ ਨਹੀਂ ਹੈ ਜਿਹੜੀ ਤੈਨੂੰ ਪਾਰ ਕਰ ਜਵੇ ਕੋ ਆ ਲਾਈਟ ਜਗਦੀ ਐ ਸਰੀਰ ਦੀ ਲਾਈਟ ਤੇ ਪਾਰ ਹੋ ਕੇ ਸਾਡੇ ਸਰੀਰ ਕੇ ਜਾਂਦੀ ਆ ਲਾਈਟ ਨੂੰ ਆ ਸਰੀਰ ਦੇ ਰੇ ਪਾਰ ਕਰ ਜਾਂਦੀ ਐਸੀ ਕੋਈ ਜੋਤ ਨਹੀਂ ਤੇਰੀ ਜੋਤੂ ਪਾਰ ਕਰ ਜਵੇ ਤੇਰੇ ਗਾਂ ਨੂੰ ਪਾਰ ਕਰਨ ਵਾਲੀ ਕੋਈ ਜੋਤ ਨਹੀਂ ਤੇਰੇ ਗਾਂ ਚ ਨੁਕਸਲ ਬਣ ਵਾਲੀ ਕੋਈ ਜੋਤ ਨਹੀਂ ਇਹ ਛੇਦੀ ਤਾਂ ਐ ਸਾਰਿਆਂ ਦੇ ਗਿਆਨ ਦੇ ਵਿੱਚ ਨੁਕਸਲ ਬਲੇ ਇਹ ਬ੍ਰਮ ਗਾਨ ਨੇ ਆਤਮ ਗਾਨ ਨੇ ਸਾਰਿਆਂ ਦੇ ਗਿਆਨ ਨੂੰ ਛੇਦ ਕਰ ਦਤਾ ਨੁਕਸਤ ਜਾਲ ਲੱਭਿਆ ਵੀ ਆ ਇੱਥੇ ਪਿਆ ਨੁਕਸਤ ਵੀ ਤੁਹਾਡੇ ਜਿਹੜਾ ਉਹਨਾਂ ਨੂੰ ਨਹੀਂ ਦਿਖਿਆ ਉਹ ਦੱਸਦਾ ਵੀ ਆ ਪਿਆ ਉਹ ਦਿਖਾਤਾ ਉਹ ਤੋਂ ਜ਼ਿਆਦਾ ਲਾਈਟ ਹੈ ਘੱਟ ਲਾਈਟ ਨੂੰ ਵੱਡੀ ਲਾਈਟ ਛੇਦ ਕਰ ਦਿੰਦੀ ਹੈ ਉਹ ਵੀਦੀ ਨਿਕਲ ਜਾਂਦੀ ਹੈ ਅਛਾ ਆਦ ਅਦਵਾ ਬਦਲ ਅਛਾ ਅਛਾ ਕਹਿੰਦੇ ਨੇ ਜਿਹਦੇ ਤੇ ਕਿਸੇ ਦਾ ਪਰਛਾਵਾਂ ਪੈ ਜਾਵੇ ਤਰਾਸ ਤonda na to pond gaya je tethra ik koi cheez bore a jaye oda parshawa peh janda uth oh zartiyon di kali ho jati chho bo chho chho dar chho tere de ke di chhaon ni peh sakdi chhaon kad boogi light ਇੱਕ ਵੱਲੋਂ ਆਪਣੇ ਕੋਲ 50 ਦਾ ਚੱਗਦਾ ਇੱਕ ਆਪਰ ਤੇ ਦਸਦਾ ਜਾਣ ਦੀ 50 ਆਲਾ 6 ਹੋ ਗਿਆ ਚਾਹੇ ਜਗਦਾ ਹੀ ਆ ਉਹ ਉਹਦੀ ਲਾਈਟ ਹੋਈ ਨਾ ਹੋਈ ਬਰਾਬਰ ਹੈ ਕਹਿੰਦੇ 6 ਹੋ ਗਿਆ 6 ਦਾ ਮਤਲਬ ਨਹੀਂ ਰੁਪਣਾ ਵੀ ਉਹ ਜੇ ਬੁਝਾ ਵੀ ਦੇਈ ਨਾ 50 ਵਾਲੇ ਨੂੰ ਕੋਈ ਨਹੀਂ ਫਰਕ ਪੈਂਦਾ ਲਾਈਟ ਕੱਢ ਦਿੱਨੀ ਲਾਈਟ ਜੇ 50 ਦਾ ਬਲ ਬਜਗਦਾ ਹੈ 50 ਦਾ ਚਾਹੇ ਬੁਝਾ ਵੀ ਲਈਏ ਲਾਈਟ ਨੂੰ ਨਹੀਂ ਫਰਕ ਪੈਂਦਾ ਵੀ ਲਾਈਟ ਕੱਟ ਵੱਡੀ ਲਾਇਡ ਤੇ ਤੋਂ ਕੋਈ ਹੈ ਨਹੀਂ ਵੱਡਾ ਗਿਆਨ ਕੋਈ ਹੈ ਨਹੀਂ ਛੈ ਤੁ ਹਦਰੀ ਆਹ ਅਦਵਾ ਦਾ ਨਾ ਸੋਣਾ ਨਹੀਂ ਹੁੰਦਾ ਛੈ ਸ਼ਾਇਦ ਅਵਤਾਰ ਨਾ ਸੋਣਾ ਲਿਖੀ ਗਿਆ ਹੈ ਨਾ ਨਾ ਨਾ ਸੋਣਾ ਨਹੀਂ ਹੁੰਦਾ ਸ਼ਾਇਦਾ ਮਤਲਬ ਹੈ ਉਹਦੇ ਪ੍ਰਭਾਵ ਹੀਨ ਕਰ ਦੇਣਾ ਦੂਏ ਜਨ ਗਿਆਨ ਨੇ ਜੀ ਬਤਾਲ ਨੇ ਉਹਨੂੰ ਪ੍ਰਭਾਵ ਹੀਨ ਕਰ ਇਹ ਗਿਆਨ ਜਿਵੇਂ ਉਹ ਰਵੰਗਰ ਦੇ ਕੋਲ ਕੋਈ ਗਿਆਨ ਸੀ ਪਹਿਲਾਂ ਉਹ ਮੱਤ ਦੇ ਜਿੱਦਾਂ ਸਲਤਤੀ ਉਹ ਪ੍ਰਭਾਵ ਨਹੀਂ ਸੀ ਪਾ ਸਕਦੇ। ਸਿਕਰ ਗੁਰੂ ਅੰਗਦ ਦੇ ਦਾ ਪ੍ਰਭਾਵ ਪੈ ਗਿਆ। ਉਹਦਾ ਪਹਿਲਾ ਗੱਲ ਸੀ ਕਿਥੇ ਗਿਆ ਛੇ ਹੋ ਗਿਆ ਵਿੱਚ ਲੀਨ ਹੋ ਗਿਆ। ਇਹ ਜਿਆਦਾ ਸੀ ਥੋੜਾ ਸੀ। ਇਹ ਇਹ ਮਤਲਬ ਛੇ। ਆਦ ਅਦਵਾ ਬਿਦਾਤਾ। ਆਦ ਹੈ ਸਬਦਾ। ਅਦਵਾ ਤੇਰੇ ਅੰਦਰ ਦੋਇ ਤਰੀਕ। ਬਿਦਾਤਾ। ਬਿਦਾਤਾ ਸਭ ਵਿਧੀ ਜਾਣਦੇ ਜੋ ਸੰਸਾਰ ਦੀ ਵਿਧੀ ਕੋਈ ਐਸੀ ਵਿਧੀ ਨਹੀਂ ਜਿਹੜੀ ਤੂੰ ਨਹੀਂ ਜਲਦਾ ਕੋਈ ਐਸੀ ਜੁਗਤ ਨਹੀਂ ਜਿਹੜੀ ਤੈਨੂੰ ਪਤਾ ਨੀ ਹੋਜੀ ਬਿਨਾਂ ਆਤਾ ਵਿਧੀ ਦਾ ਜਾਣਣ ਵਾਲੇ ਨੂੰ ਕਹਿੰਦੇ ਵਿਧੀ ਪੈਦਾ ਹਰ ਵਿਧੀ ਪੈਦਾ ਹੀ ਤਾਂ ਕੀਤੀ ਹੈ ਨ ਤਰਸਤਨ ਨ ਗਰਸਤਨ ਸਮਸਤਨ ਸਰੂਪੇ ਨ ਤਰਸਤਮ ਤੈਨੂੰ ਕੋਈ ਚਿੰਤਾ ਨਹੀਂ ਹੈ ਤੈਨੂੰ ਕੋਈ ਭੈ ਨਹੀਂ ਹੈ trasrige nagrastan lok iser paye tenu gras sakda hai grasna hunda hai jeve kehde ne eh rahu ketu ne suraj gras liya kendra gran lagda ਪ੍ਰਭਾਵ ਨਹੀਂ ਹੁੰਦਾ ਸਮਸਤਨ ਸਰੂਪੇ ਸੁਭਸੰਗ ਸਰੂਪੇ ਸੁ ਵਸਤਵ ਸਰੂਪੇ ਸੁ ਵਸਤਵ ਬਸ ਆਪਣੀ ਬਸਤੀ ਚ ਮਸਤ ਰਹਿਣਾ ਕਿਸੇ ਤੈਂ ਤਨ ਕੋਈ ਬਦਲ ਨਹੀਂ ਆਪਣੀ ਬਸਤੀ ਚ ਮਸਤ ਐਸੀ ਬਸਤੀ ਹੈ ਤੇਰੀ ਇਹਦੇ ਵਰਗੀ ਬਸਤੀ ਕਿਹਦੇ ਕੋ ਹੈ ਹੋਰੀ अपने ਆਪ ਚ ਮਾਸਤਰ ਹੈ ਬੇ ਸਮਸਤ ਮਸਰੂਪੇ ਰਾਮ ਰਵੇ ਸ੍ਰੇਸ਼ਟ ਬਸਤੀ ਗਿਆ ਪ੍ਰਭੂ ਅੱਛੀ ਸ੍ਰੇਸ਼ਟ ਬਸਤੀ ਗਿਆ ਬਸਤੀ ਘਟ ਗਿਆ ਵੀ ਤਾਂ ਹੁੰਦੀ ਹੈ ਸਭ ਦਾ ਭਲਾ ਕਰਨ ਵਾਲੀ ਬਸਤੀ ਗਿਆ ਭਲਾ ਸੋਚਣ ਵਾਲੀ ਬਸਤੀ ਗਿਆ ਬੁਰਾ ਖਿਜਦਾ ਨਹੀਂ ਸੋਚਦਾ ਬਸਤੀ ਜੁਰਾ ਨਾ ਪਲਾ ਵੀ ਕਰ ਦੋ ਸਭ ਲੋ ਬੇ ਪਰਵਾਹ ਕਿਸੇ ਤੇ ਕੋਈ ਨੁਕਸਾਨ ਹੋ ਗਿਆ ਤਾਂ माफ करने दी कोई सबनु माफ करने दी शक्ति सब तो माफ करने दी शक्ति तेरे च सब तो ज्यादा बर्दाश्त करने दी शक्ति सर्व बर्दाश्त करने शक्ति तेरे च अपने विरोधियां दे सब तो ज्यादा दया करने दी शक्ति तेरे च किने विरोध कीता गुणो गुण फेडी जितार दा जेड़ा आंदा फर्नाइसो कंट्रोल है फर्नाइस नु फेर कंट्रोल नमस्तं <switches> नमस्तं त्वस्तं अपूते रुस्तं नमस्तं रुस्तं तुवै तोय तोय तोय अलग तोय तू तै तु तोय सत्यं अपूते हे सत्यं सत्य स्वरूप अपूते कोई संसारी पदार्थ नहीं है तू ਸਤ ਸਰੂਪ ਤਾਂ ਹੈ ਪਰ ਸੰਸਾਰੀ ਪਦਾਰਥ ਨਹੀਂ ਕੋਈ ਹੈ ਪਦਾਰਥ ਵੀ ਹੈ ਪਰ ਸੰਸਾਰੀ ਕੋਈ ਨਹੀਂ ਹੁੰਦਾ ਅਪੂਤੇ ਸਤ ਸਰੂਪ ਹੈ ਹਮੇਸ਼ਾ ਰਹਿਣ ਵਾਲਾ ਹੈ ਅਪੂਤੇ ਤਉ ਪ੍ਰਸਾਦ ਤੇਜ ਅਨਭਉ ਪ੍ਰਕਾਸ਼ ਚਾਰੇ ਜਿਹੜੇ ਪਿਛਲੇ ਸੀ ਨਾ ਪਦੇ ਚਾਰੇ ਪਦੇ ਸਰੇ ਦੇਈ ਐਂਡ ਤੇ ਆਏ ਚਾਰੇ ਫਦੇ ਚਾਰੇ ਪਦਿਆਂ ਚ ਕਈ ਗਲਾਂ ਐਸੀਆਂ ਨੇ ਜਿਹੜੀਆਂ ਦਸ ਆਦ ਦੇ ਵਿਚਾਲੀਆਂ ਇੱਥੇ ਗੁੱਡੀਆਂ ਖੁੱਲਦੀਆਂ ਨੇ ਆਕੇ ਬਹੁਤ ਸਾਰੀਆਂ ਬ੍ਰਿਕ ਕਿਤੇ ਜਿਆਦਾ ਖੁੱਲਦੀਆਂ ਖੋਲੀਆਂ ਹੋਈਆਂ ਹਾਂਜੀ ਅਭਿਅਕਤ ਤੇਜ ਅਨੁਭਵ ਪ੍ਰਕਾਸ਼ ਅਭਿਅਕਤ ਤੇਜ ਤੇਜ ਤਾਂ ਤੇਰਾ ਹੈ ਜੋਤ ਹੈ ਪਰ ਉਹਦਾ ਕੋਈ ਦੇ ਨਹੀਂ ਹੈ ਸਾਡੇ ਵੀ ਜੋਤ ਹੈ ਦੇਖੋ ਆਦਮੇ ਦੇ ਵੀ ਜੋਤ ਹੈ ਜੋਤ ਆਦਮੀ ਦੇ ਵਿੱਚ ਵੀ ਹੈ ਸਰੀਰ 'ਚ ਜਵਤ ਰੱਖੀ ਹੋਈ ਹੈ ਨਾ ਹੁਣ ਤੇ ਜਵਤ ਕੱਢ ਕੱਢ ਜੋਤ ਸੁਬੋਏ ਸੁਬੋਏ ਸਾਰੇ ਅੰਚ ਜਵਤ ਸੁਬੋਈ ਹੋਈ ਹੈ ਤਾਂ ਸਰੀਰ ਬੜੇ ਨੇ ਤੂੰ ਜੋਤ ਜੋਤ ਹੈ ਸੋਏ ਜੋਤ ਹੈ ਤੂੰ ਜੋਤ ਹੈ ਪਰ ਤੇਰੀ ਦੇ ਨਹੀਂ ਹੈ ਪੰਜ ਸਤਿਰਾ ਦੀ ਪੰਜ ਤਤਾਲੇ ਦੇ ਦੀ ਜੋਤ ਹੈ ਪਰ ਸਰੀਰ ਹੈ ਦੀ ਪੰਜ ਤਤਾਲਾ ਸਰੀਰ ਤੋਂ ਬਿਨਾ ਜੋਤ ਹੈ ਅਬ ਯਕਤ ਤੇਜ ਜਦੋਂ ਪੂਰਣ ਜੋਤ ਹੁੰਦੀ ਹੈ ਨਾ ਪੂਰਣ ਫਿਰ ਪੰਜ ਤਤਾਂ ਦੇ ਸਰੀਰ ਦੀ ਲੋੜ ਨਹੀਂ ਰਹਦੀ ਪੂਰਣ ਜੋਤ ਜਗਾ ਘਟ ਖਾਲਸਾ ਤਾਹੀ ਦਿਖਾਲ ਸ ਜਦ ਜੋ ਹੋ ਜਾਂਦੀ ਹੈ ਫਿਰ ਇਹਨੂੰ ਦੇਹ ਦੀ ਲੋੜ ਨਹੀਂ ਰਹਦੀ ਜਿੰਨਾ ਚਿਰ ਜੋਤ ਘਟ ਹੈ ਨਾ ਪੂਰਣ ਹੈ ਨਹੀਂ ਉਹਨਾਂ ਚਿਰ ਪੂਰਣਤਾ ਹੀ ਵਾਸਤੇ ਸਰੀਰ ਦੀ ਲੋੜ ਪੈਂਦੀ ਹੈ ਜੋਦ ਪੂਰੀ ਕਰਨ ਵਾਸਤੇ ਲੋਡ ਪੈ ਰਹੀ ਹੈ ਸਰੀਰ ਦੀ 5 ਕਿਲੋੜਾ 5 ਦੀ ਲੋੜ ਪੂਰਾ ਹੋ ਹਰ ਤੱਕੇ ਲੋਡ ਪੈਂਦੀ ਉਹਨਾਂ ਜਿਹੜੇ ਤੱਕ ਪੇੜ ਨੂੰ ਫੜ ਲੱਗਦਾ ਜਿੰਨਾ ਚਿਰ ਪੂਰਾ ਹੋ ਕੇ ਪੱਕਿਆ ਨਹੀਂ ਪੂਰਾ ਹੋ ਗਿਆ ਪੱਕ ਗਿਆ ਫੇਰ ਉਹ ਪੇੜ ਦੀ ਲੋੜ ਨਹੀਂ ਰਹਿੰਦੀ ਉਹਨੂੰ ਸਰੀਰ ਤਾਂ ਪੇੜ ਹੈ ਨਾ ਵਾਇਆ ਤਾਂ ਵਾਇਦੇ ਤਾਂ ਸਾਰੇ ਪੇੜ ਨੇ ਤਰਬਰੇ ਕਰੇ ਇੱਕ ਡਾਲ ਸ਼ਾਖਾ ਪੋਪ ਪੱਤਾ ਰਸ ਭਰੀਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਨ ਹਰ ਪੂਰੇ ਕਰਿਆ ਇਹ ਤਾਂ ਕੋਈ ਬੇੜ ਦੀਆਂ ਡਾਲ ਸ਼ਾਖਾ ਹਨ 88 ਲੱਖ ਜੁਨਾ ਕਿ ਕੋਈ ਜਰਹਤ ਦੀਆਂ ਸ਼ਾਖਾ ਵਾਂ ਨੇ ਜਨਮ ਜੁਰ ਬਕਾਰੂ ਹੈ ਕੋਈ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਹਰ ਪੂਰੇ ਕਰਿਆ ਇਹ ਕੀ ਹੈ ਰਾਜਾ ਰਾਮ ਕੀ ਕਹਾਣੀ ਹੈ ਕਹਿੰਦੇ ਜਾਣੀ ਜਾਣੀ ਰੇ ਰਾਜਾ ਰਾਮ ਕੀ ਕਹਾਣੀ ਇਹ ਦਰਾਜाराम ਕੀ ਕਹਾਣੀ ਹੈ ਇਹ ਜੰਮੜਵਨ ਕਾਨੂੰ ਹੈ ਇਹਦਾ ਪੂਰਾ ਹੁਣ ਤੱਕ ਆਇਆ ਪੂਰਾ ਹੋਊਗਾ ਫਿਰ ਇਹਨੂੰ ਸਰੀਰ ਦੀ ਕੀ ਲੋੜ ਹੈ ਪੂਰਾ ਹੋਏ ਤਾਂ ਉਗਪੰਦੇ ਨਾਉਣਾ ਫਿਰ ਜਾਉ ਕੋ ਪਿਆ ਫੇ ਬਰਸ਼ ਬਣ ਕੇ ਫੇਰੀ ਲੋੜ ਹੈ ਜਾਣੀ ਜਾਣੀ ਰੇ ਰਾਜਾ ਰਾਮ ਕੀ ਕਹਾਣੀ ਅੰਤਰ ਗਿਆਨ ਜੋਤ ਅੰਤਰ ਜੋਤ ਗਿਆਨ ਪ੍ਰਗਟਾ ਗਾਂਦਾ ਪ੍ਰਗਾਸ ਜਦ ਤਿੰਨ ਗੁਰਮੁਖ ਕਿਨ ਗੁਰਮੁਖ ਬਿਰਲੇ ਜਾਣੀ ਫਿਰ ਕੋਈ ਬਿਰਲਾ ਗੁਰਮਖੇ ਇਸ ਗਾਣੀ ਨੂੰ ਜਾਣ ਸਕਦਾ ਜਦ ਉਹਦੇ ਅੰਦਰ ਪੂਰਾ ਜੋਤ ਦਾ ਪ੍ਰਗਾਸ ਹੋ ਜਾਂਦਾ ਹੈ ਉਹਦੇ ਬਾਅਦ ਫੇ ਜਾਣਦਾ ਇੱਕ ਕਹਾਣੀ ਲਿਖੀ ਹੈ ਰਾਜਾ ਰਾਮ ਕੀ ਹੈ ਰਾਜਾ ਰਾਮ ਵਜਿ ਨਹੀਂ ਖਾਲੀ ਲਿਖੀ ਹੈ ਸਾਰੀ ਕਹਾਣੀ ਇਹੀ ਰਮਾਇਣ ਹੈ ਸਾਡੀ ਰਾਜਾ ਰਾਮ ਕੀ ਕਹਾਣੀ ਗੁਰਬਾਣੀ ਉਹਦੇ ਜਿਆ ਰੋਇਆ ਰਾਮ ਰਕਾਲਾ ਪਿਆ ਸੀਦਾ ਲੈ ਛੁੱਟ ਪਿੱਛੜ ਗਏ ਇਹ ਰਾਯਾ ਰਾਮ ਕੀ ਕਹਾਣੀ ਏ ਜਿਵੇਂ ਇਹਦੇ ਤੇ ਰੋਲਾ ਪਉਂਦੇ ਨੇ ਉਹ ਵੀ ਜੀ ਰਾਮ ਜਨੋ ਇੰਨੀ ਵਾਰ ਆਇਆ ਆਇਆ ਸਾਡਾ ਹੋਰ ਏ ਤੁਹਾਡਾ ਹੋਰ ਸਾਡਾ ਤਾਂ ਸਾਰੇ ਸਾਡਾ ਰਾਮ ਨੀਗਾ ਦੇ ਮਰਿਆ ਨੂੰ ਵਰਦਾ ਸਾਡਾ ਸਾਰਿਆਂ ਦੇ ਵਿੱਚ ਸਰਪਿਆਪਕਾਰ ਆ ਸਾਰਿਆਂ ਦੇ ਅੰਦਰ ਸਵੇ ਘਟ ਰਾਮ ਬੋਲੇ ਸਾਰੇ ਉਹ ਦਿਨਸ ਨੇ ਹਾਂਜੀ ਅਨਭਾਉ ਪ੍ਰਕਾਸ਼ ਅਨਭਾਉ ਪ੍ਰਕਾਸ਼ ਪ੍ਰਕਾਸ਼ ਕੀ ਹੈ ਪੈ ਭੁਗਤ ਪ੍ਰਕਾਸ਼ ਉਹ ਪ੍ਰਕਾਸ਼ ਨੂੰ ਪੈ ਨਹੀਂ ਕਿਸੇ ਦੀ ਉਹਦਾ ਪ੍ਰਕਾਸ਼ ਇਹ ਨਹੀਂ ਕਿਸੇ ਦਾ ਪੈਦਾ ਹੁਣ ਦੇਖੋ ਸਰੀਰ ਦੇ ਵਿੱਚ ਜੋਤ ਹੈ ਇਹਨੂੰ ਪਾਇਆ ਹੈ ਸਰੀਰ ਦਾ ਪ੍ਰਕਾਸ਼ ਸਾਰਾ ਪੈਚ ਦੇ داریਾਰੇ ਪ੍ਰਕਾਸ਼ ਵਾਲੇ ਨੇ ਜੋਤ ਵਾਲੇ ਨੇ ਜਿਹੜੀ ਸਰੀਰਾਂ ਵਿੱਚ ਜੋਤ ਆ ਭੈ ਭੈ ਦੇ ਵਿੱਚ ਜਿਹੜੀ ਬਿਨਾਂ ਸਰੀਰ ਤੇ ਜੋਤ ਹੁੰਦੀ ਉਹ ਭੈ ਬੁਕਤ ਹੁੰਦੀ ਉਹ ਨਹੀਂ ਹੁੰਦੀ ਉਹ ਆ ਭੈ ਪਦ ਪਾਇਆ ਨੇ ਭੈ ਪਦ ਪਾਇਆ ਭਗਤਾਂ ਨੇ ਉਹੀ ਪਦ ਪਾਇਆ ਹੋਇਆ ਅਨਪੂਰਨ ਪ੍ਰਕਾਸ਼ ਪ੍ਰਕਾਸ਼ ਹੈ ਜਦੋਂ ਇੱਕ ਜੋਤ ਮਿਲ ਜਾਂਦੀ ਹੈ ਇੱਕ ਜੋਤ ਇੱਕ ਹੈ ਬਲੀ ਜੋਤ ਦੋਏ ਜਿਹੜੇ ਹਿੱਸੇ ਨੇ ਚਿਤਰਮਨ ਇੱਕ ਹੋ ਕੇ ਮਿਲ ਜਾਂਦੇ ਨੇ ਜੋ ਜਲ ਮੈਂ ਜਲਾਇ ਖਟਾਨਾ ਚਲ ਜੋਤੀ ਸੰਗ ਜੋਤ ਬਲਨ ਸਮਾਨਾ ਸਮਾਨਾ ਬਿੜ ਗਿਆ ਗਵਨ ਪਾਇ ਬਿਸਰਾਮ ਫੇਰ ਗਵਨ ਆਣੇ ਜਾਣ ਗਿਆ ਫੇਰ ਕੀ ਲੈਣਾ ਜੇ ਪੂਰੀ ਹੋ ਗਈ ਨਾਨਕ ਪ੍ਰਭ ਕੇ ਸਦਕੁਰਮ ਇੱਕ ਜੋਤ ਇੱਕ ਕੈਬਲੀ ਕੀ ਕਹਿੰਦਾ ਸਰੀਰ ਹੋਵੇ ਨਾ ਹੋਵੇ ਲੋੜ ਹੁੰਦੀ ਫਿਰ ਕਿਹੜੀ ਵਰਦਾ ਨਾ ਜੰਮਦਾ ਫਿਰ ਆ ਸਰੀਰ ਦਾ ਹੋਣਾ ਨਾ ਹੋਣਾ ਕੋਈ ਮੈਨੂ ਨਹੀਂ ਦਿੱਖਦਾ ਪੈ ਉਹ ਨਾ ਜਰ ਹੈ ਜਨ ਨਾ ਜਰ ਹੈ ਸਰੀਰ ਕੱਚਾ ਨਾ ਟੁੱਟ ਜਵੇ ਪੈ ਜਨਮ ਅਗਲਾ ਲੈਣਾ ਪੈ ਜੂ ਜੇ ਕੱਚਾ ਟੁੱਟ ਗਿਆ ਅਬ ਅਗਲਾ ਜਨਮ ਫੇਰ ਲੈਣਾ ਪੈ ਜੂ ਦੁਆ ਪੈੜ ਹੋਊਗਾ ਦੁਬਾਰਾ ਕੱ ਲੱਗਿਆ ਕਦ ਪੈ ਪੂਰਾ ਹੋਇਆ ਕੱਚਾ ਟੁੱਟਣ ਦਾ ਪਾਇਆ ਇੱਕ ਤਾਂ ਅੰਦਰਲੇ ਨੂੰ ਕੱਚਾ ਟੁੱਟਣ ਦਾ ਪਾਇਆ ਬਾਹਰਲੇ ਨੂੰ ਕੁਝ ਹੋ ਰੇ ਬਾਹਰਲੇ ਦਾ ਬਸ ਸਰੀ ਹੋਰੇ ਪੈ ਨੇ ਮਾਇਆ ਦੇ ਬੰਨੂ ਦਾ ਹੋਰੇ ਪੈ ਬਹੁਤ ਨੇ ਤੇ ਸੰਸਾਰ ਦੇ ਅੰਦਰਲੇ ਦਾ ਕੋਈ ਪੈ ਐ ਸੱਜਣ ਬਚੇ ਜਿਹੜਾ ਕਬੀਏ ਪੂਰੀ ਹੋ ਜਵੇ ਉਈ ਕਰੇ ਕਬੀਰ ਖੇਤੀ ਕਰੋ ਨਵੇੜਾ ਕਹਤ ਕਬੀਰ ਆਪ ਸੰਤੋ ਖੇਤੀ ਕਰੋ ਨਵੇੜਾ ਆਪ ਕੀ ਬਖਸ਼ ਬੰਦੇ ਕੋ ਬਹੁ ਨ ਪਵਜਲ ਫੇਰ ਐਦ ਕੀ ਪੱਕ ਜੀਏ ਮਸਾ ਦਰਸਤਾ ਗੁਰਖਾ ਸਰੀਰ ਬਿੜਿਆ ਐਦ ਕੀ ਪੂਰੀ ਦੁਬਾਰਾ ਔੜੇ ਨਾ ਪਵੇ ਇਹ ਰਾਜाराम ਕੀ ਕਹਾਣੀ ਅਛਾਇ ਸਰੂਪ ਅਦਵੈ ਅਨਾਸ ਅਛਾਇ ਸਰੂਪ ਸਰੂਪ ਕੀ ਅਛਾਇ ਛੈ ਨਹੀਂ ਦਿੰਦਾ ਕਿ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ ਚਿੰਤਾ ਨਹੀਂ ਪੈਦਾ ਹੁੰਦੀ ਚਿੰਤਾ ਹੋਈ ਤੇ ਵੀ ਜਦੋਂ ਡਰ ਪੈਦਾ ਹੋ ਜਾਂਦਾ ਨਾ ਕਹਿੰਦਾ ਉਹ ਜੇਰਾ ਉੱਠ ਗਿਆ ਐਨਾ ਨਾ ਫੱਕਾ ਪਿਆ ਜੇਰਾ ਇਹਦਾ ਨਹੀਂ ਨਾ ਕੋਈ ਪੈਂਦਾ ਰੰਗ ਨਹੀਂ ਫਿੱਕਾ ਪੈਂਦਾ ਰੰਗ ਫਿੱਕਾ ਪੈ ਗਿਆ ਸ਼ੈ ਹੋ ਗਿਆ ਫਿੱਕਾ ਦਾ ਭੈ ਨਾ ਪੈਂਦਾ ਰੰਗ ਜੇ ਭੈ ਹੈ ਨਹੀਂ ਫਿੱਕਾ ਕਾਦ ਨਾ ਪੈਂਦਾ ਐ ਅਦਵਾ ਅਨਾਸ ਅਦਵਾ ਅਨਾਸ ਦੁਆਇ ਤੋਰਿਆ ਤੇ ਦਰੇਤ ਨਹੀਂ ਤੇਰੇ ਵਿੱਚ ਆ ਨਾਸ ਨਹੀਂ ਹੁੰਦਾ ਤੇਰਾ ਨਾਸ ਹੁੰਦਾ ਦਾ ਅਕਲ ਦਾ ਹੋਰ ਕਾਹਦੇ ਦਾ ਨਹੀਂ ਹੁੰਦਾ ਕਹਿੰਦਾ ਇਹਦੀ ਅਕਲ ਮਾਰੀ ਗਈ ਆਪਾਂ ਕਹਿੰਦੇ ਮਤ ਮਾਰੀ ਗਈ ਅਕਲ ਮਾਰੀ ਗਈ ਤੇਰੀ ਕਦੇ ਅਕਲ ਨਹੀਂ ਮਾਰ ਹੁੰਦੀ ਪੁੱਟਾ ਕੰਮ ਨਹੀਂ ਹੁੰਦਾ ਤੇ ਤੇ ਅਕਲ ਮਾਰੀ ਜਾਂਦੀ ਹੋਰ ਹੋ ਜਾਂਦਾ ਗਲਤੀ ਹੋ ਜਾਂਦੀ ਹੈ ਨਾ ਤੇਰੀ ਅਕਲ ਕਦੇ ਮਾਰ ਹੁੰਦੀ ਆ ਨਾ ਤੇ ਤੇ ਗਲਤੀ ਹੁੰਦੀ ਹੈ ਕੋਈ ਤੇ ਹੋਰੇ ਕੰਮ ਕਰਾ ਲਵੇ ਨਾ ਇਦਾਂ ਨਹੀਂ ਹੋ ਸਕਦਾ ਸਿਆਣਪਾ ਲੱਖੋ ਇੱਕ ਨਾਲ ਉਸੇ ਦੀ ਉਸੇ ਦਾ ਮਤਲਬ ਹੈ ਕਿੰਨਾ ਹੀ ਕੋਈ ਜ਼ਿਆਦਾ ਹੋਵੇ ਤਦੋ ਉਲਟਾ ਕੰਮ ਨਹੀਂ ਕਰਵਾ ਸਕਦਾ ਅਕਲੇ ਨਾ ਮਾਰੀ ਜਾਂਦੀ ਜਿਆਦਾ ਅਕਲ ਗਲਤੀ ਜਿਆਦਾ ਹੁੰਦੀ ਹੈ ਅਸਲ ਮਾਰੀ ਜਾਂਦੀ ਹੈ ਹਾਂਜੀ ਅਣਟੁੱਟ ਤੇਜ ਅਣਖੁੱਟ ਭੰਡਾਰ ਅਣਟੁੱਟ ਤੇਜ ਤੇ ਜਿਹੜਾ ਹੈਗਾ ਤੇਰਾ ਉਹਦੇ ਵਿੱਚ ਕਦੇ ਬ੍ਰੇਕ ਨਹੀਂ ਹੁੰਦੀ ਜਿਵੇਂ ਕੋਈ ਤੇਜ ਘਟ ਜਾਂਦਾ ਫਿਰ ਵੱਜ ਜਾਂਦਾ ਘਟ ਜਾਂਦਾ ਫਿਰ ਵੱਜ ਜਾਂਦਾ ਇਹ ਨਹੀਂ ਹੁੰਦਾ ਇਹ ਇੱਕ ਉਸਕੱਟ ਵਾਹ ਤੇ ਹੋ ਜਾਂਦਾ ਇਹ ਦਰੀਦ ਲਗਾਤਾਰ ਕੋਸ ਤੇ ਤੇ ਕੋਈ ਜਹ ਤੇ ਰਹਿਣਾ ਜੇ ਸੂਰਦੀ ਸੂਰ ਜਾ ਤਾਂ ਪੌਦਿਆ ਲਗਾਤਾਰ ਆਈ ਜਾਂਦੀ ਲਗਾਤਾਰ ਆਉਂਦੀ ਗੇ ਜੇ ਰਾਜ ਬਦਲ ਹੋ ਜਾ ਬੱਦਲ ਰੋਗਦਾ ਉੱਥੋਂ ਲਗਾਤਾਰ ਰੋਮੀ ਹੁੰਦੀ ਗੇ ਉੱਥੇ ਨਹੀਂ ਫਰਕ ਪੈਂਦਾ ਹਾਂ ਭੰਡਾਰ ਭੰਡਾਰ ਕਰਨਾ ਆਨਖੋਟ ਜਿਵੇਂ ਸੂਰਦੀ ਧੁੱਪ ਵੀ ਆ ਜਾਂਦੀ ਹੈ ਹੜ੍ਹ ਵੀ ਆ ਜਾਂਦੀ ਹੈ ਲਾਈਟ ਵੀ ਆ ਜਾਂਦੀ ਹੈ ਭੁਖਦਾਈ ਦੀ ਹੈ ਇਹ ਤਾਂ ਮੁੱਕ ਵੀ ਜਾਊਗਾ ਸੂਰਜ ਕਿਸੇ ਵੇਲੇ ਮੁੱਕ ਵੀ ਸਕਦਾ ਸੂਰਜ ਘਟ ਰਿਹਾ ਹੈ ਪਰ ਇਹ ਤੇਰਾ ਬਣਾਰ ਕਦੇ ਮੁੱਕੜਾ ਹੀ ਨਹੀਂ ਇਹ ਟੋ ਹੀ ਨਹੀਂ ਕਦੇ ਦਾਤਾ ਦੁਰੰਤ ਸਰਵੰਗ ਪ੍ਰਕਾਰ ਦੁਰੰਤਲਾ ਬਹੁਤ ਇੰਪੋਰਟੈਂਟ ਹੈ ਜਿਹੜਾ ਇਹਦੇ ਵਿੱਚ ਇਹਨੇ ਅਰਥ ਦੀ ਕੀਤੇ ਹੋਏ ਨਾ ਇਹਨਾਂ ਦਾ ਮਤਲਬ ਹੈ ਸਭ ਜੇ ਨਹੀਂ ਆਈਆ ਤਾਂ ਵਿਦਵਾਨਾਂ ਨੂੰ ਦੁਰੰਤ ਲਾ ਫਜ਼ਾਈ ਜਿਹੜੀ ਦੂਰੀਆਂ ਮਨਾਂ ਚ ਪੈ ਗਈਆਂ ਨੇ ਸਾਡੇ ਇਹਨਾਂ ਦਾ ਅੰਤ ਕਰਨ ਵਾਲਾ ਸਾਰਿਆਂ ਨੂੰ ਇਕੱਠੇ ਕਰਨ ਵਾਲਾ ਬਣਾ ਦਿਆਂ ਦੂਰੀਆਂ ਮਟੋਲਣ ਵਾਲਾ ਤੇਰਾ ਸੁਭਾਅ ਹਰ ਪ੍ਰਕਾਰ ਦੀ ਦੂਰੀ ਦਾਦਾ ਦੇ ਦਾਦੀ ਦੇ ਦਾਦੇ ਦੇ ਨਾਮ ਦੀ ਉਹਦੇ ਨਾਲ ਕਿੰਬੜ ਦੀ ਦੂਰੀ ਇੱਕ ਕਰਨ ਵਾਲਾ ਸਾਰਿਆਂ ਨੂੰ ਉਹ ਜਿਤਵਨ ਵਿੱਚ ਇੱਕ ਤਾਂ ਹੁੰਦੇ ਨੇ ਇਹ ਦੂਰੀ ਬਿٹے ਪਹਿਲੇ ਤਾਂ ਮਨ ਜਿਤ ਵਿੱਚ ਦੂਰੀ ਪਈ ਹੋਈ ਹੈ ਇਹਦਾ ਆਪਣੇ ਮਨ ਚਿੱਤ ਦੇ ਵਿੱਚ ਦੂਰੀ ਪਈ ਹੋਈ ਹੈ ਇਹ ਹੀ ਨਹੀਂ ਬੜਦੀ ਉਹ ਜਿਹਦੀ ਇਹ ਵੜਕੇ ਤੇ ਸਾਰੀਓ ਬੜਕੇ ਜਿਹਦੇ ਅੰਦਰ ਝਗੜਾ ਖਤਮ ਹੋ ਗਿਆ ਉਹ ਬਾਹਰ ਵੀ ਨਹੀਂ ਝਗੜਾ ਕਿਸੇ ਨੂੰ ਪਹਿਲਾਂ ਤਾਂ ਅੰਦਰ ਇਹ ਝਗੜਾ ਨਹੀਂ ਰੁਕਦਾ ਦਾਤਾ ਦੌਰਤ ਸਰਵਾਂ ਦੀ ਦੂਰੀ ਮਟਾਉਣੀ ਬਹੁਤ ਔਖੀ ਐ ਬਾਕੀ ਦਾ ਦਿੰਦਾ ਹਰੇਕੇ ਸੰਸਾਰ ਦੇ ਆ data ਦਾ ਬੜੇ ਬੜੇ ਰਾਜੇ ਦੇ ਅੰਦਰ ਹੋਰ ਸਾਰੀਆਂ ਦਾਤਾ ਦੇਣਗੇ ਆਹ ਦਾ ਦੂਰੀ ਮਟਾਉਣ ਵਾਲੀ ਨਹੀਂ ਦਿੰਦਾ ਕੋਈ ਦਾਤਾ ਦੁਰੰਧ ਆ ਦਾ ਅੰਤ ਕਰ ਦੇਣਾ ਦੁਰਵਤ ਦਾ ਅੰਤ ਕਰ ਦੇਣਾ ਦੁਰਵਤ ਦੂਰੀ ਕਰਦੀ ਐ ਫਾਇਦਾ ਦੁਰਵਤ ਕੀ ਐ ਦੂਰੀ ਪਹਿਲਾਂ ਕਰਦੀ ਐ ਇਦੁਰਮਤ ਬੁਰਧੀ ਹੈ ਦੁਰੰਤ ਸਰਬੇ ਪ੍ਰਕਾਰ ਸਰਬੇ ਪ੍ਰਕਾਰ ਹਰ ਪ੍ਰਕਾਰ ਦੀ ਦੂਰੀ ਦੁਰਮਤ ਕਹੇ ਜੀ ਹੋਵੇ ਦੁਰਮਤ ਨੇ ਕਹਿਆ ਵੀ ਪਾਰ ਪਾਇਆ ਹੋਵੇ ਕਿਸੇ ਤਰੀਕੇ ਨਾਲ ਪਾਰ ਪਾਇਆ ਦੁਰਮਤ ਸਾਰਾ ਹੀ ਇਹ ਕਰ ਦਿੰਦਾ ਜਾਂ ਪੂਰਾ ਕਰ ਦਿੰਦਾ ਭਰ ਦਿੰਦਾ ਸਾਰਾ ਹੀ ਅਨਪੂਰਤ ਤੇਜ ਅਨਛੇ ਜਗਤ ਅਨਪੂਰਤ ਤੇਜ ਤੇਰੀ ਗੱਲ ਜਿਹੜਾ ਦੱਸਿਆ ਨਹੀਂ ਜਾ ਸਕਦਾ ਕੋਈ ਅੰਦਾਜ਼ਾ ਹੀ ਨਹੀਂ ਲਾ ਸਕਦਾ ਨਾ ਨਾਬਤੋਲ ਤੋਂ ਪਰੇ ਹੀ ਹੈ ਔਰ ਛਜਗਾਤ ਔਰ ਛਜਗਾਤ ਜਿਹੜਾ ਸਰੀਰ ਹੈ ਤੇਰਾ ਦੇਹ ਹੈ ਇਹ ਪ੍ਰਾਣਾਂ ਦੀ ਉਹਦਾ ਬੜਾ ਨਹੀਂ ਹੁੰਦਾ ਕੋਈ ਅਸਰ ਨਹੀਂ ਪੈਂਦਾ ਸੇ ਤਾਂ ਜੋਤ ਹੈ ਉੱਜ ਕੋਈ ਵੀ ਨੁਕਸਾਨ ਨਹੀਂ ਹੋ ਰਿਹਾ ਪੁਰਾਣਾ ਨੀ ਹੋ ਰਿਹਾ ਛਿਜੜ ਨਹੀਂ ਰਿਹਾ ਕਰਤਾ ਸਦੀਵ ਹਰਤਾ ਸਨਾਤ ਸਦੀਵ ਹੈ ਕਰਤੈ ਤੂੰ ਸਦਾ ਤੋਂ ਹੀ ਕਰਤਾ ਹੈ ਕਰਦਾ ਹਰਤਾ ਹਰਦਾ ਕੀ ਹੈ ਨੀਚਤਾ ਹਰ ਸਨਾਤ ਸਾਰਿਆਂ ਦੀ ਨੀਚਤਾ ਹਰਦਾ ਨੀਚਤਾ ਨੂੰ ਦੂਰ ਕਰਨ ਵਾਲਾ ਹਰਤਾ ਸਨਾਤ ਉਹੀ ਗੱਲ ਆ ਨਾ ਦੁਰੰਤ ਦੁਰੰਤ ਨੀਚਤਾ ਹੀ ਹੈ ਨਾ ਜਿਹੜਾ ਦੁਰੰਤ ਹੈ ਨੀਤਾ ਕਰਕੇ ਦੂਰੀ ਹੈ ਉਹ ਉਈ ਔਰ ਨੀਤਾ ਦੀ ਦੂਰੀ ਹੈ ਬੀਚਾ ਨੀਤਾ ਦੀ ਦੂਰੀ ਹੈ ਆਸਨ ਅਡੋਲ ਹਮ ਆਸਨ ਅਡੋਲ ਹੈ ਤੇਰਾ ਅਡੋਲ ਆਸੜ ਤੇਰਾ ਜਿਹੜਾ ਮਨ ਅਡੋਲ ਰਹਿੰਦਾ ਮਨ ਅਡੋਰਨ ਆਥਰ ਅਡੋਰਨ ਮਨ ਅਡੋਰਨ ਮਨ ਡੋਲਦਾ ਹੀ ਆਨ ਬੂਤ ਕਰਮ ਆਨ ਕਰਮ ਕਰਮ ਕਹੇ ਜੇ ਨੇ ਇਹ ਵੀ ਸਾਡੀ ਅਗਲ ਤੋਂ ਪਰੇ ਜੀ ਸੰਸਾਰ ਦਾ ਜਿਹੜਾ ਕਰਮ ਨਾ ਕਰਮ ਤਾਂ ਕਰਦਾ ਤੂੰ ਪਰ ਭਾਇਆ ਦੇ ਨਾਲ ਲਪੜ ਕੇ ਨਹੀਂ ਕੰਮ ਕਰਦਾ ਭਾਇਆ ਨਾਲ ਸੁਭਤ ਕੋਈ ਕੰਮ ਨਹੀਂ ਦੇ ਰੋ ਜੇ ਬਸ ਕਰਦੇ ਹੋ ਖੱਬੂ ਹੱਥਾਂ ਪੈਣਾ ਰੋ ਉਹ ਜੀਵ ਕਰਦੇ ਨੇ ਤੇਰੀ ਤਾਂ ਇੱਛਾ ਹੀ ਆ ਤੂੰ ਤਾਂ ਕਰਾਉ ਲਈ ਆਪਣੀ ਵਰਜੀਨ ਵਾਲੋ ਕਰਾਉਣਾ ਵੀ ਕਰਨਾ ਜੁਦਾ ਦੱਸ ਕੇ ਕਰਾਉਣਾ ਕਰਨਾ ਨਹੀਂ ਹੁੰਦਾ ਅਸਲ ਤਾਂ ਉਹ ਕਰਦਾ ਉਹ ਹੀ ਹੈ ਨਾ ਦੱਸ ਕੇ ਕਰਾਉਂਦਾ ਤਾਂ ਹੀ ਕੋਲ ਪਾਪ ਨਹੀਂ ਹੈ ਭਗਤਵੰਦੇ ਕਰਾਉਂਦਾ ਉਹ ਹੈ ਪੁੱਠਾ ਹੋਵੇ ਜਾਂ ਸਿੱਧਾ ਹੋਵੇ ਤੇ ਕਰਾਉਂਦਾ ਉਹ ਹੈ ਫੇ ਸਾਨੂੰ ਕੋਲ ਪਾਪ ਘਰਿਆ ਹੋਇਆ ਆਪ ਨਹੀਂ ਕਰਦਾ ਚਾਹੇ ਪੈਦਾ ਕਰਦਾ ਹੈ ਚਾਹੇ ਪੜਨਾ ਕਰਦਾ ਹੈ ਚਾਹੇ ਮਾਰਦਾ ਤਿੰਨੇ ਕਮ ਆਬਦਾ ਕਰਦਾ ਨਹੀਂ ਕਮਾਇਆ ਤਨਾਂ ਦੇ ਵਿੱਚ ਮਾਇਆ ਇਨਵੋਲਵ ਹੈ ਬਈ ਦੁੱਧ ਕਿਸੇ ਜੀ ਨੂੰ ਖਰਾਕ ਦੇਣੀ ਉਹ ਵੀ ਮਾਇਆ ਦੀ ਹੈ ਪੈਦਾ ਕਰਨਾ ਵੀ ਮਾਇਆ ਸਰੀਰ ਬਾਹਰ ਲੈਣਾ ਵੀ ਤਿੰਨੇ ਕਮ ਆਪ ਨਹੀਂ ਕਰਦਾ ਕਰਾਉਣਾ ਆਪਣੀ ਮਰਜ਼ੀ ਨਾਲ ਇਸ ਕਰਕੇ ਪੁੰਨ ਪਾਪ ਹੈ ਦੀ ਜਿਨ੍ਹਾਂ ਨੂੰ ਪੂਰਾ ਗਿਆਨ ਹੈ ਉਹ ਤਾਂ ਮੰਨਦੇ ਜੀ ਦੂਏ ਬੰਨ ਲੈਦੇ ਨੇ ਵਰਦੇ ਹੋਬੀਨੇ ਵੀ ਕਰਾਉਦਾ ਹੋਈ ਹੈ ਪਰ ਕਮਜ਼ੋਰ ਹੈ ਨੇ ਉਹਨਾਂ ਦਾ ਮਾਨੇ ਨਾ ਕਮਜ਼ੋਰ ਹੈ ਪਰੋਸਾ ਨਹੀਂ ਇਸ ਗੱਲ ਤੇ ਵਧਣਾ ਹੋਰਗਾ ਨਾ ਪਰੋਸਾ ਉਹਨਾਂ ਹੋਰਗਾ ਨਾ ਪਰੋਸਾ ਕਿਉਂ ਨਹੀਂ ਹੈ ਉਹਨਾਂ ਨੂੰ ਉਹਨਾਂ ਨੇ ਪੂਰਾ ਦਰਸ਼ਣ ਨਹੀਂ ਹੋਇਆ ਉਹਨੂੰ ਵੀ ਹਾਕ ਕਰਦਾ ਪੂਰੀ ਤਸੱਲੀ ਨਹੀਂ ਕਰਾਈ ਉਹਨਾਂ ਦੀ ਬਤਨ ਪੂਰੀ ਤਸੱਲੀ ਨਹੀਂ ਕਰਾਈ ਦੋਹੀ ਪਾਸੇ ਮਤ ਕਹੀ ਜਾਂਦੀ ਹੈ ਉਹਦੀ ਦੂਰੇ ਪਾਸੇ ਵੀ ਕਹੀ ਜਾਂਦੀ ਹੈ ਪਰ ਬਾਪ ਵੀ ਬੰਦੀ ਜਾਂਦੀ ਹੈ ਮਤ ਜਿਹੜੀ ਮਤ ਉਹਨਾਂ ਨੇ ਪੜਿਓ ਜ ਪਨ ਪਾਪ ਵੀ ਬਣਿਆ ਹੋਇਆ ਸਾਡੇ ਮਤ ਵਿੱਚ ਪਨ ਪਾਪ ਬਿਲਕੁਲ ਨਹੀਂ ਬਣਿਆ ਪਰ ਸਾਡੇ ਜਿਹੜੇ ਟੀਕਾ ਕਾਣੇ ਪਨ ਪਾਪ ਬੁਲਦੇ ਨੇ ਉਹਦੀ ਵਜ੍ਹਾ ਕਿ ਪੰਡਤ ਨੇ ਅਰਥ ਕੀਤੇ ਹੋਏ ਨੇ ਪੰਡਤ ਨੇ ਮਤ ਮਤ ਪਰ ਪਾੜ ਕੇ ਉਹਨੇ ਪੰਡਤ ਨੇ ਸਾਨੂੰ ਅਰਥ ਕਰਕੇ ਦੇ ਦਿੱਤੇ ਪਨ ਪਾਪ ਵਾਲੇ ਉਹਨਾਂ ਨੂੰ ਅਸੀਂ ਸੱਚ ਬਣਿਆ ਹੋਇਆ ਸੰਤ ਤਾਂ ਪਨ ਪਾਪ ਦੇ ਵਿੱਚੋਂ ਹੀ ਆਏ ਹੋਏ ਨੇ ਜਿਹੜੇ ਸੰਤ ਨੇ ਗਾਲਾਂ ਵੀ ਲੈ ਕੇ ਆਏ ਨੇ ਧੋਤੀ ਟੀਕਾ ਪਿੱਛੇ ਛੱਡਿਆ ਧੋਤੀ ਤੇ ਕਾਦੀ ਜੀ ਨਾਲ ਰਲਦਾ ਕਦੇ ਮਾੜਾ ਤੇ ਕੋਈ ਇਤਰਾਜ ਨਹੀਂ ਥੋਤੀ ਟਿੱਕਾ ਸੀ ਨਾ ਬੜੀ ਦਿਦੋ ਸਖਾਂ ਮਾੜਾ ਤੇ ਨਹੀਂ ਇਤਰਾਜ ਕੀਤਾ ਬੋਤੋ ਮਾੜਾ ਦੀ ਹਾਲਾਂਕਿ ਮਾੜਾ ਦੀ ਖੱਡਨ ਕੀਤਾ ਕੁਰਬਾਨੀ ਦੇ ਥੋਤੀ ਟਿੱਕਾ ਬਿਲਕੁਲ ਗੱਲ ਨਾ ਪੜਨ ਸੀ ਨਾ ਭਗਤਾਂ ਦਾ ਪੜਨ ਦਾਲੇ ਸਰ ਮਾੜਾ ਮਾੜਾ ਬਾੜਲੀ ਮਾੜਾ ਨੇ ਵਿਚਾਰਦਾ ਰੱਖ ਤੁ ਕਰਦੀ ਵਿਚਾਰਦਾ ਮਾੜਾ ਤੇ ਖੜੀ ਹੈ ਨਾ ਦੇਖੋ ਥੋਤੀ ਟਿੱਕਾ ਦਾ ਸਿਰਫ ਡਰੈਸ ਨਾਲ ਸੰਬੰਧ ਹੈ ਸਰੀਰ ਨਾਲ ਬੜਾ ਦਾ ਸਬੰਧ ਹੈ ਜਾਪਤਾਪ ਨੂੰ ਕੁ ਜਾਪਤਾਪੇ ਵਿਗਾੜ ਦੋ ਸਾਡਾ ਬੜਾ ਰੋ ਬਦਤਰ ਤੰਤਰ ਦੋਏ ਵਿਗਾੜ ਤੇ ਬਦਤਰ ਤੰਤਰ ਦੇ ਵਿੱਚ ਸਾਨੂੰ ਲਾਤਾ ਜਾ ਕੇ ਉਹ ਰਸਤਾ ਬਦਲਤਾ ਉਤੋਂ ਉਹਨਾਂ ਨੂੰ ਸਮਝ ਸੀ ਵੀ ਕਿਵੇਂ ਬਦਲਿਆ ਇਹਨਾਂ ਨੂੰ ਸਾਡੇ ਨੂੰ ਤਾਂ ਪਤਾ ਹੀ ਨਹੀਂ ਸਿੱਖੀ ਕੀ ਹੁੰਦੀ ਐ ਇਹ ਤਾਂ ਰੌੜਾਈ ਪਾਈ ਜਾਂਦੇ ਵਿਦਵਾਨ ਐਵੇਂ ਖਲਬ ਖਾਦਾ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਧਰਮ ਬਾਰੇ ABC ਦਾ ਵੀ ਪਤਾ ਇਹਨੂੰ ਧਰਮ ਹੁੰਦਾ ਕੀ ਹੈ ਉਹ ਜਿਹੜਾ ਨੇ ਬਗਾੜਿਆ ਉਹ ਬਹੁਤ ਸ਼ਤਾਂ ਦੇ ਉਹਨੂੰ ਪਤਾ ਧਰਮ ਕੀ ਹੁੰਦਾ ਬਾਣਾ ਲੈ ਕੇ ਬੜਤੀ ਉਹ ਕਿਤੇ ਅਜਾ ਬਾਜ ਆ ਸਾਡੇ ਜਿਹੜੇ ਜਪਣਾ ਹੀ ਨਹੀਂ ਹੈ ਕਿਤੇ ਅਨਾਮ ਨਾਮ ਹੀ ਨਹੀਂ ਕੋਈ ਬਈ ਜਪਣਾ ਕੀ ਹੈ ਜੱਲ ਉਹ ਨਹੀਂ ਕੋਈ ਲੁਗਸਤਨ ਰਾਮ ਜਿਹਦਾ ਕੋਈ ਨਾਮ ਨਹੀਂ ਉਹ ਜਪਣਾ ਕੀ ਹੈ باوجود ਸਭ ਕਾਸੇ ਦੇ ਪਾਤੇ ਉਲਟੇ ਰਹਤੇ ਨੇ ਇਹਨਾਂ ਕੋਲ ਕਿੰਨਾ ਇਹਨਾਂ ਟਾਈਮ ਹੈ ਇਹਨਾਂ ਨੇ ਕਰਨਾ ਵੀ ਕੀ ਗੁਰਦੁਆਰੇ ਜਾਂਦੇ ਨੇ ਆਪਣੇ ਹੋਰੇ ਕੁਝ ਕਰਕੇ ਮੁੜੇ ਆਉਂਦੇ ਨੇ ਸਾਰਾ ਸਾਰਾ ਤੇ ਘੜੀ ਸਿੱਕੀ ਕੁਛ ਨਹੀਂ ਹੋ ਗੁਰਦਾਰੇ ਜਾਇਓ ਉੱਥੇ ਵੀ ਸਾਰਾ ਸਤ ਪਰ ਦੇ ਰੌਲੇ ਨੇ ਬੋਲਖ ਦੇ ਰੌਲੇ ਨੇ ਕੁਰਬਾਨੀ ਦੇ ਕੋਈ ਗੱਲੇ ਨਹੀਂ ਚੌਦਰ ਦੀ ਗੱਲ ਹੈ ਅ ਵਿਦਵਾਨਾ ਜੀ ਇਹ ਚੌਦਰ ਦੀ ਗੱਲ ਹੈ ਗੁਰਮਤ ਦੀ ਗੱਲ ਕਹ ਤੇਰੀ ਯਾਰ ਰਹਿਤ ਬਰਿਆਦਾ ਦੀ ਗੱਲ ਹੈ ਰਹਿਤ ਦੀ ਕਾਲ ਬਰਿਆਦਾ ਦੀ ਰਹਿਤ ਦੀ ਤਾਂ ਹਯੋਰੀ ਰਹਿਤ ਤਾਂ ਨਾਲ ਲਾਂ ਲੰਦਰ ਵੀਰ ਗੱਲ ਬਰਿਆਦਾ ਬਰਿਆਦਾ ਕੋਈ ਨਹੀਂ ਜੀ ਬਰਿਆਦਾ ਦੀ ਜੀਵਨ ਦੇ ਸੰਤ ਅਕਾਲ ਤਖਤ ਗੁਰੂ ਘਰ ਤਾਂ ਬਰਿਆਦਾ ਕੋਈ ਹੁੰਦੀ ਹੋਰੀ ਉਹਨੂੰ ਸੋ ਬਰਿਆਦਾ ਸੰਤਾ ਦੀ ਹੁੰਦੀ ਹੈ ਮर्याਦਾ ਤਾਂ ਸਾਨੂੰ ਵੜ ਲੈਣੀ ਨਹੀਂ ਚਾਹੀਦੀ ਸੀ ਜੇ ਮर्याਦਾ ਦੀ ਨਾ ਵੜਦੇ ਸੰਤ ਨਹੀਂ ਸੀ ਬੜ ਸਕਦੇ ਸਾਡੇ ਜਿੱਦਾਂ ਇਹ ਮर्याਦਾ ਛੱਡਤੀ ਸੰਤਾਂ ਦੇ ਬਾਹਰ ਨਿਕਲ ਜਾਂਦੇ ਸੰਤਾਂ ਨੂੰ ਸੇਕ ਵੜਨਾ ਪੈ ਜਾਊਗਾ ਜਦੋਂ ਮर्याਦਾ ਛੱਡਤੀ ਰਹਤੇ ਆਗੇ ਕੱਲੀ ਗੁਰਬਾਣੀ ਦੇ ਅਰਥਾਂ ਤੇ ਆਗੇ ਰਹਤ ਗੁਰਬਾਣੀ ਅਨੁਸਾਰ ਜੀਵਨ ਜਿਉਣਾ ਰਹਤ ਹੈ ਮर्याਦਾ ਦੀ ਕੋਈ ਲੋੜ ਨਹੀਂ ਬਾਣਾ ਬਜਾ ਗੁਸਾਨ ਤੇ ਚਿੱਟਾ ਪਾਈ ਜਾਣ ਕੋਈ ਰੌਲਾ ਨਹੀਂ ਕੋਈ ਗੱਲ ਨਹੀਂ ਪਾਈ ਜਾਣ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਨਹੀਂ ਨਾਨਕ ਨੇ ਕਹੇ ਵੇ ਤੂੰ ਕੇਸ ਰੱਖਿਆ ਆ ਕੁੱਛ ਕਰ ਕੁੱਛ ਨਾ ਕਰ ਉਹਨੂੰ ਵਿਚਾਰਧਾਰਾ ਬਦਲਦੀ ਵਿਚਾਰਧਾਰਾ ਦਾ ਰੌਲਾ ਵਿਚਾਰਧਾਰਾ ਬਦਲ ਦੋ ਪੇਸ ਕੋਈ ਕੈਸਾ ਹੀ ਰੱਖੇ ਪੇਸ ਤਾਂ ਤੇ ਆ ਗਿਆ ਨਾਰੇ ਨਾਰੇ ਦੇਸਾਂ ਦੇ ਪੇਸ ਨੇ ਪਹਿਰਣ ਤੇ ਖਾਦੀ ਕੋਈ ਗੱਲ ਨਹੀਂ ਕੇਸ ਵੀ ਰੱਖਣ ਦੀ ਕੋਈ ਪਹਿਲੇ ਸ਼ਰਤ ਲਾਉਣ ਦੀ ਸਭ ਲੋੜ ਨਹੀਂ कोई मुडिया को सरेसी है सारे सारे लोग देश कीता है রংপুর पार्टी देता गुरबणी मुसलमानो ने भी उपदेश कीता ए थोड़ी कहवे तुसी पुछा क्यों कटाओ रे वे विचार बदल दो जब विचार तारा बदली जावेगी फिर अप्पे ही छड़ बाद गल अप्पे छड़ बदलने है काखड़ी रायद मने रख है ना है ਤੁਸੀਂ ਭਾਂਡੇ ਬਣਾ ਬਣਾ ਰੱਖ ਲੈ ਪੌਣ ਨੂੰ ਕੀ ਵਿੱਚ ਪਾਉਂਗੇ ਕੀ ਪੌਣ ਵਾਲੀ ਚੀਜ਼ ਹੈ ਜੇ ਪਹਿਲਾਂ ਵਿੱਚ ਪਾ ਦੋ ਕੁਝ ਲੈਵਲ ਬਾਅਦ ਚਲਾ ਲਿਓ ਜਿਹਦੇ ਵਿੱਚ ਪਾਤਾ ਸੀ ਨਾ ਕੁਝ ਦਸ ਪਾਸ਼ਰ ਉਹ ਕਹਿਣਾ ਬਣੂ ਪਰੇ ਚਾਗੋ ਆਪ ਕਹਨੇ ਬੁੱਧ ਜਗਾਏ ਨਾ ਮਨੂ ਪਰੇ ਚਾਗੋ ਦੋ ਜਵਾਈਆ ਦੋ ਬੁੰਡੇ ਸ਼ਹੀਦ ਹੋ ਗਏ ਨੇ ਵਜਾਖ ਦੇ ਗੱਲ ਨਹੀਂ ਆ ਕਹਿ ਦਿੰਦੀ ਚਾਰ ਬੰਦੇ ਕਰਦੇ ਕਸ਼ੀਦ ਹੋ ਜੁੜ ਪਾਣੀ ਸਾਹ ਦੇ ਜੰਮ ਦੇ ਵਿੱਚ ਦੋ ਜਵਾਈ ਦੋ ਤੇ ਬੁੱਢੇ ਚਾਰ ਬੰਦੇ ਸ਼ਹੀਦ ਹੋ ਗਏ ਕੋਈ ਨਹੀਂ ਉਹਨੂੰ ਪ੍ਰਵਾਹ ਇਹ ਗੱਲ ਦੇ ਦਿੱਤੀ ਨਾਲ ਪ੍ਰਵਾਹ ਕੀਤੀ ਨਹੀਂ ਪਰ ਕਹਾਂ ਉਹਨੂੰ ਅਬਰਦੇ ਦੋ ਕਹਿੰਦੇ ਹੋਰ ਕੁਝ ਭੋਗਲਾ ਇਹਦੀ ਤੈਨੂੰ ਲੋੜ ਨਹੀਂ ਇਹਦੀ ਲੋੜ ਨਹੀਂ ਹੈ ਤੈਨੂੰ ਉਹ ਕਹਿੰਦਾ ਬਰਾਤਾ ਕੰਬਲ ਤੀ ਕਬਾਲ ਕਰ ਦੇ ਕਾ ਨੂੰ ਫਿਰ ਆ ਬਾੜ ਦੇ ਦੋ ਦੋ ਕੰਦੇ ਦੇ ਬਾੜ ਦੇ ਦੋ ਦੇਖੋ ਹੋਰ ਕੁਛ ਨਹੀਂ ਬਗਿਆ ਉਹ ਕਨਫਤ ਤੈਨੂੰ ਬਗ ਲੈਣੋ ਬਾੜ ਲੈਣੋ ਵੀਰ ਤੂੰ ਤੋ ਦੋ ਹੋਰ ਜੇ ਮੰਗਣਾ ਸਿਰ ਦੁੱਖਾ ਕੇ ਬਸ ਉਹ ਬੰਤੈਨੂ ਬਗ ਲੈਣੋ ਬਸ ਹੋਰ ਕੀ ਮੁਕੜੇ ਦੋ ਵਾਰੀ ਹੀ ਦੋ ਲੈ ਲੈ ਇਹਨੇ ਹੀ ਯਾਨੀ ਉਹ ਗੱਲ ਮੰਨ ਲਈ ਵੀ ਹਕਮ ਹੈ ਠੀਕ ਹਾਂ ਗੱਲ ਵਿਚਾਰਤਾਂ ਨੇ ਸਰੇ ਲਾਉਣੇ ਬਾਣੇ ਦੇ ਸਰੇ ਲੀ ਲੋਣ ਬਾੜੀ ਦੇ ਸਰੇ ਲੋਪ ਪਕਤਾਂ ਦੇ ਪਕਤ ਕੈਸਰੇ ਨਹੀਂ ਲੱਗੇ ਕਾ ਪਵੰਦੀ ਲਾਈ ਆ ਭਗਤਾਂ ਦੇ ਕਿਤੇ ਉਹ ਬਾਦੀਆਂ ਗੱਲਾਂ ਨੇ ਪਵੰਦੀ ਵਾਲੀ ਦੋਇੰਗੁਰੂਆਂ ਨੇ ਕੋਈ ਪਵੰਦੀ ਲਾਈ ਕਿਸੇ ਤੇ ਦਸਵੇਂ ਦੇ ਅਗੇ ਲਾਈ ਆ ਜੀ 200 साल की کرتے رہے پھر 200 سال تک پوندیوں نے नहीं लाई نے کچھ بلکہ یہ اپا چلو وچ کڈنے دے 30 سال جے سٹارٹ ہوئی ہے گل گزار کدی کیتی ہے 30 سال دی کڈ بھی دی ہے تب 240 سال بن دے جے 10 سال پہلے انہوں نے بڑے چھایا 200 سال کتے گئے 200 سال کس نے بنانے دی گل کیتی بنانے دی گل کیتی بھگتا نے بنانے دی گل ہی کیتی بنانے دی گل کیتی ਬਾਣੀ ਦੀ ਛੜਦੀ ਬਾਣੀ ਨੇ ਬਗਰ ਪੈਗੇ ਤੁਸੀਂ ਕੱਲੇ ਦੇ ਬਾਣੀ ਦੇ ਬਾਣੀ ਲਾਉੜੋ ਤਲਵਾਰ ਦੇ ਬਾਣੀ ਲਾਉਣਾ ਤਲਵਾਰ ਦੇ ਝਗੜੇ ਕਰਨੇ ਨੇ ਤੁਹਾਡੇ ਅੱਜ ਵੀ ਵੀ ਝਗੜੇ ਹੋਣੇ ਇਹ ਇਹ ਮਾਇਆ ਰੂਪ ਹੈ ਸਾਰਾ ਤਲਵਾਰ ਤਾਂ ਮਾਇਆ ਦੀ ਹੈ ਲੋਹੇ ਦੀ ਹੈ ਵਿਗਿਆਨ ਘੜਕ ਤੇ ਗਿਆਨ ਘੜ ਦੀ ਗੱਲ ਕਰੋ ਲੋਹੇ ਦੀ ਛੜ ਦਿਓ ਲੋੜੀ ਦੀ ਲੋੜੀ ਨਹੀਂ ਤੁਹਾਨੂੰ ਲੋੜੀ ਦੀ ਜੇ ਲੋੜ ਪਊਗੀ ਹੁਣ ਬਹੁਤ ਕੁਝ ਹੋਰ ਬਣ ਗਿਆ ਇਹ ਤਾਂ ਛੋੜੀ ਨਾਲ ਵੀ ਸਰ ਜੀ ਹੋਰ ਪਿਸਤੌਲ ਬਣ ਗਿਆ ਬਿਦੇਣਾ ਗੋ ਬਣ ਗਿਆ ਸ਼ਸਤਰ ਹੈ ਨਾ ਔਰ ਤੇ ਸ਼ਸਤਰ ਇਹ ਤਾਂ ਜੇ ਤੁਹਾਨੂੰ ਕੋਈ ਗੁਰਮਤ ਤੋਂ ਹਟਾਉ ਜਾਂ ਲੋੜ ਪੈਣੀ ਹੋਵੇ ਅਸੀਂ ਬੋਲਣ ਨਹੀਂ ਦੇਣੀ ਗੁਰਮਤ ਪੜ੍ਹਨੀ ਦੇਣੀ ਤੇ じゃ ਲੋੜ ਹੈ ਡਿਫੈਂਸ ਵਾਸਤੇ ਲੋੜ ਹੈ ਤੇ ਦੀ ਸਾਨੂੰ ਬਣਾ ਕਰਨ ਮੱਦੇ ਥੋੜੀ ਲੋੜ ਆ ਸੀ ਹਮਲਾ ਹੋ ਰਹਿ ਗਿਆ ਹੀ ਨਹੀਂ ਆ ਸਾਡਾ ਕੀ ਕੰਮ ਦੁਰੰਤ ਦੁਰੰਤ ਦਾ ਨਾਸ ਕਰਨਾ ਪੂਰੀ ਬਟੌੜੀ ਸਾਰਿਆਂ ਦੇ ਬੁੱਲਦੀ ਗੱਲ ਦਾਦਾ ਦੁਰੰਤ ਪਹਿਲਾਂ ਕੌਣ ਹੈ ਪਰਮੇਸ਼ਰ ਹੈ ਪਰਮੇਸ਼ਰ ਖਾਲਸਾ ਹੈ ਤੇ ਹੁਣ ਦਾਦਾ ਦੁਰੰਤ ਕੌਣ ਹੈ ਹੁਣ ਵਾਲਾ ਖਾਲਸਾ ਜੇ ਦਾਦਾ ਦਰੰਤ ਖਾਲਸਾ ਨਹੀਂ ਤਾਂ ਖਾਲਸਾ ਹੀ ਹੈ ਦੀ ਇਹ ਜੇ ਖਾਲਸਾ ਦਾ ਚੰਡਾ ਵਰਦਾਰਾ ਹੈ ਇਹ ਇਹ ਚੰਡਾ ਵਰਦਾਰਾ ਤਾਂ ਅੱਜ ਦਾਦਾ ਦਰੰਤ ਇਹ ਹੈ ਸਾਡੀ ਜ਼ਿੰਮੇਵਾਰੀ ਹੈ ਦਾਦਾ ਦਰੰਤ ਦਾ ਕੰਮ ਕਰ ਦੀ ਜੇ ਇਹ ਕੰਮ ਨਹੀਂ ਤਾਂ ਸਿੱਖ ਹੈ ਨਹੀਂ ਅਸੀਂ ਬਿਲਕੁਲ ਇਹ ਕੰਮ ਕੀਤਾ ਭਗਤਾਂ ਨੇ ਇਹ ਕੰਮ ਕੀਤਾ ਗੁਰੂ ਨੇ ਉਹ ਕੰਮ ਕਰਨਾ ਪਊ ਜ਼ਰੂਰੀ ਕੀਤਾ ਨਹੀਂ ਸਿੱਖੀ ਦੁਬਾਰਾ ਕਰੋ ਜੀ ਇਹ ਤੇ ਕੰਮ ਨਹੀਂ ਹੁੰਦਾ ਬਾਹਰ ਨਿਕਲ ਜੋ ਪਿਛੇ ਹਟ ਜਾ ਸੇਕਰੋ ਹੋ ਕੋਈ ਗੱਲ ਨਹੀਂ ਲੀਡਰੀ ਤਾਂ ਪਿਛੇ ਹਟ ਜਾ ਇਹ ਜਿਹੜੀ ਲੀਡਰੀ ਆ ਨਾ ਰੌਲੇ ਪਾ ਕੇ ਤੇ ਪਿਛੇ ਆ ਕੇ ਚੁੱਪ ਕਰਕੇ ਸਿੱਖ ਬਣਨ ਦੀ ਕੋਸ਼ਿਸ਼ ਕਰੋ ਰੌਲਿਆਂ ਨੂੰ ਛੱਡ ਕੇ ਸਿੱਖੀ ਧਾਰਨ ਕਰਨ ਦੀ ਗੱਲ ਕਰੋ ਇੱਧਰ ਨੂੰ ਜਾਓ ਗੁਰਬਾਣੀ ਨੂੰ ਸਮਝ ਕੇ ਗੁਰਬਾਣੀ ਤੇ ਜੀਵਨ ਬਿਲਾਓ ਕੀ ਲੈਣਾ ਕਲੰਡਰਾਂ ਫਲੰਡਰਾਂ ਤੇ ਤੁਸੀਂ ਕੀ ਲੈਣਾ ਕੈਲੰਡਰ ਦੀ ਗੱਲ ਕੀਤੀ ਹੋਈ ਐ ਦਸ ਪਾਸ਼ਣ ਉਹਨਾਂ ਨੇ ਜਿਹੜੀ ਤੇਤ ਲਿਖੀ ਹੋਈ ਐ ਜਦ ਪੂਰਾ ਕੀਤਾ ਰਾਮ ਆਪਦਾ ਲਿਖਿਆ ਹੋਇਆ ਪਾਦਲ ਵਿਸ਼ੋਦੀ ਅਸ਼ਟਮੀ ਦਾ 12 ਕਿਉਂਕਿ ਉਹਨਾਂ ਕੈਲੰਡਰ ਹੀ ਬਣਾ ਲੈਂਦੇ ਜੇ ਲੋੜ ਹੁੰਦੀ ਉਹ ਨਹੀਂ ਸੀ ਬਣਾ ਤੂੰ ਹੀ ਜ਼ਿਆਦਾ ਸਾਂਢਿਓ ਪਾਦਲ ਵਿਸ਼ੋਦੀ ਅਸ਼ਟਮੀ ਦਾ 12 37 ਤਰਵਕਰ ਦਸਦਾਰਾ ਕਲੰਡਰ ਤਾਂ ਉਹਨਾਂ ਨੇ ਹੀ ਬਣਾਇਆ ਹੋਇਆ ਤੁਸੀਂ ਗਲੰਡਾ ਤੇ ਕੀ ਲੈਣਾ ਅਲੱਗ ਕਾ ਰਹੇ ਅਲੱਗ ਪਛਾਣ ਅਲੱਗ ਪਛਾਣ ਕਰਕੇ ਲੱਗੇ ਰਹਿ ਜਾਓ ਫੇ ਅਜੀਕ ਕਰਨਾ ਸਾਰਿਆਂ ਨੂੰ ਅਲੱਗ ਨਹੀਂ ਹੋਣਾ ਇਹ ਨਾਲ ਲੱਗੋਣਾ ਲੱਗ ਹੋ ਜਾਓ ਤੁਸੀਂ ਤੁਸੀਂ ਹੋ ਜਾਓ ਲੱਗ ਜੀ ਨੇ ਅਸੀਂ ਤਾਂ ਹੋਣੀ ਅਈਦਾ ਸਾਰਿਆਂ ਨੂੰ ਜੋੜਨਾ ਅਲੱਗ ਨਹੀਂ ਹੋਣਾ ਕਿਸੇ ਤੇ ਅਲੱਗ ਹੋਇਆ ਕੱਲਾ ਰਹਿ ਜਾਂਦਾ ਹੁੰਦਾ ਹੈ ਅਲੱਗ ਹੋ ਕੇ ਆਏ ਹੋਏ ਕੱਡੇ ਹੋਏ ਉਥੋਂ ਸੱਚ ਖਣਨ ਤੋਂ ਇਹ ਅਲੱਗ ਆਲੇ ਨੇ ਸੱਚ ਖਣਨ ਤੋਂ ਕੱਡੇ ਹੋਏ ਨਹੀਂ ਮੇਰੇ ਦਾ ਹੀ ਆਢ ਹੋਣਾ ਜੇ ਪਿਓ ਨੂੰ ਕਹਿੰਦਾ ਬੋ ਤਾਂ ਡੋਣਾ ਉਹ ਕੱਲਾ ਹੀ ਰਹਿ ਜਾਂਦਾ ਉਹ ਰਹਿ ਜਾਓਗੇ ਤੁਸੀਂ ਆਢ ਹੋ ਕੇ ਥੋੜੇ ਨਾਲ ਕਰ ਨਹੀਂ ਜੋੜਨਾ ਨਾ ਤੁਸੀਂ ਜੋੜ ਸਕਨਾ ਤੁਸੀਂ ਤਾਂ ਆਪਸ ਵਿੱਚ ਹੀ ਜੁੜੀ ਰਹਿ ਸਕਦੇ ਜਿਹੜੇ ਆਪਸ ਵਿੱਚ ਹੀ ਨਹੀਂ ਜੁੜ ਕੇ ਰਹਿ ਸੋ ਤੇ ਦੂਏ ਨੂੰ ਉਹਨਾਂ ਜੋੜਨਾ ਉਹ ਅਗਰੇ 7 பை 8 ਚੁੱਲੇ ਤੁਹਾਡੇ ਦਾ 7 பை 8 ਚੁੱਲੇ 8 ਵਾਂ ਹੋ ਜਾਏਗਾ ਕਿੰਨੀ ਥੋੜੀ ਆਬਾਦੀ ਹੈ ਕਿੰਨੇ ਥੋੜੇ ਦਲ ਬਣੇ ਫਿਰਦੇ ਨੇ ਕਿੰਨੇ ਥੋੜੇ ਨੇ ਗਰੁੱਪ ਨੇ ਕਿੰਨੀਆਂ ਥੋੜੀਆਂ ਜਿਹੀਆਂ ਪਾਰਟੀਆਂ ਨੇ ਤੁਸੀਂ ਕਿਸੇ ਨੂੰ ਨਾਲ ਜੋੜ ਲੋਗੇ ਆਪੇ ਜੁੜ ਕੇ ਦਿਖਾਓ ਤੁਸੀਂ ਪਹਿਲਾਂ ਆਪ ਜੁੜ ਕੇ ਦਿਖਾਓ ਜਦੋਂ ਆਪ ਜੁੜ ਬੁਢੇ ਕਿਹਨਾਂ ਚੜ੍ਹੇਉਂਦਾ ਪੋੜੇ ਜੋ ਹੈਗਾ ਵਿਝੜ ਨੋਕਾ ਹਾਂ ਹੋਰ ਪਾਰਟੀਆਂ ਬਣ ਜਾਣਗੇ ਦਿਨ ਬਦਲ ਬੁਢੇ ਜਾਣ ਗਿਆ ਇਹ ਬਿਮਾਰੀ ਬਦੂਏ ਬਦੂ ਘਟਣੀ ਦੀ ਕਟੋਗੇ ਕੁਰਬਾਨੀ ਕਟਾਉਗੀ ਆ ਚੜ੍ਹਣਾ ਕਟਾਉ ਆ ਬਦਲੂਗਾ ਤਾਕੜੂ ਆ ਚੜ੍ਹਣਾ ਕੁਰਬਾਨੀ ਦੇ ਆਊਗਾ ਸੋਚ ਕੁਰਬਾਨੇ ਵਾਲੀ ਹੋਊਗੀ ਫਿਰ ਘਟਜੂ ਦੇਣਾ ਹੀ ਦੇਣਾ ਲੈਣਾ ਕੁਛ ਨਹੀਂ ਇਹ ਤੇ ਸਭ ਇਹ ਤਰਫ ਸਭ ਦੇਣ ਲੁਈ ਤਨਮਨ ਤਨ ਸਭ ਸੋਬ ਗੁਰ ਕੋ ਹੁਕਮ ਬਣਾ ਭਾਈ ਜਿਹੜਾ ਇੱਥੇ ਖੜਾ ਹੋ ਸਿੱਖੇ ਬਾਕੀ ਸਿੱਖੇ ਨਹੀਂ ਉਹ ਕੋਈ ਜੋੜ ਲੂ ਕਿਸੇ ਬੰਦੇ ਨੂੰ ਨਾਲ ਜਿਹੜਾ ਇਹ ਕਹਿੰਦਾ ਉਹ ਤਾਂ ਜੋੜ ਕਿਸੇ ਨੂੰ ਬਾਕੀ ਨਹੀਂ ਕੋਈ ਜੋੜ ਸਕਦਾ ਬਾਕੀ ਤਾਂ ਢਡ ਦੀ ਭੁੱਖ ਹੈ ਸਭ ਦੀ ਢਡ ਦੀ ਭੁੱਖ ਹੈ ਢਡ ਦੀ ਆਤਮਾ ਦੀ ਭੁੱਖ ਨਹੀਂ ਹੈ ਕਿਸੇ ਕੋਲ ਤੇ ਆਤਮਾ ਦੀ ਭੁੱਖ ਦੀ ਗੱਲ ਹੈ ਸੇਕ ਨੂੰ ਆਤਮਾ ਦੀ ਭੁੱਖ ਹੈ ਤੇ ਮਨੁੱਖ ਗੁਰਮੁਖ ਨੂੰ ਆਤਮਾ ਦੀ ਭੁੱਖ ਹੈ ਇਹਨਾਂ ਨੂੰ ਢਿੱਡ ਦੀ ਭੁੱਖ ਹੈ ਮਨੁੱਖਾਂ ਦੀ ਢਿੱਡ ਦੀ ਭੁੱਖ ਹੁੰਦੀ ਹੈ ਲੜਾਈ ਢਿੱਡ ਦੀ ਭੁੱਖ ਦੀ ਹੈ ਜਿਹਦੀ ਢਿੱਡ ਦੀ ਭੁੱਖ ਦੀ ਲੜਾਈ ਹੈ ਉਹ ਆਤਮਾ ਦੀ ਭੁੱਖੋ ਜਾਗੀ ਹੋ ਨਹੀਂ ਹੋਈ ਹੈ ਜੋ ਕਿਸੇ ਚ ਜਾਗੀ ਹੋ ਨਹੀਂ ਹੈ ਤੁਹਾਡੇ ਜਨਾਬ ਦੀ ਤੇ ਭੁੱਖ ਨਾਮ ਦੀ ਭੁੱਖ ਜਾਗੀ ਨਹੀਂ ਰੌਲਾ ਪਾਉਂਦੇ ਸੀ ਸਿੱਖਾਂ ਘੜੀ ਗੱਲ ਦੇ ਸਿੱਖ ਸਿੱਖੀ ਦੀ ਤੁਹਾਨੂੰ ਲੋੜ ਜਾਂ ਪਊ ਜਦੋਂ ਨਾਮ ਦੀ ਭੁੱਖ ਪੈਦਾ ਹੋਗੀ ਰੋਟੀ ਦੀ ਲੋੜ ਉਹਨੂੰ ਹੈ ਜਿਹਦੇ ਅੰਦਰ ਭੁੱਖ ਹੈ ਅੜਾੜੇ ਸਭ ਕੁਝ ਵੇ ਡਾਕਟਰ ਕਹਿੰਦਾ ਵੀ ਕੀ ਤੁਹਾਡੇ ਕੋ ਬਾਣੀ ਪਈ ਹੈ ਕੌਣ ਖਾਂਦਾ ਤੁਹਾਡੇ ਚ ਕੀ ਅੰਦਰ ਦੱਸੋ ਕਿਹਨੇ ਹਜਮ ਕੀਤੀ ਹੈ ਕਿਹਨੇ ਖਾਧੀ ਉਹ ਦਿਖਾਓ ਤੁਹਾਨੂੰ ਭੁੱਖ ਹੋਵੇ ਤਾਂ ਖਾਓ ਤੇ ਹਜਮ ਕਰੋ ਇਹਦਾ ਅਸਰ ਵੀ ਹੋਵੇ ਜੇ ਕੋ ਖਾਵੇ ਜੇ ਕੋ ਪੁੱਜੇ ਤਿਸਕਾ ਹੋਏ ਬੁਝਾਰੋ ਭੁੱਖ ਹੋਵੇ ਤਾਂ ਕੋ ਖਾਵੇ ਭੁੱਖਾ ਜੇ ਉਧਰ ਦੀ ਮੂਰੇ ਗੱਲਾਂ ਨਾਲੇ ਕੁਰਬਾਨੀ ਨੂੰ ਸਿੱਖੀ ਰੂ ਸਭ ਦੁਨੀਆ ਪਛਾਣਦੀ ਹੈ ਜਾਣਦੀ ਹੈ ਜਿਵੇਂ ਸੰਤਾ ਨਾ ਹੋਈਏ ਉਵੇਂ ਤੁਹਾਡੇ ਨਾਲ ਹੋਊਗੀ ਇਹਨਾਂ ਨੂੰ ਸੰਤਾ ਨਾ ਵੀ ਤਾਂ ਹੁੰਦੀ ਹੈ ਕੋਈ ਬਖੰਡਵਾਦ ਕਿਸੇ ਦਾ ਨਹੀਂ ਵੇਚਣਾ ਇਹ ਵਿਦਭਾਰਣਵਾਦੀ ਹੈ ਤਾਰੇ ਸਾਰਿਆਂ ਦੇ ਪਖੰਡਵਾਦ ਵੜਿਆ ਹੈ ਝੂਠ ਵੜਿਆ ਕਿਸੇ ਧਰਮ ਦਾ ਪਖੰਡਵਾਦ ਨਹੀਂ ਰਹਿਣਾ ਬਾਕੀ ਸਾਰਿਆਂ ਨੇ ਇਕੱਠੇ ਹੋ ਜਾਣਾ ਸਾਰੇ ਧਰਮਾਂ ਨੇ ਇਕੱਠੇ ਹੋ ਜਾਣਾ ਸਾਰੇ ਧਰਮਾਂ ਨੇ ਇਕੱਠੇ ਹੋ ਜਾਣਾ ਜਿਹੜੇ ਇਹ ਜਿਹੇ ਨਾ ਪੱਟਾ ਪੌੜੇ ਵਾਲੇ ਇਹਨਾਂ ਨੇ ਡਰੈਗਡ ਇਹਨਾਂ ਨਾਲ ਬਤੂ ਹੀ ਲੜੀ ਜਾਓ ਪਾਸੇ ਹੋ ਕੇ ਆਰੇ ਸਾਰੇ ਨੂੰ ਤੁਸੀਂ ਲੜੀ ਜਾਓ ਜਿਹੜੇ ਲੜਾਈ ਪਾਉ ਉਹਦੇ ਨਾਲ ਪਬਲਿਕ ਨੂੰ ਦੀ ਰਲੋ ਪਬਲਿਕ ਨੂੰ ਪਛਾਣ ਲੈਣਾ ਲੜਾਉਣ ਵਾਲੇ ਕੌਣ ਨੇ ਸਾਥੋ ਤੇ ਲੜਾ ਕੇ ਰੋਟੀਆਂ ਸੇਕਣ ਵਾਲੇ ਗੌਰ ਨੇ ਪਬਲਿਕ ਨੂੰ ਸਮਝ ਲੈਣਾ ਸਭ ਨੂੰ ਉਹਨਾਂ ਨੇ ਇਹਨਾਂ ਨੂੰ ਛੱਡ ਦੇਣ ਮੇਰੇ ਨੂੰ ਛੱਡੋ ਪਰੇ ਦਾਤਾ ਦਿਆਲ ਅਣਪੂਤ ਧਰਮ ਦਾਤਾ ਦਿਆਲ ਉਹ ਤਾਂ ਦਿੰਦੇ ਹੀ ਦਰਦਾਰਾ ਨਾ ਹੋਵੇ ਸ਼ਾ ਕੁਝ ਭੁਗਦਾ ਹੀ ਨਹੀਂ ਤੇ ਖਾਲਸਾ ਵੀ ਐਸੇ ਚਾਹੀਦਾ ਦਰਮਾਦਾਕੀਏ ਅਣਪੂਤ ਹੈ ਅਰਬੂਦ ਕੀ ਹੁੰਦਾ ਇਹਦੀ ਮਾਇਆ ਵਾਲੀ ਕੋਈ ਚੀਜ਼ ਨਹੀਂ ਹੈ ਮਾਇਆ ਵਾਲਾ ਧਰਮ ਹੀ ਹੈ ਉੱਥੇ ਅੱਖਾਂ ਨੂੰ ਦੇਖਣ ਵਾਲਾ ਕੁਝ ਨਹੀਂ ਹੈ ਤਾਂ ਡਰਾਕੜੀ ਦੁਨੀਆ ਦਾ ਧਰਮ ਆਤਮਾ ਦੀ ਖੁਰਾਕ ਮਿਲਦੀ ਹੈ ਤੂੰ ਉਹ ਉਹ ਤਾਂ ਆ ਸਾਰੇ ਬਿਰਾ ਉਹ ਤਾਂ ਬਿਰਾ ਧਰਮ ਦੀ ਹੀ ਖੁਰਾਕ ਇੱਥੇ ਬਥੇਰੀ ਦਿੱਤੀ ਹੋਈ ਹੈ ਸਾਰਿਆਂ ਨੂੰ ਬੰਦ ਕੀੜੇ ਮਕਾਉਣਾਂ ਦਾ ਕੀ ਧਰਮ ਹੈ ਬਈ ਉਹਨਾਂ ਦੀ ਖੁਰਾਕ ਇੱਥੇ ਹੈ ਜੀ ਪਸ ਖੁਰਾਕ ਹੀ ਖਰਾਬ ਹੈ ਜੀ ਛੇੜ ਦੀ ਖੁਰਾਕ ਹੈ ਜੀ ਸਾਰੇ ਕਿਹੜੀ ਜੂਨ ਅਜੀ ਦੀ ਖੁਰਾਕ ਇੱਥੇ ਹੈ ਜੀ ਸਰੀਰ ਦੀ ਖੁਰਾਕ ਕਿਹੜੀ ਚੀਜ਼ ਦੀ ਨਹੀਂ ਹੈ ਇਹ ਵੀ ਆਦਮੀ ਦੀ ਖਰਾਬ ਹੈ ਆਦਮੀ ਵੀ ਜਾਨਵਰ ਹੈ ਇੱਕ ਉਹ ਸੋਸ਼ਲ ਐਨੀਮਲ ਹੈ ਵੀ ਸਰੀਰ ਦੀ ਖੁਰਾਕ ਤਾਂ ਜਿਹੇ ਜੀ ਜਾਨਵਰਾਂ ਦੀ ਹੋ ਜੀ ਦੀ ਹੈਗੀ ਇਤ ਕਲਕੇ ਧਰਮ ਜਿਹੜੇ ਜਿਹੜੇ ਧਰਮ ਸੰਸਾਰੀ ਪਦਾਰਥਾਂ ਦੀ ਗੱਲ ਕਰਦੇ ਨੇ ਉਹ ਧਰਮੇ ਨਹੀਂ ਹੁੰਦੇ ਇੱਥੇ ਹੀ ਫਰਕ ਪੈਂਦਾ ਆਖੇ ਕੁਰਬਾਨੀ ਦਾ ਜਿਹੜਾ ਪਰਮੇਸ਼ਰ ਨੇ ਧਰਮ ਦਿੱਤਾ ਹੈ ਉਹ ਆਤਮਾ ਦੀ ਖੁਰਾਕ ਹੈ ਸਿਰਫ ਅਨਪੂਰਨ ਧਰਮ ਜਿਹੜਾ ਵਿਪੂਰਨ ਧਰਮ ਹੈ ਨਾ ਉਹ ਧਰਮ ਆ ਹਨ ਦਾ ਇਹਨਾਂ ਦਾ ਵਿਪੂਰਨ ਧਰਮ ਇਹ ਬਨੁਖਾਂ ਦਾ ਸਖਾਂ ਦਾ ਵਿਪੂਤ ਹੈ ਮਾਇਆ ਜਿਹੜੇ ਦਰਮਿਆ ਵਿਚ ਮਾਇਆ ਆਵੜੇ ਉਹ ਵਿਪੂਤ ਧਰਮ ਹੋ ਜਾਂਦਾ ਵਿਪੂਤੀ ਮਾਇਆ ਨੂੰ ਕਹਿੰਦੇ ਨੇ ਪਦਾਰਥਾਂ ਨੂੰ ਪਦਾਰਥਕ ਤੋਂ ਰਹਿਤ ਕਰ ਰਿਹਾ ਇਹ ਦਰਮੂ ਪਦਾਰਥਾਂ ਦੀ ਭੋਖ ਮਿਟਾ ਰਿਹਾ ਪਦਾਰਥਾਂ ਦਾ ਤਿਆਗ ਕਰ ਨੂੰ ਕਹ ਰਹੇ ਪਦਾਰਥਾਂ ਦਾ ਤਿਆਗ ਕਰਦੇ ਕਰਦੇ ਸ਼ਰੀਰ ਦਾ ਵੀ ਤਿਆਗ ਸ਼ਰੀਰ ਖਾਤਰ ਪਦਾਰਥ ਨੇ ਲੂ ਇਹਨੇ ਜਿਉਂਦੇ ਨੇ ਸ਼ਰੀਰੇ ਛੱਡਣ ਮਾਰਨ ਕੋ ਬੋਲੇ ਉਹਨੇ ਪਦਾਰਥ ਕਰਨੇ ਕੀਤੇ ਬਾਕੀ ਨਾ ਕਿ ਰਿਸ਼ਤੇਦਾਰ ਪੈਣ ਪਾਈ ਵਾ ਪੁੱਤੀ ਕੁਛ ਉੱਦਾ ਹੀ ਨਹੀਂ ਸਿੱਖਦਾ ਜੇ ਸਿੱਖ ਜੇ ਹੁੱਦਾ ਤਾਂ ਸਿੱਖਦੀ ਹੈ ਜੇ ਹੁੱਦਾ ਫਿਰ ਸਿੱਖ ਨਹੀਂ ਜੇ ਜੇ ਸਿੱਖਦਾ ਉਹਦਾ ਹੈ ਕੁਛ ਨਹੀਂ ਫੇ ਛੱਡ ਕੇ ਕਿਨੂੰ ਜਾਣੇ ਪਦਾਰਥ ਛੱਡ ਕੇ ਕਿਨੂੰ ਜਾਣੇ ਪਦਾਰਥ ਕਰਨੇ ਕੀਨੇ ਪਦਾਰਥ ਸੋਨੇ ਨਾਲ ਨਹੀਂ ਜਾਣੇ ਇੱਥੇ ਕੋਈ ਹੈ ਨਹੀਂ ਜਿਹਨੂੰ ਛੱਡ ਕੇ ਜਾਣੇ ਇੱਥੇ ਉਹਦੇ ਹੀ ਨੇ ਸਾਰੇ ਜੇ ਸਿੱਕਾ ਤਾਂ ਸਾਰੇ ਉਹਦੇ ਇੱਕੋ ਜਿਹੇ ਹੀ ਨੇ ਲੋ ਫਿਰ ਇੱਥੇ ਬਰਾਤ ਰਹਿੰਦੋ ਸਾਰੇ ਵਰਤਦੇ ਇੱਥੇ ਤੇਨੂੰ ਕੀ ਤਕਲੀਫ ਆ ਬਰਾਤਾਂ ਦੀ ਜੇ ਤਾਂ ਤੂੰ ਸੰਭ ਜੋੜ ਅਵਰ ਤੋੜੀ ਐ ਫਿਰ ਤਾਂ ਸਿੱਖਾ ਐ ਜੇ ਤੋੜੀ ਨਹੀਂ ਫਿਰ ਸਿੱਖੇ ਜੇ ਤੋੜ ਲਈ ਅਵਰ ਸਰਬ ਪਦਾਰਥ ਕੀ ਕਰਨੇ ਨੇ ਇਕੱਠੇ ਕਰਕੇ ਕੋਈ ਰਾਹ ਨਹੀਂ ਛੱਡਿਆ ਪਾਣੀ ਨੂੰ ਨਿਕਲਣ ਕਿਸੇ ਨੂੰ ਕੋਈ ਰਾਹ ਨਹੀਂ ਕਿਸੇ ਨੂੰ ਨਿਕਲਣ ਛੱਡਿਆ ਹੋਇਆ ਪਰ ਬੰਨੇ ਕਾਲ ਪੰਚਾਇਤ ਦਾ ਕਹਾ ਸਰਮਥੇ ਮੰਟਾਲਾ ਫੇਰੋਤੀ ਕੋਈ ਰਾਹ ਨਹੀਂ ਕਿਸੇ ਨੂੰ ਛੱਡੂਗਾ ਜਿਆ ਹੈ ਧਰਮ ਅਨਬੂਧ ਧਰਮ ਇਹ ਧਰਮ ਕੀ ਹੈ ਅਨਬੂਧ ਕੋਈ ਗੱਲ ਨਹੀਂ ਇਹਦੇ ਵਿੱਚ ਹੈ ਇਹ ਜਿਹੜੀਆਂ ਸਾਖੀਆਂ ਜੋੜੀਆਂ ਮਾਇਆ ਦੀਆਂ ਸਭ ਝੂਠ ਹੈ। ਗੁਰੂ ਗੁਰੂ ਕਰਨਾ ਕੋਈ ਮਾਇਆ ਦੀ ਗੱਲ ਨਹੀਂ ਜੁੜੀ। ਗੁਰਬਾਣੀ ਦਾ ਕੋਈ ਮਾਇਆ ਦੀ ਗੱਲ ਨਹੀਂ ਜੁੜੀ। ਇਹਦਾ ਸਰੀਰ ਨਾਲ ਤੁਮ ਸੰਗ ਜੋੜਾ ਪਰ ਸੰਗ ਤੋੜੀ। ਅਵਰ ਕੀ ਅਵਰ ਮਾਇਆ ਹੈ। ਓਏ ਅਵਰ ਮਾਇਆ ਹੀ ਆ ਸਭ ਕੁਝ ਅਵਰ ਸੰਗ ਤੋੜੀ। ਅਵਰ ਬੋ ਵੀ ਅਵਰ ਬੋ ਵੀ ਤੋੜ ਲਿਆ। ਹਾ ਪ੍ਰੇਮ ਕਰਕੇ ਸਭ ਨੂੰ ਜੁੜਿਆ ਹੈ। ਆਤਮਾ ਸਾਰਿਆਂ ਨਾਲ ਪ੍ਰੇਮ ਕਰਦਾ ਵੋ ਨਹੀਂ ਹੈ ਪ੍ਰੇਮ ਵੋ ਇਹ ਜਿਹੜਾ ਹੁੰਦਾ ਕਿਸੇ ਨਾਲ ਹੈਗਾ ਕਿਸੇ ਨਾਲ ਨਹੀਂ ਉਹ ਤਾਂ ਡਿਫਰੈਂਸ ਪੈਦਾ ਕਰਦਾ ਪ੍ਰੇਮ ਦਾ ਡਿਫਰੈਂਸ ਹੈ ਕਿਸੇ ਨਾਲ ਨਹੀਂ ਜਨਮ ਜਾਤ ਜੇ 70 76 ਹੁੰਦਾ 70 ਹੁੰਦਾ 70 ਨਾ ਹੋਊ 76 ਜੇ ਬੋਲੀ ਤਾਂ 77 ਕਹਿੰਦੇ ਨੇ ਸ਼ਤਰੂ ਉਹ ਤੇ ਬੜਾ ਸੇਸਾ ਹੁੰਦਾ ਚਾਚਰੀ ਨੂੰ ਸਾਢੇ 70 ਬੋਲਦੇ 70 ਬਿੱਤਰ ਨਾਹ ਜਨਮ ਜਾਤ ਨਹੀਂ ਜਨਮ ਜਾਤ ਨਾ ਜਨਮ ਹੈ ਨਾ ਜਾਤ ਹੈ ਨਾ ਸ਼ਤਰੂਆ ਨੂੰ ਬਿੱਤਰ ਹੈ ਹੁਣ ਦੱਸੋ ਕੀ ਕਰਨ ਨਾ ਜਨਮ ਹੈ ਨਾ ਜਾਤ ਹੈ ਸ਼ਰੀਰ ਹੈ ਨਾ ਸ਼ਤਰੂਆ ਨੂੰ ਬਿੱਤਰ ਜਿੱਥੇ ਜਾਣਾ ਹੈ ਉੱਥੇ ਦੀ ਗੱਲ ਹੈ ਉਹ ਵਸਤਾ ਇੱਕ ਐਸਾ ਵਸਤਾਜ ਬੋਤ ਰਹੇ ਸੀ ਉਹ ਫਿਰ ਬੱਖ ਕੀ ਦੇ ਨਾਲ ਹੁੰਦੇ ਹੋ ਤੁਸੀਂ ਇਹਦਾ ਛਤਰੂ ਮਤਰੇ ਨਹੀਂ ਕੋਈ ਉਹ ਕਿਹਦੇ ਨਾਲ ਬਖ ਹੁੰਦਾ ਉਹਦਾ ਸਾਰਿਆਂ ਨੂੰ ਬਖ ਸੁਦਾ ਸਮ ਇਹ ਬਖ ਹੁੰਦੇ ਨੇ ਬਖ ਕੋਈ ਨਹੀਂ ਛਤਰੂ ਮਤਰੇ ਹੈਗੇ ਨੇ ਫਿਰ ਬਿਤ ਹੈ ਛਤਰੂ ਨੇ ਬਿਤ ਮੀਂ ਕਿ ਛਤਰੂ ਮਤਰੇ ਨਹੀਂ ਉਹਦਾ ਸਾਰੇ ਕੋਈ ਨਹੀਂ ਉਹਨੂੰ ਉਹ ਬਖ ਕਿਹਦੇ ਨਾਲ ਹੁੰਦੇ ਹੋ ਤੁਸੀਂ ਕੈਲੰਡਰ ਕਿਹਦਾ ਉਲਟ ਬਣਾਉਦੇ ਹੋ ਤੁਸੀਂ ਓਏ ਨਾ ਨੇ ਕਲੰਡਰ ਬਣਾਉਂਦੇ ਨੰਦਿਆਂ ਬੱਤਾ ਝੂਠੀਆਂ ਨੇ ਸੱਚੀ ਬਾਤ ਵਾਲੇ ਕਲੰਡਰ ਨਹੀਂ ਬਣਾਉਂਦੇ ਕਲੰਡਰ ਜੋੜਦਾ ਸੰਸਾਰ ਨਾਲ ਅਜੀ ਸੰਸਾਰ ਤੋਂ ਗਹਾਂ ਦੀ ਬੱਤਾ ਸਾਡੀ ਇਹ ਤਾਂ ਸੰਸਾਰ ਨਾਲ ਜੋੜਦਾ ਕੀ ਕਰਾਂ ਉਹ ਕਲੰਡਰ ਨੂੰ ਇਸਵੀ ਵਾਲਾ ਕਲੰਡਰ ਨਹੀਂ ਕੰਮ ਕਰਦਾ ਨਾਲ ਤਾਂ ਪਤਾ ਹੀ ਇਹ ਵੀ ਨਹੀਂ ਇਸ ਵਿੱਚ ਪੈਦਾ ਹੋਏ ਤੇ ਉਹ ਕਲੰਡਰ ਹੈ ਪਹਿਲੇ ਸਾਲ ਜੇ ਤੁਸੀਂ ਭਲਾ ਯਾਦ ਰੱਖ ਨਹੀਂ ਕੀ ਕਰਨ ਤੁਸੀਂ ਯਾਦ ਰੱਖ ਕੇ ਕਰਨਾ ਕੀ ਗੁਰਬਾਨੀ ਦਾ ਖਰੇ ਆਦਮੀ ਬਾਕੀ ਡੇਟਾ ਸਭ ਯਾਦ ਰਿਹਾ ਤੇ ਡੇਟਾ ਯਾਦ ਨੇ ਬਹੁਤ ਕਰੰਟਰ ਯਾਦ ਨੇ ਗੁਰਬਾਨੀ ਦਾ ਖਰੇ ਆਦਮੀ ਨਾ ਇਹਨਾਂ ਲੋੜਾ ਗੁਰਬਾਨੀ ਦੀ ਆ ਦੂਹੇ ਚੀਜ਼ਾਂ ਦੀ ਖੋਜ ਬਹੁਤ ਆ ਗੁਰਬਾਨੀ ਦੀ ਕੋਈ ਖੋਜ ਨਹੀਂ ਕਹਿੰਦੇ ਨਾ ਸੀ ਸਿੱਖੋ ਵੇਖੋ ਤੁਸੀਂ ਸਵਾ ਦਿਖੇ ਕਹਿੰਦੇ ਕੋਣ ਤੁਸੀਂ ਅ ਦੁਨੀਆਂ ਇੰਨੀ ਕਿਤਾਬਾਂ ਯੂਜ਼ ਕਰਦੇ ਆ ਇਹਦੀ ਕਰੋ ਬਰਗ ਸਟੱਡੀ ਜੀ ਤੋ ਕੁਝ ਮਿਲ ਲੈ ਇਹ ਪਿਓ ਮਾਇ ਹੀ ਇਹ ਸਭ ਕੁਝ ਇਤੋ ਜਨ ਪਦਾਰਥ ਮਿਲ ਲੈ ਇਹ ਤੋ ਪ੍ਰਾਪਤੀ ਕੁਛ ਉਤੋ ਤੋਂ ਕੀ ਪ੍ਰਾਪਤੀ ਹੈ ਸਮਝ ਲੈਂਦੇ ਸਾਰਾ ਆਪੇ ਆ ਜਾਂਦਾ ਠੀਕ जय पुत्र भात नहीं मित्र मात जय पुत्र भात नहीं मित्र मात दादा पुत्र ना दा कोई ना कोई भा है ना कोई मित्र है ना उ दसो की नु छड़ के जाना सब कुछ कीदा बात है करना कुछ सारे इने कोई भी नहीं ये अपने अंदर ਪਪੇ ਆ ਤੇ ਪਦਾਰ ਸਾਰਿਆਂ ਦੇ ਸਾਝੇ ਹੀ ਨੇ ਇਹ ਲੜਦੇ ਨੇ ਲੜੀ ਜਾਣ ਤੋਂ ਲੜਦਿਆਂ ਨੂੰ ਸਮਝਾਉਣ ਵਾਲਾ ਸਿੱਖ ਲੜਾਈ ਪਾਉਣ ਵਾਲਾ ਸਿੱਖ ਨਹੀਂ ਹੈ ਸਿੱਖ ਤੇਰ ਨਹੀਂ ਬਣ ਸਕਦਾ ਲੜਾਈ 'ਚ ਜਿਹੜਾ ਸਿੱਖ ਲੜਾਈ ਤੇਰ ਬਣ ਕੇ ਸਿੱਖੇ ਨਹੀਂ ਅਸੀਂ ਤੇਰ ਨਹੀਂ ਬਣਨਾ ਹੈ ਅਸੀਂ ਲੜਾਈ ਬਟਾਉਣੀ ਹੈ ਲੜਾਈ ਬਟਾਉਣ ਵਾਲਾ ਤੇਰ ਨਹੀਂ ਬਣਦਾ ਗੁਰਮਤਿ ਲੜਾਈ ਬਟਾਉਦੀ ਹੈ ਸਭ ਦੀ ਦੁਨੀਆਂ ਦੀ ਲੜਾਈ ਹੈ ਕਬੀਰ ਕਨ ਹਮਰਾਂ ਝਗੜਾ ਰਹਾ ਨਾ ਉਹ ਪੰਡਤ ਬੁੱਲਾ ਛਾਡੇ ਦੋ ਲੋ ਦੋਏ ਛੱਡਦੇ ਸੀ ਝਗੜਾ ਉਹਨਾਂ ਦਾ ਹੋ ਗਿਆ ਸਾਡਾ ਕਿਹਦੇ ਨਾਲ ਉਹ ਝਗੜਾ ਜੀ ਜੇ ਅੱਜ ਸਿੱਖਾਂ ਦਾ ਝਗੜਾ ਹੈ ਇਹ ਪੰਡਤਾਂ ਜਿਹੜੇ ਹਨ ਇਹ ਬੁੱਲਾ ਦੇ ਜੇਲੇ ਦੇ ਜਿਨ੍ਹਾਂ ਦਾ ਝਗੜਾ ਹੈ ਇਹ ਤਾਂ ਪੰਡਤ ਦੇ ਜੇਲੇ ਨੇ ਬੁੱਲਾ ਦੇ ਜੇਲੇ ਦੇ ਸਿੱਖਿਆ ਉਹਨਾਂ ਤੋਂ ਹੋទ ਨਹੀਂ ਹੋਈ ਹੈ ਚਾਹੇ ਬੁੱਲਾ ਤੋਂ ਲਈ ਹੋਵੇ ਕਿਸੇ ਨੇ ਚਾਹੇ ਪੰਡਤ ਤੋਂ ਲਈ ਹੋਵੇ ਜੇ ਗੁਰੂ ਤੋਂ ਸਿੱਖਿਆ ਲਈ ਹੈ ਗੁਰਬਾਣੀ ਤੋਂ ਸਿੱਖਿਆ ਲਈ ਹੈ ਸ਼ਬਦ ਗੁਰੂ ਤੋਂ ਸਿੱਖਿਆ ਲਈ ਹੈ ਫਿਰ ਕੋਈ ਝਗੜਾ ਨਹੀਂ ਕਿਸੇ ਤੋਂ ਯਾਦ ਦਸਣ ਕਾਹਦਾ ਝਗੜਾ ਜੇ ਕਰਮੋ ਭਰਮ ਨਹੀਂ ਧਰਮ ਧਿਆਨ ਜੇ ਕਰਮ ਪਰਬ ਨਾ ਤਾਂ ਕਰਮਾ ਕੋਈ ਉਨੂੰ ਲੋਡ ਕਰਨ ਦੀ ਨਾ ਕੋਈ ਧਰਮ ਧਰਮ ਵੀ ਥਲੇ ਰਹਿ ਜਾਂਦੇ ਨੇ ਤਰਮ ਦਾ ਉਹਦੇ ਵਾਸਤੇ ਇਹਨਾਂ ਫਸਿਆ ਹੈ ਮਾਇਆ ਚ ਤਰਮ ਦੁਨੀਆ ਵਾਸਤੇ ਹੈ ਜਿਹੜਾ ਦੁਨੀਆ ਤੋਂ ਪਰੇ ਬੈਠਾ ਹੈ ਪਰਮੇਸ਼ਰ ਦੀ ਗੱਲ ਚੱਲਦੀ ਹੈ ਨਾ ਇੱਥੇ ਇੱਕ ਦੀ ਗੱਲ ਚੱਲਦੀ ਹੈ ਤਰਮ ਤਾਂ ਧਰਮ ਦੀ ਸਿੱਖਿਆ ਦਿੰਦਾ ਹੁੰਦਾ ਉਹਨੂੰ ਆਪ ਤਾਂ ਧਰਮ ਤੋਂ ਆਪਣਾ ਤਾਂ ਉਹਨੇ ਕੱਬ ਕਰ ਲਿਆ ਤਰਮ ਨਾ ਤਾਂ ਜਿਹੜਾ ਕੰਮ ਨਾ ਕਦੇ ਪੂਰੀ ਕਰਨ ਵਾਸਤੇ ਤਰਮ ਹੁੰਦਾ ਕਦ ਕਦੀ ਪੂਰੀ ਹੋ ਗਈ ਫਿਰ ਧਰਮ ਕਾ ਦਾ ਨਾ ਕੋਈ ਧਰਮਾ ਨਾ ਧਿਆਨਾ ਨਾ ਉਹ ਕਰਮ ਕੁਛ ਵੀ ਨਹੀਂ ਉਹਦੇ ਵਾਸਤੇ ਕੋ ਇਹਨਾ ਗੱਲਾਂ ਤੋਂ ਕੀ ਆ ਉਹ ਮੁਖਤ ਮੁਕਤੀ ਇਹਨਾ ਗੱਲਾਂ ਤੋਂ ਹੀ ਆ ਹੋਰ ਕਾ ਤੋਂ ਮੁਕਤੀ ਹੈ ਕਿਹਦੀ ਮੁਕਤੀ ਹੋਰ ਕਾ ਤੇ ਇਹਨਾ ਗੱਲ ਦਾ ਮੁਖਤ ਹੈ ਆ ਸਾਡ ਨੂੰ ਮੁਕਤੀ ਆਸੀਂ ਇਹ ਜੋ ਮੁਕਤੀ ਲੈਣੀ ਹੈ ਜਿਹਦਾ ਕੰਮ ਵਿਚਾਰੇ ਪਿਆ ਮੁਖਤ ਕਿਵੇਂ ਹੋ ਬਿਚਾਰੇ ਕੰਮ ਜਿਹੜਾ ਪਿਆ ਹੈ ਉਹ ਨਹੀਂ ਮੁਕਤ ਹੈਗਾ ਮੁਕਤ ਉਹ ਜਿਹਨੇ ਆਪਣਾ ਕੰਮ ਕਰ ਲਿਆ ਜਿਹਨੇ ਆਪਣਾ ਨਿਵੇਲ ਲਿਆ ਜਿਹੜਾ ਬਖਸ਼ਿਆ ਗਿਆ ਬਹੁਤ ਨਾ ਬਬਜਲ ਫੇਰੇ ਵਾਲੀ ਗੱਲੀ ਦੀ ਹੋ ਗਈ ਉਹ ਮੁਕਤ ਹੈ ਉਹਦਾ ਧਨ ਤੇ ਆਨ ਕੋਈ ਹੁੰਦਾ ਜਹ ਨਹੀਂ ਗਏ ਨਹੀਂ ਬਿਉਤਬਾਨ ਮੁਕਤ ਆਪਣੇ ਵੀ ਪਹਿਲਾਂ त्याਗੀ ਹੋਈ ਅਰ ਉਹ ਤਾਂ ਥੱਲੇ ਰਹਿ ਗਈ ਮੁਕਤੀ ਦੋਦੋ ਉਤੀ ਤਾਂ ਵੀ ਗਾਹਾਂ ਚਲੇ ਗਿਆ ਤੋ ਜੇ ਨੇਹ ਤੇ ਫਿਰ ਤਾਂ ਨਾ ਧਿਆਨ ਹੈ ਧਰਮ ਧਿਆਨ ਧਰਮ ਵਾਲਾ ਧਿਆਨ ਜੇ ਬੁਗਤੀ ਲੋੜਾ ਤਾਂ ਬੁਗਤੀ ਤੋਂ ਜੋ ਸੁਰਤੀ ਹੈ ਬੁਗਤੀ ਗਿਆ ਫਿਰ ਪਿੱਛੇ ਨੂੰ ਫਿਰ ਪਿੱਛੇ ਨੂੰ ਦੇਖੂ ਪਾਚੇ ਫੇਰ ਨਾ ਮੋੜੜਾ ਅਗਾਹ ਕੋ ਦਰਾਗ ਜਿਹੜੇ ਅਗਾਹ ਕੋ ਦਰਾਗ ਦੇ ਉਹ ਗਾਂਹ ਦੇਖਦੇ ਰਹੇ ਹੁਣ ਕੀ ਉਦਾਂ ਹੋ ਗਿਆ ਉਦਾਂ ਮੁਕੇ ਚਲੇਗੇ ਗਾਲ ਚਲੇਗੇ ਹਾਂਜੀ ਜੈ ਨੇਹ ਗਏ ਨਹੀਂ ਵਿਯੋਤਬਾਨ ਨਾ ਨੇਹ ਕਿਸੇ ਨਾਲ ਪ੍ਰੇਮ ਬੋਦੀ ਹੈ ਕਿਸੇ ਨਾਲ ਡੇਦੀ ਨਾ ਕੋਈ ਘਰ ਹੈ ਨਹੀਂ ਵਿਯੋਤਬਾਨ ਹੈ ਬੰਦੀ ਹੈ ਨਾ ਕੋਈ ਬੱਦਨ ਹੈ ਬਾਦ ਬਾਨ ਲੱਭਦੇ ਬਾਨ ਨਾ ਕਿਸੇ ਦੀ ਤੇ ਬੁੱਢੜ ਜਾ ਬੁੱਢੜ ਜਾ ਬਿਚੀ बंदना ते मुक्त है यही मुक्ति है ध्यान भी बंधन है ध्यान किसे दा नहीं आत्म ते है आत्म ते आने वे ओ नजारा जणा जणा माया जो नकड़ वाली बाहर जिना जर शरीर आ नजारा आत्म ते हलत असदी लोड है या शरीर नहीं है आत्म ते की लोड है ए ओ दी गल है जिथे शरीर है दी ਜੇ जात पात नहीं ਸਤਰ ਮਿੱਤਰ ਜੇ ਜਾਤ ਪਾਤ ਨਹੀਂ ਸਤਰ ਮਿੱਤਰ ਨਾ ਕੋਈ ਜਾਤ ਹੈ ਜੇ ਜਾਤ ਨਹੀਂ ਤਾਂ ਪਾਤ ਨਹੀਂ ਪਾਤ ਕੀ ਹੁੰਦਾ ਪਾਤ ਹੁੰਦਾ ਨੀਚਤਾ ਪਤਤ ਹੋ ਜਾਉ ਲੋ ਉਹ ਜਾਤ ਉਹਦੇ ਵਿੱਚ ਉੱਚੀ ਹੈ ਨੀਚ ਹੈ ਉੱਚ ਹੈ ਬੜਵੰਡੀ ਲੱਗਦੀ ਨਾ ਜਾਤ ਹੈ ਨਾ ਕੋਈ ਮਾਇਲ ਉਹਦੇ ਨਾਲ ਗਵਨ ਬਲੀਂਦਾ ਦਾ ਧਾਰਾ ਲੈ ਜੇਰੀ ਰਾ ਨਾ ਬਲੀਂਦਾ ਦਾ ਧਾਰਾ ਉੱਥੇ ਕੋਈ ਕੋ ਜ਼ਵਾਲ ਉੱਥੇ ਹੈ ਦੀ ਤੋ ਲਖਤਾ ਹੈ ਨਾ ਜ਼ਵਾਲ ਹੈ ਨਾ ਖੋਫ ਹੈ ਤੇ ਲੋਚੀ ਜਾਰੀ ਹੁੰਦੇ ਜਾਤ ਪਾਤ ਨਹੀਂ ਸੱਤਰ ਮਿੱਤਰ ਦੇ ਸੱਤਰ ਮਿੱਤਰ ਐ ਨਾ ਸੱਤੁਰਾ ਕੋਈ ਨਾ ਬਿੱਤਰ ਬਿੱਤਰ ਵਿੱਚ ਕੋਈ ਥਿਆ ਹੈ ਦੇਖੋ ਜਣਾ ਬਿੱਤਰੋ ਵੀ ਫਰਕ ਪਉਂਦਾ ਆ ਮਿੱਤਰ ਆ ਹੈ ਨਹੀਂ ਸਾਰੇ ਮਿੱਤਰ ਨੇ ਜੇ ਸਾਰੇ ਮਿੱਤਰ ਨੇ ਫਿਰ ਐ ਨਹੀਂ ਕਹਿ ਸਕਦੇ ਆਹ ਬੁੱਤਰ ਫਿਰ ਤਾਂ ਫਰਕ ਹੋ ਗਿਆ हां 70 ਮਿੱਤਰ ਜੇ ਨਹਿ ਗਏ ਨਹੀਂ ਚਿਹਨ ਚਿਤ੍ਰ ਜੇ ਦੇ ਗਏ ਦੇ ਗਏ ਈ ਘਰ ਦਾ ਬੋਰੀ ਹੈ ਕਿਤੇ ਨਹੀਂ ਚਿਹਨ ਚਿਤ੍ਰ ਤਾਂ ਚਿਹਨ ਚਿਤ੍ਰ ਹੈ ਕੋਈ ਆ ਕੋ Yoda ਹੁਲੀਆ ਚਿਹਨ ਜੇ ਰਾਵੜਾ ਨਾ ਕੋਈ ਫੋਟੋ ਖਿਜਾ ਸਕਦਾ ਨਾ ਕੋਈ ਤਸਵੀਰ ਬਣਾਈ ਜਾ ਸਕਦੀ ਹੈ ਨਾ ਕੋਈ ਉਹਦੀ ਮੂਰਤੀ ਬਣਾਈ ਜਾ ਸਕਦੀ ਹੈ ਜਿਹੇ ਰੰਗ ਰੂਪ ਹੋ ਰਹੀ ਹੈ ਨਾ ਤਸਵੀਰਾਂ ਬਣ ਰਹੀਆਂ ਨੇ ਨਾ ਇਹ じゃ ਹੈ ਨਹੀਂ ਉਹਦਾ ਕੁਝ ਵੀ ਨਾ ਰੰਗ ਰੂਪ ਹੈ ਨਾ ਰਾਗ ਰੇਖ ਹੈ ਨਾ ਤਾਂ ਰੰਗ ਰੂਪ ਹੈ ਨਾ ਉਹਦੇ ਕੋਈ ਭੁੱਖ ਵੀ ਹੈ ਉਹਦੀ ਕੋਈ ਇੱਛਾ ਵੀ ਹੈ ਰਾਗ ਦਾ ਇੱਛਾ ਰੂਪ ਹੈਦਰ ਅਸਲ ਦੇ ਵਿੱਚ ਵੇਰਾਗ ਉਹਨੇ ਇੱਛਾ ਤੇ ਉਹਨੂੰ ਬੇਰਾਗ ਕਹਦੇ ਨੇ ਸੱਚੀ ਇਹ ਜਿਹੜੇ ਰਾਗੀ ਨੇ ਇੱਛਾ ਹੈ ਇਹਨਾਂ ਦੇ ਵਿੱਚ ਮਾਇਆ ਦੀ ਹੁੰਦੀ ਹੈ ਭੁੱਖ ਇੱਛਾ ਕਰਕੇ ਗਾਉਂਦੇ ਨੇ ਨਹੀਂ ਗਾਉਂਦੇ ਕਹਦੇ ਨੇ ਕੀ ਲੋੜ ਹੈ ਇਹਨਾਂ ਨੂੰ ਕਲਾ ਵਾੜਨ ਦੀ ਕੀ ਲੋੜ ਪਈ ਜਦ ਟਾਈਮ ਬਣ ਕੇ ਉਹਨੇ ਚਿਰ ਦੇ ਵਿੱਚ ਕਹਿੰਦੇ ਨੇ ਇਹਨਾਂ ਚੰਦੇ ਇਹਨਾਂ ਪੈਸੇ ਲਵਾਂਗੇ ਫੇ ਕਾਦੇ ਵਾਤੇ ਪੁਕਾਰ ਸੌਦਾ ਇਹ ਤਾਂ ਵਿਜਨਾ ਸਰ ਉਹਨਾਂ ਦਾ ਹੋਰ ਵੀ ਤਾਂ ਗਵਈਏ ਕਰਦੇ ਹੀ ਨੇ ਭਗਵਾਨ ਤਬਾ ਨਾ ਹੋਰ ਗੱਲ ਦੇ ਗੋਲੇ ਵਾਲੇ ਨੇ ਗਵਈਏ ਨੇ ਰੋਟੀਆਂ ਇਹਦੇ ਕੋਲ ਗੋਵਾ ਲੋ ਚਾਹੇ ਰੋਟੀਆਂ ਜਿਹੇ ਜਾਤ ਜਿਹੇ ਜਨਮ ਜਾਤ ਨਹੀਂ ਭਰਮ ਭੇਖ ਨਾ ਜਨਮਾ ਨਾ ਜਾਤ ਆ ਨਾ ਭਰਮਾ ਨਾ ਭੇਜਦਾ ਜੇ ਰੰਗ ਰੂਪ ਨਹੀਂ ਰਾਗ ਰੇਖ ਜੇ ਜਨਮ ਜਾਤ ਨਹੀਂ ਭਰਮ ਭੇਖ ਨਾ ਜਨਮ ਹੈ ਨਾ ਜਾਤ ਹੈ ਸਰੀਰ ਨਾ ਅੰਦਰ ਭਰਮ ਹੈ ਪਰਮ ਨਹੀਂ ਹੈ ਜੇ ਜਨਮ ਜਾਤ ਨਹੀਂ ਭਰਮ ਭੇਖ ਭੇਖ ਵੀ ਨਹੀਂ ਹੈ ਕੋਈ ਪਰਮ ਵੀ ਨਹੀਂ ਭੇਖ ਵੀ ਕੋਈ ਨਹੀਂ ਜੋ ਜੇ ਸਰੀਰ ਹੋ ਤਾਂ ਹੀ ਭੇਖ ਹੋਊਗਾ ਸਰੀਰੇ ਕੋਈ ਨਹੀਂ ਜਨਮ ਜਾਤ ਹੀ ਨਹੀਂ ਹੈ ਤੇ ਭੇਖ ਦਾ ਹੁਲ ਕਿਸੇ ਭੇਖ ਤੋਂ ਬਾਹਰ ਹੈ ਤੇ ਸਾਡਾ ਭੇਖ ਰਹੀ ਹੈ ਵਰਦੀ ਹੈ ਸਿਰਫ ਅਸੀਂ ਜ਼ਰੂਰੀ ਨਹੀਂ ਸਾਰਿਆਂ ਦੇ ਵਰਦੀ ਪੌੜੀ ਹੈ ਜਿਹਨਾਂ ਫੌਜ ਭਰਤੀ ਹੋਣਾ ਵਰਦੀ ਉਹਦੇ ਵਾਸਤੇ ਹੁੰਦੀ ਹੈ। ਬਾਕੀ ਸਾਰੇ ਪਬਲਿਕ ਨੂੰ ਅਪਦੇ ਦੇ ਸਕਦੇ ਹੁਸੀਂ। ਸਾਰੀ ਪਬਲਿਕ ਲੈ ਸਕਦੇ ਹੈ। ਗੁਰੂ ਘਰ ਚੋਂ ਸਾਰੇ ਬੀੜਾ ਲੈ ਜਾਂਦੇ ਰਹੇ ਨੇ। ਕਿਸੇ ਤੇ ਪਾਵਨ ਦੀ ਲਗਾਈ ਦੀ ਵੀ ਤੂੰ ਐ ਸ਼ਰਤਾਂ ਨੇ ਤਾਂ ਬੀੜ ਤੈਨੂੰ ਦਬੋਗੇ। ਦੱਸਣ ਕਿੱਥੇ ਹੈ। ਇਹ ਜਿਹੜੀਆਂ ਸ਼ਰਤਾਂ ਲਾਉਂਦੇ ਨੇ। ਉਹ ਤੇਜੀ ਆਉਣੀ ਹੁੰਦਾ ਉਹ ਤੇ ਆਉਣੀ ਹੁੰਦਾ ਉਹ ਤੇ ਹੁੰਦਾ। ਸ਼ਰਤਾਂ ਲਾਉਂਦੇ ਤੁਹਾਨੂੰ ਕੀ ਲੋੜ ਹੈ? ਤੁਸੀਂ ਜਾ ਕੇ ਉਹਦੀ ਵਿਆਖਿਆ ਕਰੋ ਭਾਈ ਇੱਥੇ ਸਮਝਾ ਦਿਓ। ਗੁਰਬਾਨੀ ਦਾ ਇਥੇ ਰੱਖੀ ਹੈ ਗੁਰਬਾਨੀ ਆ ਕਹਦੇ ਦੁਆ ਕਰਦੇ ਪਬਲਿਕ ਇਕੱਠੀ ਕਰਕੇ ਪਬਲਿਕ ਇਕੱਠੀ ਕਰਕੇ ਕੋ ਵੀ ਆ ਕਹਦੀ ਨਾਲ ਯਾਰ ਰੱਖਿਆ ਨਾਲ ਆ ਹਟ ਜੂ ਤੇਰੀ ਕਹਾਟਾ ਉੜਦਾ ਤੂਜਾ ਨਾ ਕਰੇ ਜੋ ਤਰੀਕਾ ਗੁਰੂਆਂ ਨੇ ਵਰਤਿਆ ਉਹ ਵਰਤੋ ਤੂੰ ਦੀ ਦੀ ਬੀੜ ਚੱਕ ਲੈਣੇ ਤੋ ਕੀ ਲੋੜ ਤੱਕੇ ਨਾਲ ਤੱਕੇ ਨਾਲ ਤੱਕ ਕੇ ਨਾਲ ਰ ਬੇਟਾ ਕੀ ਗੱਲ ਲੀ ਕਿਉਂ ਚੱਕਦੇ ਤੂੰ ਇਹ ਤੋੜ ਰਿਹਾ ਹਿੰਦੂ ਸਭ